ਏਆਰਪੀਏ 1570 ਆਈਐਮ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ 11 ਵਜੇ 10 ਮਿੰਟ ਹੋਏ ਐ 16 ਫਰਵਰੀ ਦਾ ਦਿਨ ਹੈ ਬਰਾ 2016 ਦਾ ਵੀਰਵਾਰ ਹੈ ਪੰਜ ਫੱਗਣ ਨਾਨਕਸ਼ੇ ਸਮਤ 548 ਜਮਾਈ ਨਿੱਕਾ ਸਵਾਗਤ ਹੈ ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਗੀਤ ਸੰਗੀਤ ਸ਼ੋਕ ਦੇ ਮਸਲੇ ਤੇ ਗੱਲਬਾਤ ਹੋਏਗੀ ਪਹਿਲੇ ਇਸ ਸਾਢੇ 11 ਵਜੇ ਬੈਦ ਰੂਬਨ ਤੁਹਾਡੇ ਸਾਹਮਣੇ ਖੋਣਗੇ ਤੁਹਾਡੀ ਸਿਹਤ ਦੀ ਗੱਲ ਜੜੀਆਂ ਬੂਟੀਆਂ ਤੇ ਆਯੁਰਵੇਦ ਦੇ ਸਦੀਆਂ ਦੇ ਪੁਰਾਣੀ ਇਲਾਜ ਪ੍ਰਣਾਲੀ ਦੇ ਵਿੱਚ ਕਿਹੜੀਆਂ ਨਵੀਆਂ ਚੀਜ਼ਾਂ ਤੇ ਸਿਹਤ ਤੁਹਾਡੀ ਪੱਬਾਂ ਤੇ ਕਿਵੇਂ ਰਹਿ ਸਕਦੀ ਹੈ ਬੈਦ ਰੂਬਲ ਗੱਲਬਾਤ ਕਰਨਗੇ 12 ਵਜੇ ਕੇ 10 ਮਿੰਟ ਤੇ ਨਮਰਤ ਗਿਰ ਬੱਚੀ ਦੇ ਇਨਸਾਨਾਂ ਦੀ ਐਬਸਪੋਰਟ ਦੀ ਉਸ ਦੀ ਹਸਪਤਾਲ ਦੇ ਵਿੱਚ ਮੌਤ ਹੋਈ ਹੈ ਪਰਿਵਾਰ ਦੋਸ਼ ਲਾ ਰਿਆ ਕਿ ਅਣਗਹਿਲੀ ਵਰਤੀ ਆ ਸਾਡੀ ਧੀ ਦਾ ਉੱਤੇ ਹੀ ਨਹੀਂ ਵਾਚਿਆ ਅਸੀਂ ਦੋ ਦਿਨ ਲੇ ਰਹੇ ਕਹਿੰਦੇ ਟੈਨਲ ਦੇ ਦਿਓ ਟੈਨਲ ਦੇ ਦਿਓ ਅਖੀਰ ਬੱਚੀ ਦਾ ਰੰਗ ਫਿੱਕਾ ਪੈਂਦਾ ਗਿਆ ਮੈਂ ਮਾਂ ਕਹਿੰਦੀ ਮੈਂ ਰੋਲਾ ਪਾਉਂਦੀ ਰਹੀ ਗੱਲ ਨਾ ਹੋ ਸਕੀ ਕੱਲ ਵੀ ਚਾਲ ਸਾਹਿਬ ਉਹਨਾਂ ਦੇ ਵਿੱਚ ਜਿਨ੍ਹਾਂ ਦੀ ਭਾਣਜੀ ਹੈ ਬੇਟੀ ਕੱਲ ਫੋਨ ਆਇਆ ਸੀ ਮੈਂ ਤੋਂ ਮਿਸ ਹੋ ਗਿਆ ਕੱਲ ਗੱਲ ਕਰਨੀ ਬਣਦੀ ਸੀ ਅੱਜ ਕਰਾਂਗੇ 1:10 ਦੇ ਜਗਰੂਪ ਸਿੰਘ ਬਰਾੜ ਐਨਡੀਪੀ ਵੱਲੋਂ ਕੰਟੇਨਰ ਟਰੱਕਰ ਦੇ ਇਸ਼ੂ ਨੂੰ ਕਿਵੇਂ ਨਿਜਠਿਆ ਜਾਊ ਸਰਕਾਰ ਜਦ ਬਣੂ ਇਹ ਗੱਲ ਹੋਏਗੀ 1:20 ਤੇ ਜਦ ਅੱਕ ਜਾਂਦੇ ਹੋ ਥੱਕ ਜਾਂਦੇ ਹੋ ਫਿਰ ਕੀ ਕਰਨ ਨੂੰ ਜੀ ਕਰਦਾ ਜਦ ਮਨ ਬੁੱਝ ਜਾਂਦਾ ਫਿਰ ਕੀ ਕਰਨ ਨੂੰ ਜੀ ਕਰਦਾ ਵੀਰਵਾਰ ਦੀ ਗੱਲ ਅੱਜ ਕਰਾਂਗੇ ਆਪਣੇ ਭਾਈਚਾਰੇ ਦੇ ਵਿੱਚੋਂ 18442471550 krpi radio.com ਤੇ ਸਿੱਧਾ ਪ੍ਰਸਾਦ ਸੁਣੋਗੇ ਤੇ ਐਪ ਡਾਊਨਲੋਡ ਕਰ ਲਿਓ ਜੇ ਪ੍ਰੋਗਰਾਮ ਕਿਤੇ ਵਿਸਤਰ ਜਾਵੇ ਤਾਂ ਖਬਰ ਤੇ ਪ੍ਰੋਗਰਾਮ ਪਿਆ ਹੋਊ ਤਾਂ ਬਾਅਦ ਚ ਵੀ ਸੁਣ ਸਕਦੇ ਹੋ ਨਾਲ ਹੀ nimmidola ਜਿਹਦਾ ਨੰਬਰ 60444064@info@krpiredio.com ਉਹਨਾਂ ਦਾ ਈਮੇਲ ਹੈ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ ਜਿੱਥੇ ਤੁਸੀਂ ਗੱਲ ਸਿੱਧੀ ਕਰ ਸਕਦੇ ਹੋ ਤੇ ਨਾਲ ਹੀ harjeet.g@krpiredio.com ਇਹ ਈਮੇਲ ਹੈ ਜਿੱਥੇ ਨਾਲ-ਨਾਲ ਗੱਲ ਚੱਲਦੀ ਹੈ ਖੰਗ ਜ਼ੁਕਾਮ ਤਾਂ ਖਾਦੀ ਫੀਮ ਦਵਾਈ ਵਜੋਂ ਸਿਆਣੇ ਦੱਸਦੇ ਨੇ ਇਹੋ ਇਲਾਜ ਪੱਕਾ ਹયા ਸ਼ਰਮ ਨਾਲੋਂ ਜੋ ਅੱਖ ਦੀ ਝੇਪ ਮੰਨੇ ਦੀ ਰੱਖੂ ਮਾਪਿਆਂ ਦੀ लाज ਪੱਕਾ ਪਾਣੀ ਵਾਰਨਾ ਤੇ ਵੰਡਣਾ ਜੰਡੀ ਨੂੰ ਗੱਲ ਐਵੇਂ ਨਹੀਂ ਉਹ ਰਿਵਾਜ ਪੱਕਾ ਪੈਰ ਚਾਦਰੋਂ ਬਾਹਰ ਪਸਾਰ ਦੇ ਜੋ ਮੂਲ ਮੁੱਲ ਕੀ ਵਧੂ ਵਿਆਜ ਪੱਕਾ ਯਾਰੀ ਦੋਸਤੀ ਚ ਜੇ ਦਈਏ ਪੈਸਾ ਕਦੇ ਮੁੜਦਾ ਨਾ ਤਸੂ ਲਹਾਜ ਪੱਕਾ ਵੇਖ ਕਿਸੇ ਨੂੰ ਜੇ ਕੋਈ ਸ਼ੈ ਹੋ ਜਾਏ ਉਸ ਗੱਲ ਚ ਹੋ ਕੋਈ ਰਾਜ਼ ਪੱਕਾ ਖੂਨ ਬਾਗੀ ਹੋ ਜਾਏ ਤੋੜ ਪ੍ਰਾਣੀਆਂ ਹੱੱਦਾਂ ਨੂੰ ਖਿਲਾਫ ਬੋਲੂਗਾ ਉਹਦੇ ਸਮਾਜ ਪੱਕਾ ਤੰਤ ਹੋਵੇ ਨਾ ਜਿਹੜੇ ਗਾਇਕ ਦੇ ਬੋਲ ਅੰਦਰ ਉਹਦੇ ਗੀਤ ਚ ਵੱਜੂ ਨਜਾਇਜ਼ ਸਾਜ਼ ਪੱਕਾ ਲਿਖਤ ਕਿਸੇ ਚ ਲਿਖਤ ਕਿਸੇ ਦੀ ਚੱਪ ਦਾ ਨਾਮ ਪਾਵੇ ਹੁਣ ਇੱਕ ਨਹੀਂ ਨਾ ਉਹ ਔਲਾਦ ਇੱਕ ਦੀ ਨਹੀਂ ਨਾ ਉਹ ਔਲਾਦ ਪੱਕਾ ਕੁੱਦੇ ਪਿੰਜਰੇ ਬਣੇ ਨਾ ਕਾਂ ਘੁੱਗੀਆਂ ਲਈ ਕੈਦ ਹੁੰਦਾ ਏ ਸੁਣਿਆ ਬਾਜ਼ ਪੱਕਾ ਕੈਦ ਹੁੰਦਾ ਏ ਸੁਣਿਆ ਬਾਜ਼ ਪੱਕਾ ਕੋ ਸਿੰਘ ਹਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਦੁਨੀਆ ਦੇ ਵਿੱਚ ਖੜਾਕ ਪਏ ਪਏ ਇੰਨਾ ਸਿਤਮ ਹੋਇਆ ਹੈ ਦੇ ਵਿੱਚ ਬੰਦੇ 50 ਮਰ ਗਏ ਤੇ 50 ਹੀ ਪਾਕਿਸਤਾਨ ਚ ਮਰ ਗਏ ਬੰਬ ਇਉਂ ਸੜਕਾਂ ਤੇ ਤੁਰੇ ਫਿਰਦੇ ਆ ਜਿਵੇਂ ਆਲੂ ਨਾ ਵਿਕਦੇ ਹੁਣ ਜੱਟ ਟਰਾਲੀਆਂ ਆਲੂਆਂ ਦੀਆਂ ਲਾਹ ਦਿੰਦੇ ਹਜਰੰਦਾ ਆਇਸ ਨੇ ਜ਼ਿੰਮੇਵਾਰੀ ਲਈ ਆ ਪਾਕਿਸਤਾਨੀ ਇੱਕ ਸੂਫੀ ਫਕੀਰ ਦੀ ਜਗ੍ਹਾ ਸਿੰਧ ਸੂਬੇ ਦੇ ਵਿੱਚ ਉੱਥੇ ਸ਼ੀਆ ਮੁਸਲਮਾਨ ਇਕੱਠੇ ਹੋ ਕੇ ਹਰ ਸਾਲ ਹਰ ਹਫਤੇ ਦਾ ਇੱਕ ਡਾਂਸ ਜਿਹੜਾ <html>ਤਮਾਲ ਕਰਦਨੇ ਲਾਲ ਸ਼ਾਹਵਾਜ਼ ਕਲੰਦਰ ਸਿੰਧ ਸੂਬੇ ਦੇ ਸਹਿਵਾਨ ਜਗ੍ਹਾ ਤੇ ਉੱਥੇ ਸੀ ਤੇ ਉੱਥੇ ਜਾ ਕੇ ਇਹ ਬੰਬ ਬਲਾਸਟ ਹੋਇਆ ਆਈਸਿਸ ਨੇ ਇਹਦੀ ਜ਼ਿੰਮੇਵਾਰੀ ਲਈਆ ਤੇ ਬੰਦੇ ਕਹਿੰਦੇ ਸ਼ੀਆ ਮੁਸਲਮਾਨ ਸੀ ਅਸੀਂ ਮਾਰਦੇ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਆਈਸਿਸ ਨੇ ਬਗਦਾਦ ਦੇ ਵਿੱਚ ਲਈ ਹੈ ਜਿਹਦੇ ਵਿੱਚ ਕਾਰ ਬੰਬ ਇੱਕ ਫਟਿਆ ਤੇ 47 ਜਣੇ ਉਹਦੇ ਚ ਮਾਰੇ ਗਏ ਨੇ ISIS ਬਹੁਤ ਨੁਕਸਾਨ ਕਰ ਰਿਹਾ ਤੇ ISIS ਦਾ ਕੋਈ ਹੀਲਾ ਹੋਣਾ ਚਾਹੀਦਾ ISIS ਦੀ ਪੈੜ ਨਪੀਏ ਤਾਂ ISIS ਨੂੰ ਸ਼ੁਰੂ ਕਰਨ ਵਾਲਿਆਂ ਚ ਅਲ ਬਗਦਾਦੀ ਹੋਣੀ ਕਦੇ ਅਮਰੀਕਾ ਦੀ ਗੱਲ ਹੈ ਪਿੱਠਪੂਰ ਸੀ ਤੇ ਹੁਣ ਗੱਲ ਕਿਤੇ ਹੋਰ ਖੜੀ ਹੈ ਆਈਸਸ ਨੂੰ ਨੱਪਿਆ ਜਾਣਾ ਚਾਹੀਦਾ ਇਜ਼ਰਾਈਲ ਵਾਲਾ ਨਤਨੀਯਾਹੁ ਪੱਪਾ ਭਾਰ ਹੋਇਆ ਫਿਰਦਾ ਜਿਵੇਂ ਉਮਰ ਨੰਗਾ ਚੁੱਕੇ ਬੰਦੇ ਦਾ ਵਿਆਹ ਹੋ ਜੇ ਉਹ ਇਕੱਲਾ ਹੀ ਨੱਚਦਾ ਫਿਰਦਾ ਕਹਿੰਦਾ ਹੁਣ ਆਇਆ ਪ੍ਰੈਜ਼ੀਡੈਂਟ ਸਾਡੇ ਸੂਤ ਇਤੋਂ ਵੱਡਾ ਦੁੱਦੀਆਂ ਦਾ ਕੋਈ ਦੋਸਤ ਨਹੀਂ ਹੈ ਅੱਜ ਅਖਬਾਰ ਨੇ ਲਿਖਿਆ ਵੀ ਉਹ ਔਨਾਰ ਹੈ ਹੱਥ 'ਚ ਫੜਿਆ ਹੀ ਚੱਲ ਜਾਂਦਾ ਬਾਲੀਬੀਨਾ ਦੀ ਉਪਮਾ ਕਰ ਪਤਨੀ ਇਹਨੇ ਕਿੱਦਾਂ ਨੂੰ ਤੁਰ ਪੈਣਾ ਬੈਨਨ ਵਰਗੇ ਇਹਦੇ ਨੀਤੀ ਘਾੜੇ ਨੇ ਜਿਹੜੇ ਜਹੂਦੀਆਂ ਦੇ ਸੈਮਿਟイズਮ ਦੇ ਖਿਲਾਫ ਨੇ ਤੂੰ ਕਿੱਥੇ ਤੁਰਿਆ ਫਿਰਦਾ ਹੈ ਇਹ ਦੇਖਣ ਨੂੰ ਸਾਊ ਲੱਗਦਾ ਹੈ ਖਖੜੀਆਂ ਕਰੇਲੇ ਕਰ ਦੂ ਜੇ ਕਿਤੇ ਗੁੱਟ ਫੜ ਲਿਆ ਤੇਰਾ ਨਤਨਯਾਹੁ ਕਹਿੰਦਾ ਵਿਸ਼ਾ ਗੱਲ ਮਲਮੀ ਕਰ ਦਿੱਤੀ ਇੱਕ ਸਟੇਟ ਤੇ ਦੋ ਸਟੇਟਾਂ ਦੀ ਗੱਲ ਦੋਨਾਂ ਦੀ ਉਹ ਕਰ ਦਿੱਤੀ ਰਾਸ਼ਟਰਪਤੀ ਨੇ ਉਹ ਕਹਿੰਦਾ ਇੱਕ ਸਟੇਟ ਕਰ ਲੋ ਦੋ ਪਰ ਹੁਣ ਦੋ ਨਹੀਂ ਬਣਨੀ ਐ ਇੱਕੋ ਹੀ ਬਣੂ 600 ਕਰ ਨਮਾ ਬੈਸਟ ਬੈਂਕ ਦੇ ਵਿੱਚ ਬਣਨ ਜਾ ਰਿਹਾ ਹੈ ਇਜ਼ਰਾਈਲ ਦਾ ਸਿੱਖਿਆ ਮੰਤਰੀ ਕਹਿੰਦਾ ਹੁਣ ਝੰਡਾ ਲਾ ਕੇ ਫਲਸਤੀਨੀਆ ਦਾ ਲਾਉਣਾ ਬੈਸਟ ਬੈਂਕ ਚ ਇਹ ਕੋਈ ਦੋ ਦੋ ਸਟੇਟਾਂ ਨਹੀਂ ਇੱਕੋ ਸਟੇਟ ਆ ਗਾਜ਼ਾ ਵੀ ਸਾਡਾ ਹਿੱਸਾ ਹੈ ਗਾਜ਼ੇਸ ਵੀ ਜਦ ਮਰਜ਼ੀ ਜਾਵੜਾ ਇਹ ਜਦ ਤੱਕ ਇਹ ਕਨਫਲਿਕਟ ਨਹੀਂ ਠੀਕ ਹੁੰਦਾ ਜਦ ਤੱਕ ਇਹ ਗੱਲ ਸੂਤ ਨਹੀਂ ਹੋਣੀ ਇਰਾਨ ਵੱਲੋਂ ਵੀ ਅੱਖਾਂ ਕਹਿੜੀਆਂ ਹੋਈਆਂ ਲੱਗਦੀਆਂ ਹੈ ਤੇ ਵੀ ਹੋਂਦ ਤੋਂ ਇਜ਼ਰਾਈਲ ਡਰਦਾ ਹੈ ਇਜ਼ਰਾਈਲ ਕਹਿੰਦਾ ਹੈ ਇਰਾਨ ਦਾ ਫਸਤਾ ਵੱਡਣਾ ਚਾਹੀਦਾ ਉਧਰੋਂ ਸਾਊਦੀ ਅਰਬ ਇਰਾਨ ਤੇ ਔਖਾ ਹੈ ਪਰਲੇ ਬੰਨੇ ਨਾਲ ਇਰਾਨ ਦੇ ਜਾਲ ਲੱਗਦਾ ਸਾਊਦੀ ਅਰਬ ਇਰਾਨ ਤੇ ਨਿਗਾਹ ਹੁਣ ਕਿਹੜੀ ਹੈ ਤੇ ਦੂਜੇ ਬੰਨੇ ਹੋ ਸਕਦਾ ਸਮਝੌਤਾ ਹੋ ਜਵੇ ਵੀ ਨਾਰਥ ਕੋਰੀਆ ਵਾਲੇ ਪਾਸੇ ਨੂੰ ਵੀ ਤੁਰਿਏ ਰੂਸ ਤੇ ਚੀਨ ਉਹਦੇ ਪਿੱਛੋਂ ਥੋੜਾ ਜਿਹਾ ਹਰਜਨ ਕਿਉਂਕਿ ਜਾਪਾਨ ਦਾ ਪ੍ਰਧਾਨ ਮੰਤਰੀ ਐਵੇਂ ਨਹੀਂ ਗੇੜੇ ਕੱਢ ਕੇ ਗਿਆ ਕੁਛ ਨਾ ਕੁਛ ਹੋਏਗਾ ਨਾਲੇ ਵਿਗੜਿਆ ਬੰਦਾ ਜਦ ਕੋਈ ਬਹਿਜ ਬੇਗੱਦੀ ਤੇ ਉਹਨੇ ਕਹਣਾ ਵੀ ਮੈਂ ਹੁਣ ਡੌਲੇ ਕੱਦ ਦਿਖਾਉਣੇ ਆ ਕੁਛ ਨਾ ਕੁਛ ਹੋਊ ਕਿਤੇ ਸਿੰਗੜੀ ਛੜੂ ਹਥਿਆਰ ਵਰਤੇ ਜਾਣਗੇ ਗੋਲਾ ਬਰੂਦ ਵਰਤੂ ਲੌਬੀਇਸਟ ਖੁਸ਼ ਰਹਿਣਗੇ ਤੇਲ ਦੀਆਂ ਕੀਮਤਾਂ ਵਧਣਗੀਆਂ ਘਟਣਗੀਆਂ ਰੌਲਾ ਕਿਸੇ ਨਾਲ ਨਹੀਂ ਸੀ ਰੌਲਾ ਸਦਾਮ ਹੁਸੈਨ ਨਾਲ ਵੀ ਨਹੀਂ ਸੀ ਰੌਲਾ ਲੀਬੀਆ ਦੇ ਵਿੱਚ ਗਦਾਫੀ ਨਾਲ ਵੀ ਨਹੀਂ ਸੀ ਰੌਲਾ ਇਹ ਸੀ ਕਿ ਪੈਟਰੋ ਡਾਲਰ ਦੀ ਵਰਤੋਂ ਕਿਉਂ ਨਹੀਂ ਕਰਦਾ ਉਹ ਕਹਿੰਦਾ ਸੀ ਮੈਂ ਤੇਲ ਦੋਨੇ ਕਹਿੰਦੇ ਸੀ ਵੀ ਆਪਣੀ ਇਕਨੋਮੀ ਦੇ ਹਿਸਾਬ ਨਾਲ ਆਪਣੀ ਕਰੰਸੀ ਨਾਲ ਵੇਚਣੇ ਨੇ ਦੁਨੀਆ 'ਚ ਤੇਲ ਅਮਰੀਕਨ ਡਾਲਰ ਨਾਲ ਵਿਕਦਾ ਇਹੀ ਸੰਧੀ ਸਾਊਦੀ ਅਰਬ ਤੇ ਅਮਰੀਕਾ ਦੀ ਹੈ ਪੈਟਰੋ ਡਾਲਰ ਦੇ ਨਾਲ ਜਦ ਤੱਕ ਤੇਲ ਸਾਊਦੀ ਅਰਬ ਵੇਚੂ ਕੋਈ ਮੁਸ਼ਕਲ ਨਹੀਂ ਜਦ ਉਹਨੇ ਆਪਣੇ ਰਿਆਲ ਡਰਾਮਾ ਦੀ ਗੱਲ ਕਰ ਦਿੱਤੀ ਆ ਖੋਦਰ ਨੂੰ ਵੀ ਨਿਕਲੂ ਔਰ ਇਸੇ ਹਿਸਾਬ ਦੇ ਨਾਲ ਸਾਰੀ ਇਕਨੋਮੀ ਚੱਲ ਰਹੀ ਹੈ ਪੈਟਰੋ ਡਾਲਰਸ ਉਸ ਨੌ ਹੈ ਤੇ ਅਮਰੀਕਨ ਡਾਲਰਾਂ 'ਚ ਬੱਚਦਾ ਤੇਲ ਗਦਾਫੀ ਤੇ ਸਦਾਮ ਹਸੈਨ ਨੇ ਜਦ ਕਿਹਾ ਵੀ ਨਾ ਅਸੀਂ ਆਪਣੀ ਕਰੰਸੀ ਚ ਵੇਚਾਂਗੇ ਗਦਾਫੀ ਨੇ ਤਾਂ 골ਡ ਬੇਸਡ ਜਿਹੜੀ ਕਰੰਸੀ ਦੀ ਗੱਲ ਕੀਤੀ ਸੀ ਗੜਬੜ ਉੱਥੇ ਹੋ ਗਈ ਜਾ ਕੇ ਸੋ ਇਹ ਜਿਹੜੀਆਂ ਅੰਦਰ ਲੀਆਂ ਕਿਤਾਬ ਹੈ ਹੈ ਦਾ ਕੋਲਡਰ ਵਾਰ ਇਹ ਟਾਈਮ ਨੇ ਲਿਖਿਆ ਕੋਲਡਰ ਵਾਰ ਪੜਨ ਵਾਲੀ ਕਿਤਾਬ ਹੈ ਬੰਦਾ ਜਿਉਂ-ਜਿਉਂ ਪੜਦਾ ਉਹ ਕਹਿੰਦਾ ਜਿਵੇਂ ਪੰਜਾਬ ਦੇ ਪਿੰਡਾਂ 'ਚ ਸੱਤ 'ਚ ਬੈਠੇ ਕੋਈ ਬੰਦਾ ਉੱਚੀ ਗੱਲ ਕਰ ਦਵੇ ਉਹ ਕਹਿੰਦਾ "ਅੱਛਾ ਬਈ ਆ ਵੀ ਗੱਲ ਐ ਦੂਜਾ ਪਿੱਛੇ ਜਨੂੰ ਉਲੜ ਕੇ ਮੂਹਰੇ ਨੂੰ ਕਹੂ ਜਿਹਨੇ ਪੀ ਐਚ ਡੀ ਤੇ ਜਿਵੇਂ ਥੀਸਿਸ ਲਿਖ ਰਿਹਾ ਉਹ ਉਹ ਕਹਿੰਦਾ ਤੂੰ ਕਿੱਥੇ ਫਿਰਦਾ ਐ ਉਹਨੂੰ ਇਉਂ ਕਹੂਗਾ ਵੀ ਤੈਨੂੰ ਕੱਖ ਵੀ ਨਹੀਂ ਪਤਾ ਕੋਲਡ ਰਿਵਾਰ ਬੁੱਕ ਪੜ੍ਹ ਕੇ ਇਹੋ ਲੱਗਦਾ ਬਈ ਯਾਰ ਆਪਾਂ ਕਿੱਥੇ ਫਿਰਦੇ ਆ ਵਪਾਰਕ ਸੁਮੇਸ਼ ਸੇਤ ਇੱਕ ਚੀਜ਼ ਐ ਸਾਰਾ ਕੁਝ ਇਹ ਵਾਲਦ ਹੋਵੇ ਜੇ ਸੇਤ ਚੰਗੀ ਨਹੀਂ ਜ਼ਿੰਦਗੀ ਜਿਹੜੀ ਆ ਖਤਮ ਹੁੰਦੀ ਲੱਗਦੀ ਐ ਜਦ ਤੱਕ ਪੱਬਾਂ ਤੇ ਨਹੀਂ ਸਰੀਰ ਤੁਰਦਾ ਕਹਾਣੀ ਕੋਈ ਨਹੀਂ ਢੋਲ ਵੱਜੀ ਜਾਣ ਤਮਾਕੇ ਹੋਈ ਜਾਣ ਘਰ ਹੋਵੇ ਮਹਿੰਗਾ ਸਹਾਂਗਾ ਗੱਡੀ ਹੋਵੇ ਜੇ ਸਿਹਤ ਠੀਕ ਨਹੀਂ ਤਾਂ ਕੱਖ ਨਹੀਂ ਸਿਹਤ ਵੀ ਜਿੱਥੋਂ ਅਸੀਂ ਆਏ ਆ ਇਲਾਜ ਪ੍ਰਣਾਲੀ ਸਾਡੀ ਕੀ ਸੀ ਪਿੰਡਾਂ ਦੇ ਵਿੱਚ ਵੈਦ ਸੁਨੇਹਾ ਸਾਡੀ ਸਾਜਰੇ ਨਬਜ਼ ਵੇਖਦੇ ਉਹ ਦੱਸ ਦਿੰਦੇ ਪੁੱਤਰਾ ਆਹ ਖਾਲਾ ਆਹ ਖਾਲਾ ਤੁਰਦੇ ਫਿਰਦੇ ਉਹ ਬਾਹਰ ਬਣਾ ਦੇ ਵਿੱਚੋਂ ਜੰਗਲਾਂ ਦੇ ਵਿੱਚੋਂ ਚੀਜ਼ਾਂ ਤੋੜ ਲਿਆਉਂਦੇ ਸਪੰਦੀਆਂ ਕੰਜਾਂ ਤੋੜ ਚੱਕ ਲਿਆਉਂਦੇ ਤੇ ਉਹਨਾਂ ਨੂੰ ਸੁਕਾ ਕੇ ਦਵਾਈਆਂ ਦੇ ਵਿੱਚ ਪਾਉਂਦੇ ਮੂਮੀਰੇ ਦਾ ਸ਼ਰਮਾ ਪਾਉਂਦੇ ਸੇਤਾਂ ਤਕੜੀਆਂ ਕਰਦੇ ਧਾਤਾਂ ਮਾਰ ਮਾਰ ਕੇ ਖਲੋਂਦੇ ਕੁਸ਼ਤੇ ਮਾਰ ਮਾਰ ਕੇ ਖਲੋਂਦੇ ਪਰ ਤੇਜ਼ੀ ਦੀ ਜ਼ਿੰਦਗੀ ਟੀਕੇਆਂ ਨੇ ਗੋਲੀਆਂ ਨੇ ਸਾਡਾ ਸਮਾਂ ਜਿਹੜਾ ਜਿੱਥੇ ਤੇ ਇਹ ਚੀਜ਼ ਤੇ ਕੰਮ ਕਰਨ ਵਾਲੇ ਵੀ ਘਟ ਗਏ ਪੀੜੀ ਦਰ ਪੀੜੀ ਕੋਈ ਵੈਦ ਹੋਵੇ ਉਹ ਤਾਂ ਦੱਸਦੇ ਨਹੀਂ ਸਟੇਰਡ ਪੀ ਪੀ ਕੇ ਲੋਖੜਾਉਣ ਲੱਗੇ ਤੇ ਲੋਕਾਂ ਦਾ ਮਨ ਉੱਠ ਗਿਆ ਪਰ ਫਿਰ ਵੀ ਬੀ ਨਾਸ ਨਹੀਂ ਹੁੰਦਾ ਇੱਕ ਨਾਮ ਹੈ ਬੈਦ ਰੂਬਲ ਜਿਨ੍ਹਾਂ ਨੇ ਇੱਕ ਇਲਾਜ ਪ੍ਰਣਾਲੀ ਜਿਹੜੀ ਆਯੁਰਵੇਦ ਦੀ ਆਪਣੀਆਂ ਪੀੜ੍ਹੀਆਂ ਤੋਂ ਇੱਥੇ ਲੈ ਕੇ ਲੋਕਾਂ ਦੇ ਸੰਮੋਖ ਕੀਤੀ ਤੇ ਸਰੀ ਦੇ ਲੋਕ ਠੀਕ ਹੋਣ ਲੱਗੇ ਦੂਰੋਂ ਵੀ ਸੈਨ ਫਰਾਂਸਿਸਕੋ ਤੋਂ ਲੋਕ ਜਹਾਜ਼ ਚੜ੍ਹ ਚੜ੍ਹ ਕੇ ਆਉਣ ਲੱਗੇ ਤੁਹਾਡੀਆਂ ਟੈਸਟੀਮੋਨੀਜ਼ ਨੇ ਜਿਹੜੀਆਂ ਤੁਸੀਂ ਦੱਸਦੇ ਵੈਦ ਜੀ ਨੇ ਨਹੀਂ ਦੱਸਿਆ ਜਿਹੜੀਆਂ ਤੁਸੀਂ ਦੱਸਿਆ ਤੇ ਅੱਜ ਫੇਰ ਦੋ ਹਫ਼ਤੇ ਬਾਦੋਂ ਵੀਰਵਾਰ ਨੂੰ ਆਉਣਗੇ ਅੱਜ ਫੇਰ ਇੱਕ ਖਾਸ ਗੱਲ ਉਹਨਾਂ ਨਾਲ ਚੱਲੇਗੀ ਵੈਦ ਜੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਲਿਸਨਰ ਨੂੰ ਮੇਰੇ ਵੱਲੋਂ ਪਿਆਰ ਭਰੀ ਨਿਗੀ ਜਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਕਾਲਮ ਅਲੈਕਮ ਤੇ ਮੈਂ ਆ ਬੜਾ ਖੁਸ਼ ਨਸੀਬ ਹੈ ਕਿ ਜਿਹੜਾ ਸਮਾਂ ਮਿਲਦਾ ਤੇ ਥੋੜਾ ਜਿਹਾ ਟਾਈਮ ਮਿਲਦਾ ਗੱਲਬਾਤ ਕਰਨ ਵਾਸਤੇ ਸੋ ਪਬਲਿਕ ਨੂੰ ਭੈਣ ਭਰਾਵਾਂ ਨੂੰ ਫਾਇਦੇ ਦੀਆਂ ਗੱਲਾਂ ਜਿਹੜੀਆਂ ਆਪਣੇ ਤਜਰਬੇ ਦੀਆਂ ਗੱਲਾਂ ਉਹ ਦੱਸੀ ਦੀਆਂ ਪੜ ਪੜ ਕੇ ਨਹੀਂ ਦੱਸੀ ਦੀਆਂ ਤਜਰਬੇ ਦੀਆਂ ਦੱਸੀ ਦੀਆਂ ਕਿਉਂਕੋ ਪੜ ਪੜ ਕੇ ਤੇ ਬੰਦੇ ਬਹੁਤ ਦੱਸਣ ਵਾਲੇ ਹੁੰਦੇ ਆ ਬਿਲਕੁਲ ਸੋ ਜਿਹੜਾ ਤਜਰਬਾ ਹੈ ਅਸਲੀ ਤਜਰਬਾ ਹੋਈ ਹੈ ਕਿ ਜਿਹੜਾ ਬੰਦਾ ਕੱਲੀਆਂ ਡਿਗਰੀਆਂ ਕੰਮ ਨਹੀਂ ਕਰਦੀਆਂ ਜਦੋਂ ਕਿ ਤੁਹਾਡਾ ਤਜਰਬਾ ਕੰਮ ਕਰਦਾ ਸੋ ਤਜਰਬਾ ਜਿਹੜਾ ਉਹ ਸਾਡਾ 250 ਸਾਲ ਦਾ ਨਾਲ ਹੀ ਜੋੜਦੇ ਆ। ਸੋ ਫੇਰ ਉਹ ਤਜਰਬਾ ਬਣਦਾ ਹਾਂਜੀ। ਸੋ ਇਦਾਂ ਹੀ ਸਾਡੇ ਅੱਗੇ ਹੁਣ ਬੱਚੇ ਐ ਉਹ ਵੀ ਉਹਨਾਂ ਦਾ ਵੀ ਤਜਰਬਾ ਹੈ। ਸੋ ਉਹਨਾਂ ਕੋਲ ਵੀ ਲਾਈਨ ਅਪ ਇਦਾਂ ਹੀ ਆ। ਸੋ ਜਿੱਦਾਂ ਟ੍ਰਾਂਟੋ ਦੇ ਵਿੱਚ ਹੈ ਜਾਂ ਇੰਡੀਆ ਦੇ ਵਿੱਚ ਦਿੱਲੀ ਦੇ ਵਿੱਚ ਹੈ ਜਾਂ ਪੰਜਾਬ ਦੇ ਹਿਮਾਚਲ ਦੇ ਵਿੱਚ ਹੈ ਉਹ ਦੇਖੋ ਜਿਹੜਾ ਹਿਮਾਚਲ ਦੇ ਵਿੱਚ ਸਾਡਾ ਆਫਿਸ ਹੈ। ਉਹ ਨਾ ਕੋਈ ਪਿੰਡ ਹੈ ਨਾ ਕੋਈ ਸ਼ਹਿਰ ਪਿਓਰ ਜੰਗਲ ਹੈ ਸੋ ਜੰਗਲ ਦੇ ਵਿੱਚ ਮੰਗਲ ਹੈ ਸੋ ਇਸੇ ਕਰਕੇ ਲੋਕ ਲੱਭ ਲੱਭ ਕੇ ਜਾਂਦੇ ਆ ਕਿ ਕਿਉਂਕਿ ਪਬਲਿਕ ਨੂੰ ਦੇਸੀ ਚੀਜ਼ਾਂ ਨਾਲ ਆਰਾਮ ਆਉਂਦਾ ਸਾਡਾ ਵਿਰਸਾ ਲੋਕਾਂ ਨੇ ਇਹ ਗੁਆ ਦਿੱਤਾ ਖਾਲੀ ਦੇ ਵਿੱਚ ਇਹ ਗੁਆਤਾ ਤੇਜੀ ਹਾਂ ਤੇਜੀ ਦੇ ਵਿੱਚ ਸੋ ਹਰ ਬੰਦਾ ਕਹਿੰਦਾ ਮੈਂ ਤੇਜੀ ਤੇਜੀ ਤੇਜੀ ਨਾਲ ਹੀ ਸਾਰੇ ਕੰਮ ਹੋ ਜਾਣ ਤੇਜੀ ਤੇਜੀ ਦੇ ਵਿੱਚ ਇਹ ਸਿਸਟਮ ਬੋਡੀ ਦਾ ਇਹ ਖਰਾਬ ਹੁੰਦਾ ਜਾ ਰਿਹਾ अच्छा भाई साहब ये दसो जी सब तो गल पेट से चलदी है मेदे चल है। ते चलदी ਢਿੱਡ ਚਲਦੀ ਚੰਗਾ ਭਲਾ ਬੰਦਾ ਖਾਂਦਾ ਭੁੱਖ ਲੱਗੀ ਆ ਖਾ ਲਿਆ ਉਹਦੇ ਬਾਅਦ ਢਿੱਡ ਚ ਦਮਰੂ ਵੱਜਦਾ ਗੁਰ ਗੁਰ ਗੁਰ ਗੁਰ ਹੁੰਦੀ ਆ ਕੋਈ ਸਵੇਰੇ ਕਿਸ ਨੂੰ ਕਬਜ ਹੋ ਗਈ ਖਟੇ ਢਕਾਰ ਤਜਾਬ ਤੁਸੀਂ ਅਕਸਰ ਕਹਿੰਦੇ ਆ ਤਜਾਬੀ ਮਾਦਾ ਤਜਾਬੀ ਮਾਦਾ ਕਿੰਨਾ ਕਿਸ ਦਾ ਸਿਹਤ ਤੇ ਪ੍ਰਭਾਵ ਹੈ ਜਿਹੜਾ ਤੁਹਾਡਾ ਮੇਦਾ ਜੀ ਸੋ ਇਹ ਗੱਲ ਬੜੀ ਵੱਡੀ ਹੈ ਬੜਾ ਵੱਡਾ ਸਵਾਲ ਹੈ ਜੀ ਸੋ ਗੱਲ ਛੋਟੀ ਜਹੀ ਹੈ ਗੈਸ ਪਰ ਸਵਾਲ ਬੜਾ ਵੱਡਾ। ਸੋ ਜੇ ਇਹਨੂੰ ਵਿਸਤਾਰ ਵਿੱਚ ਆਪਾਂ ਪ੍ਰੋਪਰ ਕਰੀਏ ਤੇ ਦੋ 4 ਦੇਣ ਲੱਗ ਜਾਂਦੇ ਆ। ਸੋ ਇਹਨੂੰ ਆਪਾਂ ਸ਼ਾਰਟਕਟ ਚੌਥੇ ਗੇੜ 'ਚ ਹੀ ਰੱਖ ਕੇ ਨਾਲ ਗੱਲ ਵੀ ਸਮਝ ਆ ਜਾਵੇ ਤੇ ਸਾਰੀਆਂ ਦੀ ਗੈਸ ਵੀ ਹਟ ਜਾਵੇ। ਫਾਰਮੂਲਾ ਵਰਤੀਏ। ਸੋ ਗੈਸ ਜਿਹੜੀ ਹੈ ਇਹ ਸਾਡੀ ਪਹਿਲੀ ਗੱਲ ਹੈ ਕਿ ਆਪਣੀ ਕ੍ਰੀਏਟ ਕੀਤੀ ਬਿਮਾਰੀ ਗੈਸ ਜਿਹੜੀ ਹੈ ਜੇ ਸਾਡੇ ਢਿੱਡ ਦੇ ਵਿੱਚ, ਪੇਟ ਦੇ ਵਿੱਚ ਗੈਸ ਨਹੀਂ ਹੋ ਸਕਦੀ। ਜੇ ਸਾਡਾ ਰਹਿਣ ਸਣ ਖਾਣ ਪੀਣ ਐਕਸਰਸਾਈਜ਼ ਪ੍ਰੋਪਰ ਗੁੱਡ ਹੋਵੇ ਤੇ ਪੇਟ ਦੇ ਵਿੱਚ ਐਕਸਰਸਾਈਜ਼ ਪ੍ਰੇਪੇਅਰਡ ਦੀ ਐਕਸਰਸਾਈਜ਼ ਕੀਤੀ ਜਾਵੇ ਤੇ ਕਦੀ ਵੀ ਗੈਸ ਨਹੀਂ ਹੁੰਦੀ ਜੇ ਗੈਸ ਨੂੰ ਆਪਾਂ ਹਟਾਣਾ ਹੈ ਤੇ ਆਪਾਂ ਨੂੰ ਸਿਹਤ ਆਪਣੀ ਨੂੰ ਚੰਗਾ ਬਣਾਉਣਾ ਹੈ ਤੇ ਖਾਣ ਪੀਣ ਤੇ ਜ਼ਰੂਰ 2 ਇੰਚ ਜੀਭ ਦੇ ਸਵਾਦ ਦੇ ਉੱਤੇ ਜ਼ਰੂਰ ਕੰਟਰੋਲ ਕਰਨਾ ਪੈਣਾ ਸੋ 2 ਇੰਚ ਦਾ ਜੀਭ ਦਾ ਸਵਾਦ ਜਿਹੜਾ ਸਾਨੂੰ ਖਰਾਬ ਕਰਦਾ ਹੁਣ ਦੇਖੋ ਕਈ ਲੋਕ ਹੈ ਉਹ ਜਦੋਂ ਸਲਾਦ ਬਣਾਈ ਹੈ ਦਹੀਂ ਬਣਾਇਆ ਦਾਲ ਬਣਾਈ ਹੈ ਹਰਨ ਦਾ ਲੂਣ ਢੂੜੀ ਜਾਂਦੇ ਸੋ ਇੱਕੋ ਨਮਕ ਹੀ ਖਾਈ ਜਾਂਦੇ ਨਮਕ ਦੇਖੋ ਕਿ ਜਦੋਂ ਨਮਕ ਮਾਸ ਦੇ ਉੱਤੇ ਪਾ ਦਈਏ ਤੇ ਮਾਸ ਗਲ ਜਾਂਦਾ ਬੰਦੇ ਦੇ ਉੱਤੇ ਪਾ ਤੇ ਬੰਦਾ ਗਲ ਜਾਂਦਾ ਸੋ ਸਾਡੀ ਲਿਮਟ ਜਿਹੜੀ ਦੀ ਹੈ 2 ਤੋਂ 3 ਗ੍ਰਾਮ ਡੇਲੀ ਦੀ ਹੈ 24 ਆਵਰ ਚ ਘੰਟੇ ਦੇ ਵਿੱਚ ਅਸੀਂ ਨਮਕ ਹੀ ਇੰਨਾ ਖਾ ਛੱਡਦੇ ਆ ਤੇਜ ਮਰਚ ਮਸਾਲੇ ਹੀ ਇੰਨਾ ਬਣਾ ਛੱਡਦੇ ਆ ਕਿ ਸਾਡਾ ਜਿਹੜਾ ਲਿਵਰ ਹੈ ਉਹ ਪ੍ਰੋਪਰ ਵਰਕ ਕਰਨਾ ਜਿਹੜਾ ਘਟ ਜਾਂਦਾ ਉਹਦੇ ਨਾਲ ਕੀ ਹੁੰਦਾ ਅਜਿਹਾ ਹਰ ਬੰਦੇ ਨੂੰ ਆਇਰਨ ਦੀ ਘਾਟ ਕਹਿੰਦਾ ਜੀ ਤੇ ਲੀਵਰ ਦੇ ਜਿਹੜੇ ਫੰਕਸ਼ਨ ਹੈ ਪ੍ਰੋਪਰ ਉਹ ਫੰਕਸ਼ਨ ਪੂਰੇ ਨਹੀਂ ਕੰਮ ਨਹੀਂ ਕਰਨ ਦਿੰਦੇ ਲੋਕ ਫੰਕਸ਼ਨ ਇਹਨਾਂ ਕਰਕੇ ਜਿਹੜੀਆਂ ਗੈਸ ਦੀਆਂ ਬਿਮਾਰੀਆਂ ਹੁਣ ਗੈਸ ਕੀ ਕਰੇ ਸਾਡਾ ਖਾਣਾ ਪੀਣਾ ਨਹੀਂ ਚੰਗਾ ਰਹਿ ਗਿਆ ਹੁਣ ਪਹਿਲੇ ਦੇਖੋ ਜ਼ਮਾਨੇ ਦੇ ਵਿੱਚ ਬੀਬੀਆਂ ਭੈਣਾਂ ਨੇ ਸਵੇਰੇ ਦਾਲ ਤੌੜੀ ਦੇ ਵਿੱਚ ਰੱਖਦਾ ਨਹੀਂ ਥੱਲੇ ਗੋਟਾ ਲਾਦਾ ਨਾ ਤੇ ਵਿੱਚੇ ਅਦਰਕ ਲਸਣ ਪਿਆਜ਼ ਕੋਟੇ ਕੇ ਕੁੰਡੀ ਡੰਡੇ ਦੇ ਵਿੱਚ ਤੇ ਵਿੱਚੇ ਛੱਡ ਦੋਨਾ ਦੇਸੀ ਘਿਓ ਤੇ ਮਚਾਂ ਨੂੰ ਏਦਾਂ ਦੀ ਮਲਾਈ ਬਣ ਜਾਣੀ ਕਿ ਜੀ ਦਿਨੇ ਦਾਲ ਖਾਣੀ ਉਹਨੇ ਵੀ ਆਸ਼ਾਸ਼ਕਾਰ ਉੱਠਣਾ ਤੇ ਉਹ ਹজম ਵੀ ਹੁੰਦੀ ਸੀ ਤੁਹਾਨੂੰ ਤੜਕਾ ਨਹੀਂ ਸੀ ਲੱਗਦਾ ਉਹ ਸਮਾਨ ਵੀ ਉਹਦਾ ਸਾਰਾ ਵਿੱਚ ਪੈ ਗਿਆ ਸਾਰੀਆਂ ਚੀਜ਼ਾਂ ਤੁਹਾਨੂੰ ਅਸਰ ਕਰ ਗਈਆਂ ਹੁਣ ਕੀ ਕਰਦੇ ਆ ਕਿ ਸਵੇਰੇ ਜਦੋਂ ਆਪਾਂ ਤੜਕਾ ਲਾਣਾ ਹੈ ਨਾ ਤੇ ਪਹਿਲੇ ਘਿਓ ਪਾਣੇ ਆ ਰਿਫਾਈਨਡ ਪਾਣੇ ਫਿਰ ਵਿੱਚ ਜੀਰਾ ਸਾੜ ਦੰਨੇ ਜਿਹੜੀ ਚੀਜ਼ ਸੜ ਗਈ ਉਨੇ ਨੁਕਸਾਨ ਨਹੀਂ ਕਰਨਾ ਪੈਦਾ ਨਹੀਂ ਕਰਨਾ ਉਹ ਤੋਂ ਬਾਅਦ ਲਸਣ ਸਾੜ ਦੰਨੇ ਹੂੰ ਹੁਣ ਤੁਸੀਂ ਲਸਣ ਨੂੰ ਸੜੇ ਨੂੰ ਤੇ ਜੀਰੇ ਸਾੜ ਕੇ ਖਾ ਕੇ ਦੇਖੋ ਸਾਡੇ ਅੰਦਰ ਸਾੜ ਕਿਦਾਂ ਪੈਂਦਾ ਚੀਜ਼ਾਂ ਤੇ ਸਾੜ ਲੈਣੇ ਆ ਜਦੋਂ ਸਾੜ ਲਈਆਂ ਤੇ ਰਹਿ ਪਿੱਛੇ ਕੀ ਗਿਆ ਬਾਅਦ ਦੇ ਵਿੱਚ ਪਿਆਜ਼ ਭੁੰਨੇ ਆ ਦੇ ਵਿੱਚ ਅਸੀਂ ਹੋਰ ਨਿਕੜ ਸੁੱਕੜ ਟਮਾਟਰ ਪਾ ਸਾਰੇ ਹੀ ਸਾੜ ਦਣ ਸਾਰਾ ਕੁਝ ਜਦੋਂ ਕਹਣਾ ਜੀ ਹੁਣ ਹੈ ਨਾ ਘੋ ਛੱਡ ਗਿਆ ਤੇ ਫਿਰ ਸਮਝੋ ਬੰਦਾ ਵੀ ਛੱਡ ਗਿਆ ਠੀਕ ਸੋ ਉਹ ਫਿਰ ਸਾਡੇ ਬਣਾਉਣ ਦਾ ਹੀ ਸਿਸਟਮ ਚੇਂਜ ਹੋ ਗਿਆ ਫਿਰ ਅਸੀਂ ਉਹਨੂੰ ਕੁਕਰ ਚ ਪਾ ਕੇ ਦਾਲ ਨੂੰ ਫਿਰ ਥੱਲੇ ਉਹਦੇ ਗੈਸ ਬਾਲਦਣੀ ਹੈ ਫਿਰ ਉਹਦੇ ਥੱਲੇ ਵੀ ਗੈਸ ਕੁਕਰ ਚ ਵੀ ਗੈਸ ਮੁੜ ਕੇ ਢਿੱਡ ਚ ਵੀ ਗੈਸ ਫਿਰ ਇਹੋ ਜੀ ਗੜੂੰ ਗੜੂ ਹੁੰਦੀ ਹੈ ਉਕੇ ਜੇ ਮਰੀਜ਼ ਆਉਂਦੇ ਉਹਨਾਂ ਨੂੰ ਦੱਸਣਾ ਹੀ ਨਹੀਂ ਹੁੰਦਾ ਕਹਿੰਦੇ ਜੀ ਢਿੱਡ 'ਚ ਇਦਰੋਂ ਸ਼ੁਰਲੀ ਚੱਲਦੀ ਇਦਰੋਂ ਸ਼ੁਰਲੀ ਚੱਲਦੀ ਹੈ ਉਹ ਸ਼ੁਰਲੀਆਂ ਇੰਨੀਆਂ ਕਿ ਕਿ ਪਤਾ ਹੀ ਨਹੀਂ ਲੱਗਦਾ ਕਿ ਕਿੰਨੀਆਂ ਕਿ ਢਿੱਡ ਦੇ ਵਿੱਚ ਹੁਣ ਕਈਆਂ ਤੇ ਗੈਸ ਹੀ ਹੁੰਦੀ ਹੈ ਢਿੱਡ ਦੇ ਵਿੱਚ ਕਿ ਜਦੋਂ ਉਹਨਾਂ ਤੇ ਕਿਤੇ ਕੁਦਰਤੀ ਨਿਕਲਦੀ ਹੈ ਤੇ ਨਿਆਣੇ ਵੀ ਵਿਚਾਰੇ ਬਿਹੋਸ਼ ਨੂੰ ਫਿਰਦੇ ਆ ਕਮਰਾ ਫੁੱਲਿਆ ਹੋਇਆ ਬਿਲਕੁਲ ਉਹਨਾਂ ਦੇ ਗੈਸ ਹੀ ਗੈਸ ਹੈ ਢਿੱਡ ਤੇ ਥੋੜਾ ਜਿਹਾ ਰਹਿਮ ਕਰੋ ਇਹਨੂੰ ਪੇਟ ਨੂੰ ਸਪਲਾਈ ਦਾ 게ਟ ਨਾ ਬਣਾਓ ਇਹਨੂੰ ਪੇਟ ਹੀ ਰਹਿਮ ਜੀਨ ਵਾਸਤੇ ਖਾਓ ਖਾਣ ਵਾਸਤੇ ਨਾ ਜੀ ਬਿਲਕੁਲ ਠੀਕ ਸੋ ਕਿਉਂਕਿ ਸਾਡੇ ਆਯੁਰਵੇਦਿਕ ਦੇ ਵਿੱਚ ਗੱਲਾਂ ਲਿਖੀਆਂ ਮੈਂ ਆਪਣੇ ਕੋਲੋਂ ਨਹੀਂ ਬਣਾ ਕੇ ਕਹਿੰਦਾ ਸੋ ਇਹ ਤਜਰਬੇ ਦੀਆਂ ਗੱਲਾਂ ਕਿ ਜੀਰੇ ਨੂੰ ਸਾੜੋ ਨਾ ਜੀਰੇ ਦਾ ਪਾਊਡਰ ਵਿੱਚ ਬਣਾ ਕੇ ਪਾਊਡਰ ਪਾ ਲਓ ਸੁੱਕਾ ਧਨੀਏ ਨੂੰ ਪੀਸ ਕੇ ਵਿੱਚ ਪਾ ਲਓ ਦੇਖੋ ਸਵਾਦ ਕਿੰਨਾ ਆਏਗਾ ਤੇ ਤੁਹਾਡਾ ਫਾਇਦਾ ਕਿੰਨਾ ਹੋਏਗਾ ਕਿੰਨੀਆਂ ਤੁਹਾਨੂੰ ਉਹਦੇ ਚ ਜਿਹੜੀਆਂ ਗੈਸ ਬਾਨੀ ਢਿੱਡ ਚ ਬਾਨੀ ਨਹੀਂ ਤੇ ਜੇ ਅਸੀਂ ਹੁਣ दाल ਸਬਜ਼ੀ ਕੀ ਅਸੀਂ ਘਰ ਜਿਹੜੀ ਦਾਲ ਸਬਜ਼ੀ ਬਣਾਨੇ ਆ ਅਸੀਂ ਕੋਈ ਉਹਨੂੰ ਤੜਕਾ ਨਹੀਂ ਲਾਉਂਦੇ ਅਸੀਂ ਤੇ ਸਾਰਾ ਚੀਜ਼ਾਂ ਦਾ ਪੇਸਟ ਬਣਾਨੇ ਦਾਲ ਸਬਜ਼ੀ ਦੇ ਵਿੱਚ ਪਾਇਆ ਵਿੱਚ ਜਮਚਾਹ ਤੇ ਸਵਾਦ ਨਹੀਂ ਲੱਗੇਗੀ ਬਾਅਦ ਦੇ ਵਿੱਚ ਉਹ ਹੀ ਲੱਗੇਗੀ ਆਪ ਹੀ ਪਤਾ ਲੱਗੇਗਾ ਇਹਦੇ ਕਿੰਨੇ ਕੁ ਫਾਇਦੇ ਹੋ ਰਹੇ ਆ ਤੁਹਾਡੇ ਪੇਟ ਦੇ ਵਿੱਚ ਤੁਹਾਡੇ ਲਿਵਰ ਦੇ ਵਿੱਚ ਹੁਣ ਆਮ ਲੋਕਾਂ ਦੇ ਜਦੋਂ ਪੇਟ ਦੀ ਪ੍ਰੋਬਲਮ ਆਉਂਦੀ ਹੈ ਤੇ ਉਹਨਾਂ ਦਾ ਲਿਵਰ ਫੈਟੀ ਹੋਣਾ ਸ਼ੁਰੂ ਹੋ ਜਾਂਦਾ ਇਹ ਵੀ ਬਹੁਤ ਕਹਿੰਦੇ ਹੋ ਜੀ ਤੁਸੀਂ ਫੈਟੀ ਲਿਵਰ ਜੀ ਹਾਂਜੀ ਕੀ ਹੋ ਜਾਂਦਾ ਇਹਦੇ ਵਿੱਚ ਬਿਲਕੁਲ ਸੋ ਲੀਵਰ ਜਦੋਂ ਫੈਟੀ ਹੁੰਦਾ ਤੇ ਉਹਦੇ ਨਾਲ ਬਹੁਤ ਲੀਵਰ ਦੇ ਬਾਇਲ ਐਸਿਡ ਜਿਹੜੇ ਓਵਰਵਰਕ ਕੰਮ ਕਰਨ ਲੱਗ ਜਾਂਦੇ ਆ ਉਹਦੇ ਪ੍ਰੋਟੀਨ ਮੈਟਾਬੋਲਿਜ਼ਮ ਡਾਊਨ ਹੋਣੇ ਸ਼ੁਰੂ ਹੋ ਜਾਂਦੇ ਆ ਬੋਡੀ ਦੇ ਵਿੱਚ ਖੂਨ ਘੱਟ ਬਣਨਾ ਸ਼ੁਰੂ ਹੋ ਜਾਂਦਾ ਫੈਟ ਜ਼ਿਆਦਾ ਬਣਨ ਲੱਗ ਜਾਂਦੀ ਹੈ ਫਿਰ ਕੀ ਹੁੰਦਾ ਕਿ ਹਰ ਬੰਦਾ ਕਹਿੰਦਾ ਮੇਰਾ ਆਇਰਨ ਘੱਟ ਗਿਆ ਮੇਰਾ ਜ਼ਿੰਕ ਘੱਟ ਗਿਆ ਮੇਰਾ ਕੈਲਸ਼ੀਅਮ ਘੱਟ ਗਿਆ ਮੇਰਾ ਫਾਸਫੋਰਸ ਘੱਟ ਗਿਆ ਕੋਈ ਕਹਿੰਦਾ ਜੀ ਮੇਰਾ B2 B12 ਵੀ ਹੈ ਨਹੀਂ ਪੂਰਾ ਬੰਦਾ ਸੋ ਅਸੀਂ ਫਿਰ ਬਾਹਰੋਂ ਆਇਰਨ ਲੈਣਾ ਸ਼ੁਰੂ ਕਰ ਦਿੰਦੇ ਹਾਂ ਲੀਵਰ ਵਿਚਾਰਾ ਬੈਠਾ ਬੈਠਾ ਹੋਰ ਪੈਟੀ ਹੋਈ ਜਾਂਦਾ ਤੇ ਬਾਅਦ ਦੇ ਵਿੱਚ ਕੀ ਹੁੰਦਾ ਉਹਦੇ ਪਿੱਛੇ ਸੁਪਲੀਨ ਵੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਜਿਹਨੂੰ ਆਪਾਂ ਦਿੱਲੀ ਕਹਿੰਦੇ ਤੇ ਜਦੋਂ ਦਿੱਲੀ ਦਾ ਫੰਕਸ਼ਨ ਡਾਊਨ ਹੋ ਗਏ ਪੰਪ ਤੋਂ ਨੋਜਨਾ ਜਿਹੜੀਆਂ ਜਾਮ ਹੋਣੀਆਂ ਸ਼ੁਰੂ ਹੋ ਗਈਆਂ ਪੰਪ ਕੀ ਕਰੋ ਤੇ ਫਿਰ ਪੰਪ ਕੀ ਕਰੂਗਾ ਪੰਪ ਨੇ ਤੇ ਫਿਰ ਉਲਟ ਕੰਮ ਹੀ ਕਰਨਾ ਸੋ ਜੇ ਮੈਂ ਤੇ ਉਹ ਭੈਣ ਭਰਾਵਾਂ ਨੂੰ ਹਮੇਸ਼ਾ ਹੀ ਕਹਿੰਨਾ ਕਿ ਚੰਗਾ ਖਾਓ ਰੋਟੀ ਖਾ ਕੇ ਪਾਣੀ ਦਾ ਪੀਓ ਤੇ ਜੇ ਅੱਧੇ ਘੰਟੇ ਬਾਅਦ ਪੀਣਾ ਤੇ ਗਰਮ ਪਾਣੀ ਪੀਣਾ ਸ਼ੁਰੂ ਕਰ ਦਿਓ ਤੇ ਦੇਖੋ ਤੁਹਾਡਾ ਕੋਲੇਸਟ੍ਰੋਲ ਵੀ ਠੀਕ ਤੇ ਤੁਹਾਡਾ ਜਿਹੜਾ ਪੇਟ ਵੀ ਠੀਕ ਤੇ ਗੈਸ ਵੀ ਠੀਕ ਜੇ ਤੁਹਾਨੂੰ ਅਜਿੰਨੀਆਂ ਹੀ ਚਟਨੀਆਂ ਬਾਜ਼ਾਰੀ ਖਾਣੇ ਆ ਆ ਜਿਹੜੀਆਂ ਟਮਾਟਰ ਸੌਸ ਫਲਾਨੀਆਂ ਹੋਈਆਂ ਸਵਾਦ ਖਾਜੀ ਲਾਲ ਲਾ ਕੇ ਸਵਾਦ ਮੂੰਹ ਚ ਪਾਣੀ ਆ ਜਾਂਦਾ ਦੇਖ ਕੇ ਇਹਨਾਂ ਦੇ ਵਿੱਚ ਕਿੰਨੇ ਪ੍ਰੀਜ਼ਰਵਰ ਪਾਏ ਆ ਕਿੰਨੀਆਂ ਤੁਹਾਨੂੰ ਖਰਾਬ ਕਰ ਦੇਣ ਦੇਖੋ ਇਹ ਤੁਸੀਂ ਪੜ ਕੇ ਦੇਖੋ ਫਿਰ ਉਹਨਾਂ ਨੂੰ ਸਰਚ ਕਰੋ ਫਿਰ ਤੁਹਾਨੂੰ ਪਤਾ ਲੱਗੇਗਾ ਤੁਸੀਂ ਚਟਨੀ ਘਰ ਬਣਾਓ ਬਦੀਨਾ ਲੈ ਲਓ ਧਨੀਆ ਲੈ ਲਓ ਵੇਚੋ ਤੇ ਤੁਸੀਂ ਹਰੇ ਪਿਆਜ਼ ਪਾ ਲਓ ਵੇਚੋ ਤੇ ਅਨਾਰ ਦਾਣੇ ਪਾ ਲਓ ਵੇਚੋ ਤੇ ਕਾਲਾ ਨਮਕ ਪਾ ਲਓ ਵੇਚੋ ਤੇ ਇੱਕ ਦੋ ਨਿੰਬੂ ਨਿਚੋੜ ਨਿਚੋੜ ਕੇ ਚਟਨੀ ਬਣਾ ਲਓ ਉਹ ਬਣਾ ਕੇ ਤੁਸੀਂ ਜਦੋਂ ਦੋ ਚਮਚੇ ਖਾਓਗੇ ਤੇ ਤੁਹਾਡੇ ਅੰਦਰ ਦੇਖੋ ਕਿ ਸਾਰਾ ਦਿਨ ਤੁਹਾਡਾ ਅੰਦਰ ਤਰ ਰਹੇਗਾ ਖੁਸ਼ਕ ਨਹੀਂ ਹੋਏਗਾ ਤੇ ਅੰਦਰ ਜਿਹੜੀ ਗੈਸ ਹੈ ਉਹ ਭਵਾਕੇ ਮਾਰ ਮਾਰ ਕੇ ਨਿਕਲ ਜਾਊਗੀ ਕਵਜ ਟੁੱਟ ਜਾਊਗੀ ਜੇ ਕਵਜ ਰਹਿੰਦੀ ਹੈ ਗੈਸ ਨਾਲ ਬਹੁਤ ਵੱਡੀ ਬੁਰੀ ਤੇ ਕਵਜ ਵਾਸਤੇ ਹਰੜ ਦੇ ਆਮਲੇ ਤਰਨਾ ਦੇ ਪੱਤੇ ਪਾ ਕੇ ਉਹ ਰਾਤੀ ਉਰਨ ਬਣਾ ਕੇ ਰੱਖ ਲਓ ਉਹ ਰਾਤ ਨੂੰ ਇੱਕ ਚਮਚ ਲੈ ਲਓ ਜਾਂ ਤੁਸੀਂ ਇਸ ਭਗੋਲ ਦਾ ਛਿਲਕਾ ਵੀ ਰਾਤ ਨੂੰ ਲੈ ਸਕਦੇ ਆਂ ਗਰਮ ਜੇ ਤੁਸੀਂ ਇਸ ਭਗੋਲ ਦਾ ਛਿਲਕਾ ਕਬਜ ਵਾਸਤੇ ਲੈਣਾ ਪਾਣੀ ਨਾਲ ਖਾ ਕੇ ਗਰਮ ਦੁੱਧ ਜ਼ਰੂਰ ਪੀ ਲਓ ਤੇ ਜੇ ਸਵੇਰੇ ਟਟੀਆਂ ਲੱਗੀਆਂ ਕਿਸੇ ਨੂੰ ਲੱਗੀਆਂ ਆਰਾਮ ਲੱਗੀਆਂ ਰਹਿੰਦੀਆਂ ਤੇ ਸਵੇਰੇ ਇਸ ਭਗੋਲ ਦਾ ਛਿਲਕਾ ਕੰਜਵੀ ਦੇ ਨਾਲ ਖਾ ਲਓ ਤੇ ਬੰਦ ਹੋ ਜਾਂਦੀਆਂ ਰਾਤ ਨੂੰ ਗਰਮ ਦੁੱਧ ਨਾਲ ਖਾ ਲਓ ਜਿਹੜੀ ਕਬਜ ਖੁੱਲ ਜਾਂਦੀ ਹੈ ਕਿਉਂਕਿ ਫਾਈਬਰ ਉਹ ਇਹਨਾਂ ਤੁਹਾਨੂੰ ਐ ਜਿਹੜਾ ਤੁਹਾਡਾ ਸਿਸਟਮ ਉਹਦੇ ਅੰਦਰ ਨਰਮ ਕਰਦਾ। ਸੋ ਇੱਕ ਕਬਜ ਤੇ ਸੋ ਬਿਮਾਰੀ ਜੇ ਤੁਹਾਨੂੰ ਕਬਜ ਰਹਿੰਦੀ ਹੈ ਤੇ ਗੈਸ ਵਾਲੇ ਜਿਹੜੇ ਭੈਣ ਭਰਾ ਹੈਗੇ ਆ ਉਹ ਜ਼ਰੂਰ ਦੇਖਣ ਕਿ ਤੁਹਾਨੂੰ ਕਬਜ ਤੇ ਨਹੀਂ ਕੁਦਰਤ ਦੇ ਨਿਯਮ ਦੇ ਅਨਸਾਰ ਜੇ ਅਸੀਂ ਤਿੰਨ ਵਾਰੀ ਖਾਂਦੇ ਆ ਤਾਂ ਸਾਨੂੰ ਤਿੰਨ ਵਾਰੀ ਜਿਹੜੀ ਬਾਥਰੂਮ ਜਾਣਾ ਚਾਹੀਦਾ ਲੈਟਰਨ ਜਾਣਾ ਚਾਹੀਦਾ। ਸੋ ਕਈ ਤੇ ਤਿੰਨ ਤਿੰਨ ਦਿਨ ਭਾਰ ਹੀ ਚੱਕੀ ਫਿਰਦੇ। ਮਾਲ ਖਾਈ ਜਾਂਦੇ ਆ ਖਾਈ ਜਾਂਦੇ ਆ। ਕੱਢਦਾ ਨਾਮ ਹੀ ਨੇ ਤੇ ਫਿਰ ਉਹਨਾਂ ਦੇ ਅੰਦਰ ਕੀ ਗੁਬਾਰੇ ਹੀ ਚੱਲਣੇ ਆ ਫਿਰ ਹੋਣਾ ਕੀ ਹੈ ਅੱਛਾ ਬਹਿ ਜੀ ਇਹ ਦੱਸੋ ਬਈ ਕੁਝ ਇਹ ਚੀਜ਼ਾਂ ਖਾਣ ਪੀਣ ਤੋਂ ਬਿਨਾ ਇੱਕ ਤੁਹਾਡੀ ਪਰਾਚੀਨ ਚੀਜ਼ਾਂ ਇੱਕ ਕਹਿੰਦੇ ਹੁੰਦੇ ਸੀ 5-6 ਮਹੀਨੇ ਬਾਅਦ ਜਲਾਬ ਲੈਣਾ ਉਹ ਜਲਾਬ ਕੀ ਹੁੰਦੇ ਸੀ ਜੀ ਜਲਾਬ ਇਹੋ ਹੀ ਹੁੰਦੇ ਸੀ ਜੀ ਢੇਟ ਨੂੰ ਸਾਫ਼ ਕੀਤਾ ਜਾਂਦਾ ਦਵਾਈ ਸੀ ਉਹ ਹਾਂ ਉਹ ਜਲਾਬ ਇਹੋ ਹੀ ਹੁੰਦੇ ਸੀ ਕਿ ਢੇਟ ਨੂੰ ਜੰਬੋ ਲੋਟਾ ਦੇ ਕੇ ਜੰਬੋ ਲੋਟਾ ਹੁੰਦਾ ਇੱਕ ਅੱਛਾ ਤੇ ਉਹਨੂੰ ਦੇ ਕੇ ਢੇਟ ਨੂੰ ਸਾਫ਼ ਕਰਤਾ ਜਾਂਦਾ ਸੀ ਕਿ ਜੀ ਤੁਹਾਨੂੰ ਜਲਾਬ ਦੇਣੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਦੇਣੀ ਆ ਫਿਰ ਦਵਾਈ ਪਹਿਲੇ ਜਿਹੜੇ ਸਾਡੇ ਵੈਦ ਹਕੀਮ ਹੁੰਦੇ ਸੀ ਇੰਡੀਆ ਦੇ ਵਿੱਚ ਜਦੋਂ ਪੇਟ ਕੋਈ ਵੀ ਮਰੀਜ਼ ਜਾਣਾ ਤੇ ਉਹਨੂੰ ਕਹਿਣਾ ਕਿ ਭਾਈ ਇਹ ਜਿਹੜੀ ਪਹਿਲੇ ਦਿਨੋ ਜਲਾਬ ਦੇਣੇ ਤੇਰਾ ਪੇਟ ਸਾਫ਼ ਕਰਨਾ ਬਾਅਦ ਤੁਹਾਨੂੰ ਦਵਾਈ ਸ਼ੁਰੂ ਕਰਨੀ ਆ ਤੇ ਤੂੰ ਠੀਕ ਹੋ ਜਾਣਾ ਉਹੋ ਗੱਲ ਹੁੰਦੀ ਸੀ ਜਿਆਮ ਲੱਗਾ ਖੁੱਲ ਜਾਂਦਾ ਸੀ ਤੇ ਫਿਰ ਜਿਹੜਾ ਸਾਰਾ ਸਿਸਟਮ ਠੀਕ ਹੋ ਜਾਂਦਾ ਸੀ ਸੋ ਅੱਜ ਦੇ ਜਮਾਨੇ ਦੇ ਵਿੱਚ ਫੈਰ ਨਹੀਂ ਰਹਿ ਗਏ ਪਹਿਲੇ ਦੇਖੋ 1 ਕਿਲੋਮੀਟਰ ਜਾਂ 2 ਕਿਲੋਮੀਟਰ ਸਵੇਰੇ ਇੱਕ ਮੰਡਲ ਫੜ ਕੇ ਬੰਦੇ ਜਾਂਦੇ ਸੀ ਜਦੋਂ ਲੈਟਰਿਨਾਂ ਦੀ ਘਾਰਾਂ ਦੇ ਵਿੱਚ ਨਹੀਂ ਸੀ ਹੁੰਦੀਆਂ ਤੇ ਜਾਂਦਿਆਂ ਪ੍ਰੈਸ਼ਰ ਬਣ ਜਾਂਦਾ ਸੀ ਤੇ ਪ੍ਰੈਸ਼ਰ ਬਣਦਾ ਸੀ ਬੰਦਾ ਬੈੰਦਾ ਸੀ ਪੈਰਾਂ ਭਾਰ ਦੇ ਭਾਰ ਤੇ ਸਾਰਾ ਉਹਦਾ ਪੇਟ ਜਿਹੜਾ ਆ ਹੋ ਜਾਂਦਾ ਸੀ ਇੱਕ ਆਸਣ ਸੀ ਬਿਲਕੁਲ ਸੋ ਉਹ ਆਸਣ ਹੁਣ ਆਸਣੋਂ ਕਮਰੇ 'ਚ ਹੀ ਆ ਗਿਆ ਹੁਣ ਬੈੱਡ ਤੋਂ ਉੱਠਦੇ ਐ ਤੇ ਦੋ ਪੈਰ ਤੁਰਨਾ ਨਹੀਂ ਤੇ ਲੈਟਰੀਟਰੀ 'ਚ ਜਾ ਬੜੇ ਉਸੇ ਜਾ ਕੇ ਐਵੇਂ ਤੱਕਾ ਕਰੀ ਜਾਣਾ ਗੱਲ ਬਾਨੀ ਨਹੀਂ ਕੇ ਕਹਿਣਾ ਠੀਕ ਹੈ ਅੰਦਰ ਛੱਲੇ ਜਾਂਦਾ ਕਿ ਦੇ ਨਾਲ ਅੰਦਰ ਛੱਲੇ ਜਾਂਦੇ ਐ ਫਾਈਲਸ ਜਿਹੜੀ ਫਾਈਲਸ ਹੋ ਜਾਂਦੀ ਐ ਕਲਾਈਟਸ ਹੋ ਜਾਂਦਾ ਜਿਹਨੂੰ ਸੰਗ ਰਹਿਣੀ ਕਹਿੰਦੇ ਫਸਟੂਲਾ ਹੋ ਜਾਂਦਾ ਅੱਗੇ ਤੋਂ ਕਈ ਬਿਮਾਰੀਆਂ ਦੇ ਨਾਲ ਅੱਗੇ ਤੋਂ ਕਿ ਆਪਾਂ ਨਾਲ ਜੋੜਦੇ ਜਾਵਾਂਗੇ ਅੱਜ ਪੇਟ ਦੀ ਗੱਲ ਕਰ ਰਹੇ ਜੀ ਤੋ ਦੇਖੋ ਕਿ ਜਦੋਂ ਕਬਜ ਹੋ ਜਾਂਦੀ ਹੈ ਤੇ ਕਬਜ ਦੇ ਨਾਲ ਕਿੰਨੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਸੋ ਜੇ ਤੁਸੀਂ ਕਬਜ ਨੂੰ ਕੰਟਰੋਲ ਕਰ ਲਓ ਤੇ ਤੁਸੀਂ ਆਪਣੇ ਖਾਣ ਪੀਣ ਦੇ ਸਿਸਟਮ ਨੂੰ ਹੀ ਕੰਟਰੋਲ ਕਰ ਲਓ ਤੇ ਤੁਹਾਨੂੰ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਜ਼ਿੰਦਗੀ ਹੈ ਉਹ ਲੰਘ ਸਕਦੀ ਹੈ ਔਰ ਤੁਸੀਂ ਜਿਹੜੇ ਆਪਾਂ ਕੋਕ ਪੈਪਸੀਆਂ ਪੀਂਦੇ ਆ ਇਹਨਾਂ ਨੂੰ ਨਾ ਪੀਆ ਕਰੋ ਗਰਮ ਪਾਣੀ ਪੀਆ ਕਰੋ ਘੁੱਟ-ਘੁੱਟ ਕਰਕੇ ਪੀਆ ਕਰੋ ਪਾਣੀ ਤੇ ਫਿਰ ਤੁਹਾਡਾ ਜਿਹੜੀ ਸਿਹਤ ਹੈ ਉਹ ਬਹੁਤ ਚੰਗੀ ਹੈ ਜੇ ਜਿਹੜਾ दारू ਸਿੱਕਾ ਹੈਗਾ ਇਹ ਜਿਹਨਾਂ ਦੇ পেট ਵੱਡੇ ਆ ਉਹ दारू ਦਾ ਬਿਲਕੁਲ ਨਾ ਪੀਣ ਕਿਉਂਕਿ ਉਹਦੇ ਨਾਲ ਕੋਲੇਸਟ੍ਰੋਲ ਵੀ ਵੱਧਦਾ ਤੇ ਨਾਲ ਲਿਵਰ ਵੀ ਫੈਟੀ ਹੁੰਦਾ ਜਦੋਂ ਲਿਵਰ ਫੈਟੀ ਹੋ ਜਾਂਦਾ ਤੇ ਇੱਥੇ ਦੇ ਡਾਕਟਰਾਂ ਕੋਲ ਲਿਵਰ ਫੈਟੀ ਦਾ ਕੋਈ ਇਲਾਜ ਨਹੀਂ ਉਹ ਜਦੋਂ ਫੈਟੀ ਹੋ ਗਿਆ ਉਹ ਕਹਿੰਗੇ ਜੀ ਬਸ ਆਪਣੀ ਖਰਾਕ ਦੇ ਕੰਟਰੋਲ ਕਰ ਲਓ ਇਲਾਜ ਸਾਡੇ ਕੋਲ ਦਵਾਈ ਕੋਈ ਨਹੀਂ ਪਰ ਆਯੁਰਵੈਦ ਦੇ ਵਿੱਚ ਜਿਨ੍ਹਾਂ ਦਾ ਲਿਵਰ ਫੈਟੀ ਆ ਜਿਨ੍ਹਾਂ ਨੂੰ ਬਾਰ-ਬਾਰ ਗੈਸ ਬੰਦੀ ਆ ਐਸਿਡ ਬੰਦ ਆ ਆਉਂਦੀਆਂ ਆ ਉਹਨਾਂ ਨੂੰ ਜ਼ਰੂਰ ਆਪਣੇ ਕਿਸੇ ਚੰਗੇ ਵੈਦ ਕੋਲ ਹਕੀਮ ਕੋਲ ਜ਼ਰੂਰ ਜਾ ਕੇ ਹਰਬਲਿਸਟ ਕੋਲ ਜਾ ਕੇ ਆਪਣਾ ਚੈੱਕਅਪ ਕਰਾ ਲੈਣਾ ਚਾਹੀਦਾ ਤਾਂ ਕਿ ਜਿਹੜਾ ਉਹਦਾ ਟ੍ਰੀਟਮੈਂਟ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਹੋ ਸਕੇ ਤੇ ਆਪਣਾ ਜ਼ਿੰਦਗੀ ਜਿਹੜੀ ਉਹ ਚੰਗੀ ਜੀ ਸਕੇ ਵਪਾਰਕ ਸੰਦੇਸ਼ਾਂ ਤੋਂ ਬਾਅਦ ਦੁਆਰਾ ਫੇਰ ਆਮ ਰੋਜ਼ਮਰ ਦੀ ਜ਼ਿੰਦਗੀ ਚ ਵਧੀਆ ਖੁਰਾਕ ਦੇ ਨਾਲ ਵੈਦ ਸਾਹਿਬ ਤੋਂ ਕੁਝ ਜੜੀਆਂ ਬੂਟੀਆਂ ਵੀ ਪੁੱਛਾਂਗੇ ਕਿਹੜੀਆਂ ਲਈ ਜਾ ਸਕਦੇ ਕਿਹੜਾ ਆ ਕੋਈ ਫੱਕੀ ਲਈ ਜਾ ਸਕਦੀ ਹੈ ਕੀ ਕੀ ਤੌਰ ਤੂੰਬੇ ਅੱਗੇ ਲੈਂਦੇ ਸੀ ਲੋਕ ਸਾਰੀਆਂ ਚੀਜ਼ਾਂ ਆਪਾਂ ਵਿਸਰ ਗਈਆਂ ਉਹ ਦੱਸਣਗੇ ਵਪਾਰਕ ਸੰਦੇਸ਼ਾ ਤੋਂ ਬਾਅਦ ਬੈਦਰੂਬਲ ਜੀ ਮੇਰੇ ਨਾਲ ਨੇ ਤੇ ਇਹਨਾਂ ਦਾ ਜਿਹੜਾ ਕਲੀਨਿਕ ਹੈ ਸਕਾਟ ਰੋਡ ਤੇ 94 ਸੀ ਉਹ ਵੀ ਬਦਲ ਗਿਆ ਹੁਣ ਪਾਇਲ ਬਿਜ਼ਨਸ ਸੈਂਟਰ ਚ ਉਹਦਾ ਵੀ ਐਡਰੈਸ ਦੇਣਗੇ ਬੁੱਧਵਾਰ ਤੇ ਵੀਰਵਾਰ ਦੋ ਛੁੱਟੀਆਂ ਹੁੰਦੀਆਂ 5 ਦਿਨੇ ਖੁੱਲੇ ਹੁੰਦੇ ਨੇ ਵਪਾਰਕ ਸੰਦੇਸ਼ਾ ਤੋਂ ਬਾਅਦ ਵਾਪਸ ਆਉਂਦੇ ਕਈਆਂ ਬਿਮਾਰੀਆਂ ਦੇ ਬਾਰੇ ਬੈਜ ਜੀ ਗੱਲਬਾਤ ਕਰ ਰਹੇ ਨੇ ਜੇ ਪੇਟ ਗੜਬੜ ਹੁੰਦਾ ਉਹਦੇ ਬਾਅਦ ਕਬਜ਼ਾ ਹੈ ਕਬਜ਼ਬਾਦ ਅਲਸਟ ਆਫ ਕਲਾਈਟਸ ਅ ਜੀ ਨੂੰ ਸੰਗਰਹਿਣੀ ਕਹਿੰਦੇ ਨੇ ਬੜੀਆਂ ਪਾਈਲਸ ਨੇ ਬਵਾਸੀਰ ਆ ਲੋਕ ਦੁਖੀ ਨੇ ਪਹਿਲੀ ਤਾਂ ਗੱਲ ਉਹ ਕਹਿੰਦੇ ਨੇ ਖਾਣਾ ਠੀਕ ਕਰੋ ਖਾਣਾ ਵਧੀਆ ਹੋਵੇ ਗਰਮ ਪਾਣੀ ਪੀਓ ਅੱਛਾ ਜੀ ਸਾਰਾ ਕੁਝ ਕਰਨ ਦੇ باوجود ਇੱਕ ਵੈਦ ਕੋਲੋਂ ਕੋਈ ਨੁਸਖੇ ਹੁੰਦੇ ਨੇ ਵੀ ਆ ਆ ਕਰ ਲਿਓ ਜਿਵੇਂ ਆ ਔਲੇ ਹਰੜ ਬਿਹੜਾ ਤੁਸੀਂ ਕਹਿ ਦਿੱਤੇ ਉਹਨਾਂ ਦਾ ਅਨੁਪਾਤ ਕੀ ਆ ਜਾਂ ਕਿਹੜੀ ਚੀਜ਼ ਆ ਜਿਹੜੀ ਰੋਜ਼ ਬੜਾ ਜ਼ਿੰਦਗੀ ਦੇ ਵਿੱਚ ਵਧੀਆ ਖਾਣੇ ਨਾਲ ਵੀ ਕੁਝ ਲਿਆ ਜਾਵੇ ਜਾਂ ਜ਼ਰੂਰਤੇ ਨਹੀਂ ਹੁੰਦੀ ਵੇਖੋ ਮੈਂ ਤਾਂ ਪਹਿਲੇ ਦੱਸਦੀ ਗੱਲ ਨਾਲ-ਨਾਲ ਹੀ ਬਿਮਾਰੀਆਂ ਦੇ ਨਾਲ-ਨਾਲ ਹੀ ਇਲਾਜ ਹੂੰ ਕਿ ਜੇ ਕਬਜ ਹੈਗੀ ਆ ਹਰੜ ਬਿਹੜਾ ਆਮਲੇ ਬਰਾਬਰ ਦੇ ਤੇ ਸਮਾ ਦੇ ਪੱਤੇ ਬਰਾਬਰ ਦੇ ਘੋਟ ਕੇ ਰੱਖ ਲਓ ਰਾਤ ਨੂੰ ਚਮਚਾ ਖਾ ਲਓ ਜੇ ਤੁਹਾਨੂੰ ਨਹੀਂ ਹੁੰਦਾ ਇਸ ਬਹੋਲ ਦਾ ਛਿਲਕਾ ਖਾ ਲੋ ਦਿਲ ਤੋਂ ਘਰੇਲੂ ਇਲਾਜ ਸੋ ਇਹਦੇ ਵਿੱਚ ਇਹ ਸਾਰੇ ਫਰੂਟਸ ਹੈਗੇ ਆ ਜਿਹੜੇ ਸਨਾਹ ਪੱਤੇ ਹੈਗੇ ਆ ਸੋ ਸਾਰੀਆਂ ਚੀਜ਼ਾਂ ਜਿਹੜੀਆਂ ਸਾਰਿਆਂ ਨੇ ਜਮਾਈਆਂ ਸੋ ਜੇ ਤੁਸੀਂ ਇਹਨੂੰ ਰੈਗੂਲਰ ਲੈਣੇ ਆ ਅਰੜ ਬਿਹੜੇ ਆਮਲੇ ਤ੍ਰਿਫਲਾ ਚੂਰਨ ਕੱਲਾਈ ਲੈਣੇ ਆ ਇਹਦਾ ਇੱਕ ਫਾਇਦਾ ਨਹੀਂ ਕਿ ਕਬਜ ਦੇ ਠੀਕ ਕਰਦਾ ਅੱਖਾਂ ਦੀ ਨਿਗਾ ਨੂੰ ਵਧਾਉਂਦਾ ਦਿਮਾਗ ਨੂੰ ਠੰਡਾ ਰੱਖਦਾ ਹੈ ਬਲੱਡ ਪ੍ਰੈਸ਼ਰ ਨੂੰ ਘਟਾਉਂਦਾ ਹੈ ਪੇਟ ਨੂੰ ਸਾਫ਼ ਰੱਖਦਾ ਹੈ ਐਸ ਐਸ ਡੀ ਟੀ ਨੂੰ ਘਟਾਉਂਦਾ ਹੈ ਸੋ ਕਿੰਨੇ ਇਹਦੇ ਸੈਕੜੇ ਫਾਇਦੇ ਜੇ ਗਿਣਨ ਲੱਗ ਜਾਈਏ ਤੇ ਕਿੰਨੇ ਕਿੰਨੇ ਫਾਇਦੇ ਸੋ ਕੱਲਾ ਤ੍ਰਿਫਲਾ ਤੇ ਜਦੋਂ ਸਨਾ ਦੇ ਪੱਤੇ ਵਿੱਚ ਪੈ ਜਾਂਦੇ ਆ ਤੇ ਫਿਰ ਬਹੁਤ ਵਧੀਆ ਚੀਜ਼ ਬਣ ਜਾਂਦੀ ਹੈ ਤੇ ਇਸ ਜਾਂ ਇਸ ਭਗੋਲ ਦਾ ਛਿਲਕਾ ਜੇ ਤੁਹਾਡੇ ਗੈਸ ਬੰਦੀ ਹੈ ਤੇ ਮੈਂ ਚਟਨੀ ਤੁਹਾਨੂੰ ਦਿੱਤੀ ਹੈ ਸੋ ਇਹ ਚਟਨੀ ਤੁਸੀਂ ਖਾ ਲਓ ਚਟਨੀ ਖਾਓ ਹੁਣ ਸੜਿਆ ਚਾਰ ਆਪਾਂ ਖਾਣੇ ਆ ਜਿਹੜਾ ਸਾਲ ਦਾ 2 ਸਾਲ ਦਾ ਬਣਾ ਕੇ ਰੱਖਿਆ ਫਿਰਕੇ ਦੇ ਵਿੱਚ ਉਹ ਅਸੀਂ ਖਾਣੇ ਆ ਪਰ ਉਹ ਖਾ ਕੇ ਤੁਸੀਂ ਦੇਖੋਗੇ ਕਿੰਨਾ ਤੁਹਾਡਾ ਨੁਕਸਾਨ ਹੁੰਦਾ ਤੁਸੀਂ ਤਾਜੀ ਚਟਨੀ ਬਣਾਓ ਅੱਜ ਬਣਾ ਲਓ ਕੱਲ ਪਰਸੋਂ ਤੱਕ ਚੌਥਾ ਖਾ ਲਓ ਉਹਨੂੰ ਭਾਵੇਂ ਤੁਸੀਂ ਪਰ ਤਾਜੀ ਤੇ ਹੈ ਸੋ ਕਿੰਨੇ ਉਹਦੇ ਫਾਇਦੇ ਹੈ ਸੋ ਉਹਦੇ ਵਿੱਚ ਤੁਸੀਂ ਧਨੀਆ ਜ਼ਰੂਰ ਪਾਓ ਵਿੱਚ ਉਹਦੇ ਆਪਣੇ ਪੁਦੀਨਾ ਪਾਓ ਹਰਾ ਪਿਆਜ਼ ਪਾ ਲਓ ਨਾਰਦਾਣਾ ਪਾ ਲੋ ਕਾਲਾ ਨਮਕ ਪਾ ਲੋ ਬਜੀ ਨਿੰਬੂ ਨੂੰ ਚੋੜ ਲੋ ਬਸ ਬਸ ਤੁਹਾਡੀ ਚਟਨੀ ਤਿਆਰ ਅੱਛਾ ਤਰਕਟੂ ਜਿਹੜਾ ਜੀ ਜਿਹਦੇ ਵਿੱਚ ਕਾਲੀਆਂ ਮਿਰਚਾਂ ਮਗਨ ਤੇ ਤੇ ਫਿਰ ਦੂਜੇ ਪਾਸੇ ਨੂੰ ਚਲ ਜਾਂਦਾ ਤਰਕਟਾ ਜਦੋਂ ਹੈਗਾ ਉਹ ਇਸ ਫਾਰਮੂਲੇ 'ਚ ਨਹੀਂ ਆਉਂਦਾ ਉਹ ਪੇਟ ਲਈ ਆ ਹਾਂ ਉਹ ਪੇਟ ਲਈ ਪੇਟ ਨੂੰ ਵੀ ਸਾਫ਼ ਕਰਦਾ ਜਿਹੜਾ ਬਾਈਬਾਦੀ ਵਾਲਾ ਤੇ ਬਾਕੀ ਉਹ ਦਰਦਾਂ ਵਾਲੇ ਪਾਸੇ ਨੂੰ ਵੀ ਚਲੇ ਜਾਂਦਾ ਠੀਕ ਹੈ ਜੀ ਤੇ ਜਿਹੜਾ ਹੈਗਾ ਉਹ ਇਹ ਤਰਕੂਟਾ ਵੀ ਇੱਕ ਚੁਰਕਾ ਹੁੰਦਾ ਹੈ। ਉਹ ਚੁਰਕਾ ਜਿਹੜਾ ਪੇੜ ਨੂੰ ਬਹੁਤ ਸਾਫ਼ ਕਰਦਾ ਹੈ, ਠੀਕ ਰੱਖਦਾ ਹੈ। ਉਹ ਚੁਰਕਾ ਜਿਹੜਾ ਉਹ ਹੀ ਪੱਤੇ ਚੁਰਕਾ ਗਿਆ, ਉਹ ਬਣ ਗਿਆ। ਸਾਰੀਆਂ ਜਿਹੜੀਆਂ ਆਯੁਰਵੇਦ ਚੀਜ਼ਾਂ ਹੈਗੀਆਂ, ਉਹ ਦੇਖੋ ਪੇੜ ਦੇ ਨਾਲ ਹੀ ਲੱਗਦੀ ਜਲੋਧ। ਹੂੰ ਜਲੋਧਰ ਕੀ ਹੈ ਕਿ ਪੇੜ ਦੇ ਵਿੱਚ ਪਾਣੀ ਭਰ ਜਾਂਦਾ। ਕਈਆਂ ਦਾ ਪੇੜ ਦੇਖੋ ਬੜਾ ਵੱਡਾ ਹੁੰਦਾ, ਛਲ ਛਲ ਕਰਦਾ ਹੁੰਦਾ। ਪੇੜ ਦੀ ਵਧੀ ਜਾਂਦਾ। ਸੋ ਰੋਗ ਆਏ। ਰੋਗ ਹੈ ਜਲੋਧਰ ਜਲੋਧਰ ਕਹਿੰਦੇ। ਸੋ ਮੈਂ ਛੋਟਾ ਜਿਹਾ ਹੁੰਦਾ ਸੀ ਮੈਂ ਗੱਲ ਸੁਣਾ ਦਿੰਨਾ ਸ਼ਾਰਟਕਟ ਛੋਟਾ ਜਿਹਾ ਹੁੰਦਾ ਸੀ ਇੱਕ ਜਲੋਧਰ ਦੀ ਲੇਡੀਜ਼ ਨੂੰ ਲੈ ਕੇ ਉਦੋਂ ਗੱਡੇ ਚੱਲਦੇ ਹੁੰਦੇ ਸੀ ਕਾਰਾਂ ਨਹੀਂ ਸੀ ਹੁੰਦੀਆਂ ਤੇ 100-100 ਗੱਡਾ ਸਾਡੇ ਰਹਿੰਦਾ ਸੀ ਖੜਾ ਰਹਿੰਦਾ ਸੀ ਤੇ ਉਦੋਂ ਲੋਕ ਵਿਹਲੇ ਹੋ ਕੇ ਆ ਜਾਂਦੇ ਸੀ ਗੱਡੇ ਤੇ ਆਪਣਾ ਸਾਰਾ ਜਿਗਾੜ ਰੱਖ ਲੈਣਾ ਰਜਾਈਆਂ ਰਜੋਈਆਂ ਜੋ ਵੀ ਗਰਮੀਆਂ ਦੇ ਦਿਨ ਤੇ ਸਾਰੇ ਉੱਪਰ ਬੋਰੀ ਬਿਸਤਰਾ ਲੱਦਿਆ ਹੋਣਾ ਤੇ ਜਾ ਕੇ ਟਾਲੀਆਂ ਦੇ ਛਾਵੇਂ ਚੱਲੇ ਜਾਂ ਜਿੱਦੇ ਡਰਕਤਾਂ ਦੇ ਥ ਜਨਾਨੀ ਨੂੰ ਲੈ ਕੇ ਆਏ ਪੇਟ ਉਹਦਾ ਇੰਨਾ ਫੁੱਲਿਆ ਕਿ ਤੁਸੀਂ ਗੱਲ ਛੱਡ ਦਿਓ ਤੇ ਮਰਨ ਕਿਨਾਰੇ ਕਹਿੰਦੇ ਜੀ ਬਸ ਇਹਦਾ ਹੁਣ ਉਥੇ ਤੁਸੀਂ ਲੈ ਜਾਓ ਤੇ ਇਹ ਠੀਕ ਹੋ ਸਕਦੀ ਹੈ ਜੇ ਉਹਨਾਂ ਕਹਿ ਤਾ ਲੈ ਕੇ ਆਏ ਦੇਖਿਆ ਉਹਦੀ ਨਵਾਂ ਦੇਖੀ ਕਹਿੰਦੇ ਬੀਬੀ ਗੱਲ ਇਹ ਠੀਕ ਤੇ ਜਾਉ ਹੋ ਪਰ ਤੈਨੂੰ ਗਾਈ ਦਾ ਪਿਸ਼ਾਬ ਪੀਣਾ ਪੈਣਾ ਹਾਲੇ ਹੋਈ ਹੈ ਦੇਸੀ ਗਾਈ ਦਾ ਪਿਸ਼ਾਬ ਉਹ ਕਹਿੰਦੀ ਜੀ ਕਿ ਮੈਂ ਮਰਨੋਂ ਮਰ ਜਾਾਂਗੀ ਜੀ ਇਹ ਪਿਸ਼ਾਬ ਮੈਂ ਪੀਣਾ ਤੇ ਚਲੋ ਹੁਣ ਮੇਰਾ ਦੇਣਾ ਖੀਲ ਆ ਗਿਆ ਤੇ ਚਲੋ ਛੱਡੋ ਉਹ ਕਹਿੰਦਾ ਠੀਕ ਹੈ ਜੀ ਚਲੋ ਤੁਹਾਨੂੰ ਹੋਰ ਦਵਾਈ ਬਣਾ ਦਿੰਦੇ ਹੂੰ ਉਹ ਲੱਗੇ ਕਹਿੰਦੇ ਜੀ ਹੁਣ ਗੱਡਾ ਆਪਣਾ ਲੈ ਜਾਓ ਤੇ ਦਵਾਈ ਤੁਸੀਂ ਜਿਹੜੀ ਆ ਸ਼ਾਮ ਨੂੰ ਲੈ ਜੀ ਤੁਹਾਨੂੰ ਪੀਣ ਵਾਸਤੇ ਵੀ ਦਵਾਈ ਬਣਾ ਦਿੰਨੇ ਆ ਤੇ ਖਾਣ ਵਾਸਤੇ ਵੀ ਬਣਾ ਦਿੰਨੇ ਪਰ ਉਹਨਾਂ ਨੂੰ ਪਤਾ ਸੀ ਸਾਡੇ ਸਾਡੇ ਫਾਦਰ ਨੂੰ ਕਿ ਇਹ ਉਹਦੇ ਤੋਂ ਬਿਨਾ ਠੀਕ ਨਹੀਂ ਹੋਣੀ ਮੈਨੂੰ ਕਹਿੰਦੇ ਜੀ ਜਦੋਂ ਗਿਆ ਮੈਂ ਛੋਟਾ ਜਿਹਾ ਹੁੰਦਾ ਸੀ ਸਕੂਲੋਂ ਆਇਆ ਤੇ ਮੈਨੂੰ ਕਹਿੰਦੇ ਵੀ ਆ ਜੱਗ ਫੜ ਤੇ ਆ ਨਾਲ ਡੈਰੀ ਹੈ ਸਰਜੀਤ ਦੀ ਤੇ ਉਥੇ ਜਾ ਕੇ ਲੈ ਆ ਮੈਂ ਉਥੇ ਜਾ ਕੇ ਬਹਿ ਗਿਆ ਉਹ ਨਾ ਗਾਂ ਹੀ ਪਿਸ਼ਾਬ ਕਰੇ ਨਾ ਮੇਰੀ ਜਾਨ ਛੁੱਟੇ ਉਸੇ ਅੱਧਾ ਘੰਟਾ ਮੈਂ ਬੈਠਾ ਰਿਹਾ ਇੱਕ ਗਾਂ ਨੇ ਪਿਸ਼ਾਬ ਕੀਤਾ ਮੈਂ ਜੱਗਦੂਕ ਲੈ ਕੇ ਭੱਜਾ ਭੁੱਜਾ ਉਹ ਅੱਧਾ ਘੜਲ ਡਲ ਗਿਆ ਪੂਝ ਮਾਰੀ ਮੈਨੂੰ ਲਵੇਟਦਾ ਸੋ ਦੂਜੀ ਗਾਂ ਨੇ ਪਿਸ਼ਾਬ ਕੀਤਾ ਮੈਂ ਜੀ ਉਹ ਜੱਗ ਭਰ ਕੇ ਜੀ ਲਿਆਂਦਾ ਲਿਆ ਕੇ ਜੀ ਉਹਨਾਂ ਨੇ ਜੀ ਉਹਦੇ 'ਚ ਕੋਈ ਕਲਰ ਵਗੈਰਾ ਪਾ ਕੇ ਕੋਈ ਦਵਾਈ ਸ਼ਵਾਈ ਪਾ ਕੇ ਉਹਦਾ ਟੇਸ ਚੇਂਜ ਕਰਕੇ ਉਹਨੂੰ ਦੇ ਕਹਿੰਦੇ ਜੀ ਆਹ ਲੈ ਜਾਓ ਅੱਧ ਅੱਧ ਗਲਾਸੀ ਇਹਨੂੰ ਸਵੇਰੇ ਸ਼ਾਮ ਪੀ ਜਾਓ ਤੇ 15 ਦਿਨ ਲੈ ਕੇ ਆਏ ਉਹ 15 ਦਿਨ ਉਹਨੂੰ ਲੈ ਕੇ ਆਏ ਤੇ ਬੀਬੀ ਦੇ ਆ ਕੇ ਤੁਰ ਕੇ ਉਹ ਕਹਿੰਦੀ ਡਾਕਟਰ ਜੀ ਵੈਦ ਜੀ ਉਹੋ ਹੀ ਦਵਾਈ ਬਣਾ ਦਿਓ ਪੀਣ ਵਾਲੀ ਕਿ ਮੈਂ ਬਸ ਉਹਦੇ ਵਾਲੇ ਬੱਜ ਗਈ ਕਹਿੰਦੀ ਦੋ ਵਾਰੀ ਪੀਤੀ ਤੇ ਇੰਨਾ ਕ ਪਾਣੀ ਮੇਰੇ ਅੰਦਰੋਂ ਬਾਹਰ ਆਣਾ ਸ਼ੁਰੂ ਹੋ ਗਿਆ ਕਿ ਪਾਣੀ ਦੀਆਂ ਤੇ ਥੈਲੀਆਂ ਦੀਆਂ ਥੈਲੀਆਂ ਹੀ ਨਿਕਲ ਗਈਆਂ ਸੋ ਦੇਖੋ ਕਿ ਇੱਕ ਚੀਜ਼ ਵੈਦ ਦਾ ਤਜਰਬਾ ਤੇ ਨਿੱਕੀ ਜੀ ਗੱਲ ਕਿ ਜਲੋਧਰ ਮਰਨ ਕਿਨਾਰੇ ਸੋ ਇੱਕੋ ਚੀਜ਼ ਨਾਲ ਠੀਕ ਹੋ ਗਈ ਸੋ ਇਹੋ ਜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕੁਦਰਤ ਦੀਆਂ ਸਾਡੀਆਂ ਦਿੱਤੀਆਂ ਜੜੀਆਂ ਬੂਟੀਆਂ ਖਾਣ ਪੀਣ ਕਿ ਸਾਡੇ ਅਸੀਂ ਇਹਦੇ ਨਾਲ ਹੀ ਠੀਕ ਰਹਿ ਸਕਦੇ ਆ ਜੇ ਅਸੀਂ ਸਹੀ ਤਰੀਕੇ ਨਾਲ ਖਾਈਏ ਸਹੀ ਤਰੀਕੇ ਨਾਲ ਐਕਸਰਸਾਈਜ਼ ਕਰੀਏ ਹੁਣ ਇੱਕ ਬੰਦਾ ਜਿਹੜਾ ਸਵੇਰੇ ਉੱਠ ਕੇ 2 ਵਜੇ ਹਾਲ ਵਾਹਂਦੇ ਸੀ ਹਾਲ ਵਾਹਂਦੇ ਸੀ 4 ਕ ਸੀ 4 ਕ ਨਾਲ ਜਿਹੜੀ ਹੈ 17 ਮੀਲ 34 ਕਿਲੋਮੀਟਰ ਬੰਦੀ ਹੈ ਤੇ ਜਿਹੜੇ ਬੰਦੇ ਨੇ ਸਵੇਰੇ 34 ਕਿਲੋਮੀਟਰ ਚੱਲ ਲਿਆ ਉਹ ਆਪੀ ਤੁਹਾਨੂੰ ਜੋ ਮਰਜ਼ੀ ਦੇ ਦਿਓ ਤੁਸੀਂ ਸਭ ਕੋ ਹਜਮ ਹੋ ਜਾਂਦਾ ਕਿ ਉਹਦੇ ਢਿੱਡ 'ਚ ਗੈਸ ਕਿੱਥੋਂ ਬਣ ਨਹੀਂ ਜਾਏ ਪੱਥਰ ਪਚਾ ਲਵੇ ਸੋ ਇਥੇ ਕੀ ਹੁੰਦਾ ਕਿ ਸਾਡਾ ਖਾਣਾ ਪੀਣਾ ਸਿਸਟਮ ਚੇਂਜ ਹੋ ਗਿਆ। ਇਧਰੋਂ 버ਗਰ ਫੜ ਲਿਆ, ਉਹਦੇ ਨਾਲ ਫਰੈਂਚ ਫਰਾਈਆਂ ਫੜ ਲਈਆਂ, ਉੱਤੋਂ ਦੀ ਕੋਕ ਫੜ ਲਿਆ, ਹজম ਕਰਨ ਵਾਸਤੇ ਪੀਜ਼ਾ ਖਾ ਲਿਆ। ਸਾਰੀਆਂ ਚੀਜ਼ਾਂ ਜਿਹੜੀਆਂ ਡਾਈਜੈਸਟ ਸਿਸਟਮ ਨੂੰ ਖਰਾਬ ਕਰਦੀਆਂ ਤੇ ਜੇ ਤੁਸੀਂ ਚੰਗਾ ਖਾਓਗੇ, ਸਲਾਦ ਖਾਓਗੇ, ਫਰੂਟ ਖਾਓਗੇ, ਉਹ ਚੰਗੀਆਂ ਚੰਗੀਆਂ ਚੀਜ਼ਾਂ ਖਾਓਗੇ ਤੇ ਉਹਦੇ ਨਾਲ ਸਾਡੀ ਸਿਹਤ ਵੀ ਚੰਗੀ ਰਹੇਗੀ ਤੇ ਉਹਦੇ ਨਾਲ ਨਾਲ ਸਾਡਾ ਖਾਣਾ ਪੀਣਾ ਤੇ ਡਾਈਜੈਸਟ ਸਿਸਟਮ ਤੇ ਸਾਡੀ ਗੈਸ ਦੀ ਪ੍ਰੋਬਲਮ ਜਿਹੜੀ ਹੈ ਉਹ ਠੀਕ ਰਹੇਗੀ ਜੇ ਤੁਹਾਡਾ ਗੈਸ ਠੀਕ ਰਹੇਗਾ ਤੁਹਾਡਾ ਦਿਮਾਗ ਠੀਕ ਰਹੇਗਾ ਤੁਹਾਨੂੰ ਗੁੱਸਾ ਨਹੀਂ ਆਏਗਾ ਜਦੋਂ ਗੁੱਸਾ ਨਹੀਂ ਆਏਗਾ ਤੇ ਫਿਰ ਘਰ ਦੇ ਵਿੱਚ ਵੀ ਸੁੱਖ ਸ਼ਾਂਤੀ ਰਹੂਗੀ ਤੇ ਇਹਦੇ ਨਾਲ ਨਾਲ ਜਿਹੜੇ ਤੁਹਾਡੇ ਸਿਸਟਮ ਹੈ ਬਾਡੀ ਦੇ ਜਿੰਨੇ ਆਰਗਨ ਹੈ ਲੀਵਰ ਹੈ ਲੀਵਰ ਦੇ ਨਾਲ ਡਾਈਜੈਸਟ ਸਿਸਟਮ ਹੈ ਪੇਟ ਦੇ ਸਿਸਟਮ ਹੈ ਜਾਂ ਬਾਇਓ ਲੈਕਟਡ ਹੈ ਜਾਂ ਲੀਵਰ ਦੇ ਪ੍ਰੋਟੀਨ ਮੈਟਾਬੋਲਿਜ਼ਮ ਹੈ ਇਹ ਸਾਰੇ ਆਰਗਨ ਜਿਹੜੇ ਤੁਹਾਡੇ ਪ੍ਰੋਪਰ ਕੰਮ ਕਰਨਗੇ ਤੇ ਤੁਸੀਂ ਆਪਣੇ ਆਪ ਪ੍ਰੋਪਰ ਤਰੀਕੇ ਦੇ ਨਾਲ ਚੰਗੀ ਜ਼ਿੰਦਗੀ ਜਿਓਗੇ ਸਾਰਾ ਦਿਨ ਤੁਹਾਡਾ ਚੰਗਾ ਨਿਕਲੇਗਾ ਜੇ ਤੁਹਾਨੂੰ ਸਵੇਰੇ ਲੈਟਰਨ ਆ ਜਾਂਦੀ ਹੈ ਤੇ ਸਾਰਾ ਦਿਨ ਤੁਸੀਂ ਫਰੈਸ਼ ਰਹਿੰਦੇ ਆ ਤੇ ਜੇ ਤੁਹਾਨੂੰ ਲੈਟ ਨਹੀਂ ਆਉਂਦੀ ਤੇ ਸਾਰਾ ਦਿਨ ਡਕਾੜੀ ਮਾਰਦੇ ਰਹਿੰਦੇ ਆ ਸੋ ਪੇਟ ਨੂੰ ਪੇਟ ਵਾਂਗੂ ਯੂਜ਼ ਕਰੋ ਪੇਟ ਨੂੰ ਸਪਲਾਈ ਦਾ ਗੇਟ ਨਾ ਬਣਾਓ ਇਹਨੂੰ ਵੇਟ ਨਾ ਵਧਾਓ ਆਪਣਾ ਤੇ ਪੇਟ ਵਾਸਤੇ ਜੇ ਤੁਹਾਡੇ ਕੋਲ ਨਹੀਂ ਕੰਟਰੋਲ ਹੁੰਦਾ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਤੇ ਉਹਦੇ ਵਾਸਤੇ ਤੁਸੀਂ ਸਾਡੇ ਨਾਲ ਸਲਾਹ مشورہ ਕਰ ਸਕਦੇ ਆ ਸਲਾਹ مشورے ਵਾਸਤੇ ਸਾਡੀ ਕੋਈ ਫੀਸ ਨਹੀਂ ਹੈ ਇਹ ਕਿ ਮੈਂ ਹਰ ਵਾਰੀ ਕਹਿੰਦਾ ਕਿ ਸਾਡੇ ਕੋਲ ਆਣ ਵਾਸਤੇ ਠੰਡਾ ਜਿਗੜਾ ਰੱਖਣਾ ਪਊਗਾ ਤਾਂ ਹੀ ਤੁਸੀਂ ਜੇ ਬਿਮਾਰੀ ਨੂੰ ਤੁਸੀਂ ਸਰੀਰ ਤੋਂ ਕੱਢਣਾ ਤੇ ਫਿਰ ਤੁਹਾਨੂੰ ਵੈਦ ਕੋਲ ਡਾਕਟਰ ਕੋਲ ਦੁਬਾਰਾ ਦੁਬਾਰਾ ਜਾਣਾ ਪਊਗਾ ਇੱਕ ਕਿਰਾਏ ਦਾ ਘਰ ਵੜ ਜਾਵੇ ਇੰਡੀਆ ਦੇ ਵਿੱਚ ਉਹਨੂੰ ਕੱਢਣ ਵਾਸਤੇ 5 ਸਾਲ 10 ਸਾਲ ਤਰੀਕਾ ਭੁਗਤਣੀਆਂ ਪੈਂਦੀਆਂ ਵਕੀਲਾਂ ਕੋਲ ਜਾਣਾ ਪੈਂਦਾ ਕੋਰਟ ਕਚਹਿਰੀਆਂ ਦੇ ਚੱਕਰ ਲਾਣੇ ਪੈਂਦੇ ਪੈਸੇ ਖਰਚੇ ਪੈਂਦੇ ਫਿਰ ਵੀ ਉਹ 10 ਸਾਲ ਬਾਅਦ ਨਹੀਂ ਨਿਕਲਦਾ ਉਹ ਪੈਸੇ ਦੇ ਕੇ ਹੀ ਕਢਣਾ ਪੈਂਦਾ ਤੇ ਜੇ ਇਹੋ ਹੀ ਹਾਲ ਬਿਮਾਰੀ ਦਾ ਕਿ ਜੇ ਸਰੀਰ ਤੋਂ ਤੁਸੀਂ ਬਿਮਾਰੀ ਨੂੰ ਕਢਣਾ ਤੇ ਹੌਸਲਾ ਰੱਖਣਾ ਪਊਗਾ ਬਾਰ-ਬਾਰ ਤੁਹਾਨੂੰ ਪੈਣੀਆਂ ਡਾਕਟਰ ਵੈਦ ਕੋਲ ਤੇ ਫਿਰ ਤੁਸੀਂ ਠੀਕ ਹੋ ਜਨਾ ਕਾਲੇ ਨਾ ਪਿਆ ਕਰੋ ਕਾਲੇ ਬਿਮਾਰ ਇਲਾਜ ਨਹੀਂ ਹੁੰਦਾ ਬਿਮਾਰੀ ਕੰਟਰੋਲ ਜ਼ਰੂਰ ਹੋ ਜਾਂਦੀ ਮਹੀਨੇ 2 ਮਹੀਨੇ ਚ ਪਰ ਸਾਡੇ ਜਣਾ ਚੋਂ ਨਹੀਂ ਨਿਕਲਦੀ ਸਮਾਂ ਲੱਗਦਾ ਸਮਾਂ ਲੱਗਦਾ ਤੇ ਇਹ ਜ਼ਰੂਰ ਸੋਚਿਆ ਕਰੋ ਕਿ ਜੇ ਤੁਸੀਂ ਦੇਸੀ ਇਲਾਜ ਕਰਾਣਾ ਤੇ ਸਮਾਂ ਲੱਗਦਾ ਹੈ ਸਮੇਂ ਦੇ ਨਾਲ ਤੁਸੀਂ ਕਰੋਗੇ ਤੇ ਜਰੂਰ ਠੀਕ ਹੋ ਜਾਓਗੇ ਜੇ ਕਾਲੀ ਦੇ ਵਿੱਚ ਮੀਨਾਖੰਡ ਖਾ ਕੇ 2 ਮਹੀਨੇ ਖਾ ਕੇ ਛੱਡ ਗਏ ਤੇ ਜਿਹੜੀ ਬਿਮਾਰੀ ਜਾਣ ਲੱਗੀ ਉਹ ਫਿਰ ਮੁੜਿਆ ਨਹੀਂ ਐ ਤੇ ਤੁਹਾਡੀ ਖਾਣ ਦਾ ਵੀ ਕੋਈ ਫਾਇਦਾ ਨਹੀਂ ਤੇ ਸਾਨੂੰ ਦੇਣ ਦਾ ਵੀ ਕੋਈ ਫਾਇਦਾ ਨਹੀਂ ਪੈਸੇ ਖਰਜਣ ਦਾ ਵੀ ਕੋਈ ਫਾਇਦਾ ਨਹੀਂ ਸੋ ਆਪਣਾ ਖਾਣ ਪੀਣ ਜਦੋਂ ਦੇਸੀ ਦਵਾਈਆਂ ਸ਼ੁਰੂ ਕਰਦੇ ਆ ਤੇ ਖਾਣ ਪੀਣ ਤੇ ਜਰੂਰ ਕੰਟਰੋਲ ਕਰਿਆ ਕਰੋ ਖਾਣ ਪੀਣ ਦੇ ਨਾਲ ਹੀ ਸਾਰੇ ਸਿਸਟਮ ਠੀਕ ਹੁੰਦੇ ਸੋ ਜੇ ਖਾਣ ਪੀਣ ਦਾ ਆਪਾਂ ਸਹੀ ਰੱਖਾਂਗੇ ਤੇ ਆਪ ਸਾਡੀ ਬਾਡੀ ਠੀਕ ਰਹੇਗੀ ਨੀਂਦ ਨੂੰ ਪੂਰੀ ਰੱਖਿਆ ਕਰੋ ਜੇ ਨੀਂਦ ਪੂਰੀ ਹੈ ਤੇ ਸਭ ਕੁਝ ਠੀਕ ਹੈ ਜੇ ਨੀਂਦ ਘਟ ਗਈ ਤੇ ਵਿਟਾਮਿਨ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਤੋ ਉਹ ਆਪਾਂ ਸਟ्रेस ਦੇ ਉੱਤੇ ਗੱਲਾਂ ਬਾਤਾਂ ਕਰਾਂਗੇ ਦਿਮਾਗ ਦੇ ਉੱਤੇ ਕਿ ਦਿਮਾਗ 'ਚ ਕੀ ਕਿਦਾਂ ਫੰਕਸ਼ਨ ਚੱਲਦੇ ਆ ਕਿਹੜੇ ਕਿਹੜੇ ਫੰਕਸ਼ਨ ਹੁੰਦੇ ਆ ਟੈਕਸਿਸ ਤੋਂ ਇੱਕ ਮੈਸੇਜ ਆਇਆ ਮੈਨੂੰ ਕੰਮ ਤੇ ਨੀਂਦ ਹੀ ਆਈ ਜਾਂਦੀ ਮਤਲਬ ਬੋਡੀ ਕੋਈ ਜਾਂ ਲੋ ਹੈ ਨੀਂਦ ਤਾਂ ਆ ਕੰਮ ਤੇ ਕੁਛ ਆ ਕੁਛ ਅਲੱਗ ਚੱਲਾਂਗੇ ਅੱਛਾ ਮੈਨੂੰ ਇੱਕ ਦੱਸਿਓ ਜੀ ਆਪਣੇ ਕੋਲ ਸਮਾਂ ਘੱਟ ਹੋ ਪਹਿਲਾਂ ਤਾਂ ਐਡਰੈਸ ਦਿਓ ਮੈਨੂੰ ਨਾਮ ਜਿਹੜਾ ਉਹਦਾ ਕਲੀਨਿਕ ਹੁਣ ਅਸੀਂ ਸਕਾਟ ਰੋਡ ਤੋਂ ਚੇਂਜ ਹੋ ਗਏ ਹਾਂ ਸੋ ਸਾਡਾ ਜਿਹੜਾ ਯੂਨੀਅਨ ਨੰਬਰ 31 31 ਨੰਬਰ ਹਾਂਜੀ ਸੋ 8430 128 ਸਟਰੀਟ ਦੇ ਉੱਤੇ ਖਾਲਸਾ ਬਿਜ਼ਨਸ ਏਂਟਰ ਦੇ ਅੰਦਰ ਅੱਛਾ ਖਾਲਸਾ ਬਿਜ਼ਨਸ ਏਂਟਰ ਚਲੇਗਾ ਜੀ ਸੋ ਅੰਦਰ ਜਾ ਕੇ ਬਿਲਕੁਲ ਖੁੰਜੇ ਦੇ ਵਿੱਚ ਲੱਗ ਗਏ ਸੋ ਉੱਥੇ ਤੁਸੀਂ ਲੱਭਦੇ ਲੈਣਾ ਹੀ ਮੈਨੂੰ ਪਤਾ ਸੋ ਪਰਲੇ ਵਾਲੇ ਪਾਸੇ ਜਿੱਥੇ ਟਾਲੀ ਆ ਉਧਰ ਹਾਂ ਬਿਲਕੁਲ ਜੀ ਤੁਸੀਂ ਅੰਦਰ ਵੜਦੇ ਆ ਠੀਕ ਹੈ ਬਾਹਰੋਂ ਵੀ ਪਤਾ ਲੱਗਦਾ ਜਾਣਾ ਕਿ ਇੱਥੇ ਹੀ ਆਪਾਂ ਠੀਕ ਹੈ ਸੋ ਉੱਥੇ ਆਪਾਂ ਕੱਲ ਤੋਂ ਆਪਣਾ ਜਿਹੜਾ ਡੇਰਾ ਉੱਥੇ ਲਾ ਲਿਆ ਉੱਥੇ ਹਾਂਜੀ ਸੋ ਉੱਥੇ ਪ੍ਰੋਬਲਮ ਆਉਂਦੀ ਸੀ ਤੇ ਜਗਾ ਵੀ ਉੱਚੀ ਨਹੀਂ ਸੀ ਬਹੁਤ ਵੀਰ ਭੈਣਾਂ ਨੂੰ ਵੀ ਪ੍ਰਸਮਸਿਆ ਹੁੰਦੀ ਸੀ ਬਿਲਕੁਲ ਤੇ ਸਨੋ ਦੇ ਵਿੱਚ ਵੀ ਬੜੀ ਸਮੱਸਿਆ ਪਈ ਤੋ ਇਹ ਕਰਕੇ ਫਿਰ ਪੱਕਾ ਹੀ ਜਿਗਾਰ ਜਿਹੜਾ ਆਪਾਂ ਇਹ ਬਣਾਤਾ ਸੋ ਕਿਸੇ ਵੀਰ ਭੈਣ ਨੇ ਕੋਈ ਵੀ ਗੱਲਬਾਤ ਨਾਲ ਕਰਨੀ ਹੋਵੇ ਤੇ ਫੋਨ ਨੰਬਰ 604 445 4700 ਸੰਟੋ ਦੇ ਵਿੱਚ ਜੇ ਗੱਲਬਾਤ ਕਰਨੀ ਹੋਵੇ ਉੱਥੇ ਆਫਿਸ 905 874 333 ਜੇ ਕਿਸੇ ਨੂੰ ਆਪਣੀ ਬਿਮਾਰੀ ਆਪ ਹੀ ਲੱਭਣੀ ਹੈ ਤੇ ਸਾਡੀ ਵੈਬਸਾਈਟ a1herbal.ca ਤੇ ਜਾ ਕੇ ਆਪਣੀ ਬਿਮਾਰੀ ਲੱਗ ਸਕਦਾ ਉਹਦੇ ਤੇ ਪੂਰਾ ਪੰਜਾਬੀ ਅੰਗਰੇਜ਼ੀ ਦੇ ਵਿੱਚ ਅਸੀਂ ਪੂਰਾ ਸਮਝਾਇਆ ਹੈ ਕਿ ਕਿਦਾਂ ਕਿਦਾਂ ਬਿਮਾਰੀ ਹੈ ਤੇ ਉਹਦਾ ਕੀ ਇਲਾਜ ਨਾ ਵੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਾਕੀ ਜਿਹੜੀਆਂ ਦਵਾਈਆਂ ਅਸੀਂ ਦੇਨੇ ਆ ਉਹ ਸਾਰੀਆਂ ਅਸੀਂ ਆਪ ਹੀ ਬਣਾਨੇ ਆ ਇੱਕ ਵੀ ਦਵਾਈ ਬਾਹਰੋਂ ਬਣੀ ਨਹੀਂ ਦਿੰਦੇ ਕਿਸੇ ਨੂੰ ਵੀ। ਸੋ ਆਪਣੀ ਵਾਸਤੇ ਹੀ ਬਣਾਨੇ ਵੇਚਣ ਵਾਸਤੇ ਨਹੀਂ ਬਣਾਉਂਦੇ। ਗਰੋਸਰੀ ਦੀਆਂ ਆਈਟਮਾਂ, ਗਰੋਸਰੀ ਸਟੋਰਾਂ ਤੇ ਵੇਚਣ ਲਈ ਜਾਂ ਮੈਡੀਕਲ ਸਟੋਰਾਂ ਤੇ ਵੇਚਣ ਲਈ ਜਾਂ ਹਰਬਲ ਸਟੋਰਾਂ ਤੇ ਵੇਚਣ ਲਈ ਉਹ ਦਵਾਈਆਂ ਅਸੀਂ ਨਹੀਂ ਬਣਾਉਂਦੇ। ਸੋ ਸਿਰਫ ਸਿਰਫ ਅਸੀਂ ਆਪਣੇ ਸਟੋਰਾਂ ਦੇ ਉੱਤੇ ਆਪਣੇ ਫੂਡ ਕਲੀਨਿਕਾਂ ਦੇ ਉੱਤੇ ਜਿੱਥੇ ਕਲੀਨਿਕ ਹੈ ਸਾਡੇ ਆਯੁਰਵੇਦ ਦੇ ਕਲੀਨਿਕ ਹੈ ਉੱਥੇ ਵਸਤਾਂ ਇਹ ਹੀ ਬਣਾਣੇ ਆ ਜਦੋਂ ਸਹੀ ਮਾਲ ਬਣਾਣਾ ਹੁੰਦਾ ਤੇ ਘੱਟ ਬੰਦਾ ਤੇ ਘੱਟ ਬੰਦਾ ਦਾ ਅਸਰ ਜ਼ਰੂਰ ਕਰਦਾ ਸੋ ਉਹੋ ਚੀਜ਼ਾਂ ਅਸੀਂ ਬਣਾਣੇ ਆ ਜਿਹੜੀਆਂ ਕਿ ਰੋਜ਼ ਸਾਨੂੰ ਚਾਹੀਦੀਆਂ ਤੇ ਜਿੰਨੀਆਂ ਕਿ ਇਥੇ ਗਵਰਨਮੈਂਟ ਵੱਲੋਂ ਪਾਸ ਹੈ ਉਹੋ ਅਸੀਂ ਬਣਾ ਕੇ ਉਸੇ ਸਟੈਂਡਰਡ ਦੇ ਹਿਸਾਬ ਦੇ ਨਾਲ ਹੀ ਲੈ ਕੇ ਆਣੇ ਆ ਸੋ ਇਹ ਬਹੁਤ ਵੱਡੀ ਗੱਲ ਹੈ ਕਿ ਸਾਡੇ ਜਿਹੜੇ ਐਨਪੀਐਨ ਨੰਬਰ ਹੈ ਉਹ ਪ੍ਰੋਪਰ ਲੱਗੇ ਹੁੰਦੇ ਆ ਤੋ ਇਹਦੇ ਸਟੈਂਡਰਡ ਦੇ ਹਿਸਾਬ ਦੇ ਨਾਲ ਹੀ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਬਣਾਣੇ ਆ ਤੇ ਇੰਡੀਆ ਦੇ ਵਿੱਚ ਵੀ ਸਾਡੀਆਂ ਜਿਹੜੀਆਂ ਰੈਣੀ ਵਾਰੇ ਜੀ ਅਗਲੀ ਵਾਰ ਜ਼ਰੂਰ ਉਹ ਕਹਿਣ ਦੱਸਿਓ ਸਰ ਨਿਰੰਦਰ ਸਿੰਘ ਅਕਾਲੀ ਉਹਨਾਂ ਨੇ ਆਪਾਂ ਪਹਿਲੇ ਵੀ ਦੇ ਉੱਤੇ ਜ਼ਰੂਰ ਗੱਲ ਕਰਾਂਗੇ ਸੰਗ੍ਰਹਿਣੀ ਵਾਸਤੇ ਸੰਗ੍ਰਹਿਣੀ ਵਾਸਤੇ ਬੜੇ ਪੇਸ਼ੈਂਟਸ ਹੈ ਔਰ ਬਹੁਤ ਠੀਕ ਹੋ ਰਹੇ ਹੈ ਲੋਕ ਤੋ ਇਹਦੇ ਵਾਸਤੇ ਵੀ ਆਪਾਂ ਜ਼ਰੂਰ ਗੱਲ ਕਰਾਂਗੇ ਕਿਉਂਕਿ ਇਹ ਵੀ ਪੇਟ ਦੇ ਨਾਲ ਹੀ ਰਿਲੇਟਡ ਜੀ ਸੋ ਲੀਵਰ ਦੇ ਨਾਲ ਹੀ ਰਿਲੇਟਡ ਹੈ ਜੀ ਸੋ ਆਪਾਂ ਜਦੋਂ ਜਾ ਕੇ ਅੱਗੇ ਲਾਰਜ ਇੰਟਰਸਟ ਟਾਈਮ ਸਮਾਲ ਇੰਟਰਸਟ ਟਾਈਮ ਦੀ ਗੱਲਾਂ ਕਰਾਂਗੇ ਤੇ ਫਿਰ ਅਗਲੀ ਵਾਰੀ ਇਹਦੀਆਂ ਵੀ ਵਿਆਖਿਆ ਸਮੇਤ ਗੱਲਬਾਤ ਕੀਤੀ ਜਾਊਗੀ 604 445 47 84 30 128 ਸਟਰੀਟ ਜੂਨਰ ਨੰਬਰ 31 ਬੈਦਰੂਬਲ ਜਿਉਣੀ ਸ਼ੁੱਕਰਵਾਰ ਤੋਂ ਲੈ ਕੇ ਮੰਗਲਵਾਰ ਤੱਕ ਤੁਹਾਡੀ ਸੇਵਾ ਜਹਾਜ ਰਹਿੰਦੇ ਨੇ 5 ਦਿਨ ਬੁੱਧਵਾਰ ਤੇ ਵੀਰਵਾਰ ਛੁੱਟੀ ਹੈ 2 2.5 ਮੀਨ ਦਾ ਸਮਾਂ ਲੱਗਦਾ ਅਪਾਇੰਟਮੈਂਟ ਨੂੰ ਕਾਲੀ ਨਾ ਕਰੋ ਇਲਾਜ ਤੁਹਾਡਾ ਬਹੁਤ ਵਧੀਆ ਹੋ ਤੇ ਲੋਕਾ ਲੋਕ ਫੋਨ ਕਰਕੇ ਦੱਸ ਰਹੇ ਨੇ ਧੰਨਵਾਦ ਬਾਈ ਜੀ ਤੁਹਾਡੇ ਲਈ ਤੇ ਬਹੁਤ ਜ਼ਰੂਰੀ ਮਿਹਰਬਾਨੀ ਜੀ ਮਿਹਰਬਾਨੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਪਾਰਕ ਸੰਦੇਸ਼ ਉਸ ਤੋਂ ਬਾਅਦ ਖਬਰਾਂ ਤੇ ਅੱਗੇ ਆ ਜਾ ਕੇ ਫੇਰ ਰੰਗ ਲਾਪਤਾ ਹੋਈ ਇੱਕ ਔਰਤ ਦੀ ਭਾਲ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ 33 ਸਾਲਾ ਜ਼ਮੀਲਾ ਫਿਰੋਜ਼ ਪਿਛਲੇ 4 ਦਿਨਾਂ ਤੋਂ ਲਾਪਤਾ ਹੈ ਉਸ ਨੂੰ ਆਖਰੀ ਵਾਰ 12 ਫਰਵਰੀ ਨੂੰ ਸ਼ਾਮ ਦੇ 5:30 ਵਜੇ 146 ਸਟਰੀਟ ਅਤੇ 70 ਨੰਬਰ ਦੇ ਨੇੜੇ ਦੇਖਿਆ ਗਿਆ ਹੈ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਦੱਸੇ ਜਾ ਰਹੇ ਨੇ ਜ਼ਮੀਲਾ ਦੇ ਰਿਸ਼ਤੇਦਾਰ ਨੇ ਜ਼ਮੀਲਾ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਹੈ ਫਿਰੋਜ਼ ਅਫਗਾਨਿਸਤਾਨ ਤੋਂ ਕੈਨੇਡਾ ਰਹਿਣ ਲਈ ਆਈ ਸੀ 5 ਫੁੱਟ 5 ਇੰਚ ਲੰਮੀ ਇਸ ਔਰਤ ਦੇ ਪੂਰੇ ਵਾਲ ਨੇ ਅਤੇ ਆਖਰੀ ਵਾਰ ਦੇਖੇ ਜਾਣ ਮੌਕੇ ਉਸ ਨੇ ਗੂੜੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ ਉਸ ਬਾਰੇ ਪਤਾ ਲੱਗਣ ਤੇ ਸ੍ਰੀ RCMP ਨੂੰ ਇਕਲਾਦ ਕੀਤੀ ਗਈ ਉਧਰ ਮੈਨੀਟੋਬਾ ਤੋਂ ਆਪਣੀ ਬੱਚੀ ਨੂੰ ਲੈ ਕੇ ਫਰਾਰ ਹੋਈ ਇੱਕ ਔਰਤ ਤੇ ਭਾਰ ਲਈ ਕੈਨੇਡਾ ਵਾਈਡ ਵਾਰੰਟ ਜਾਰੀ ਕੀਤੇ ਗਏ ਨੇ 36 ਸਾਲਾਂ ਦੇ ਬਕਾ ਮਹੀਨਿਆਂ ਦੀ ਆਪਣੀ ਬੱਚੀ ਨੂੰ ਲੈ ਕੇ ਕਿਧਰੇ ਚਲੀ ਗਈ ਹੈ ਪੁਲਿਸ ਨੂੰ ਤਾਬਕੋ ਮੈਨੀਟੋਬਾ ਤੋਂ ਅਲਬਰਟਾ ਹੁੰਦੀ ਹੋਈ BC ਵੱਲ ਜਾ ਸਕਦੀ ਹੈ ਅਤੇ ਇਹ ਔਰਤ ਇੱਕ ਫੋਲ ਕਾਰ ਚ ਹੋ ਸਕਦੀ ਹੈ ਜਿਸ ਉੱਪਰ ਮੈਨੀਟੋਬਾ ਦੀ ਲਾਇਸੈਂਸ ਪਲੇਟ GVD275 ਲੱਗੀ ਹੋਈ ਹੈ ਇਹ ਛੋਟੀ ਬੱਚੀ ਨੂੰ ਕੋਈ ਖਤਰਾ ਨਾ ਦੇਖਦੇ ਹੋਏ ਉਸ ਦੀ ਭਾਲ ਲਈ ਅੰਬਰ ਅਲਰਟ ਜਾਰੀ ਨਹੀਂ ਕੀਤਾ ਗਿਆ ਤਾਂ ਕੈਨੇਡਾ ਹਾਈਵੇ 1 ਤੇ ਗੋਲਡਨ ਦੇ ਪੂਰਬ ਵਾਲੇ ਪਾਸੇ ਬਰਫਾਨੀ ਟਿੱਗਾਂ ਡਿੱਗਣ ਦਾ ਖਤਰਾ ਵੱਧ ਗਿਆ ਅਜਿਹੇ ਖਤਰੇ ਦੇ ਮੱਦੇਨਜ਼ਰ ਟ੍ਰਾਂਸ ਕੈਨੇਡਾ ਹਾਈਵੇ 1 ਦਾ ਟ੍ਰੈਫਿਕ ਬੰਦ ਰੱਖਿਆ ਜਾ ਰਿਹਾ ਗੋਲਡਨ ਕਸਬੇ ਤੋਂ ਪੂਰਬ ਵਾਲੇ ਪਾਸੇ ਦਾ ਟੋਟਾ ਦੋਹੇ ਪਾਸੇ ਦੀ ਟ੍ਰੈਫਿਕ ਲਈ ਬੰਦ ਕੀਤਾ ਗਿਆ ਹੈ ਡਿੱਗਣ ਦੇ ਖਤਰੇ ਨੂੰ ਦੇਖਦਿਆਂ ਇਹ ਟੋਟਾ ਬੰਦ ਰੱਖਿਆ ਜਾ ਰਿਹਾ ਉਧਰ ਕੇਨਮੋਰ ਦੇ ਨਜ਼ਦੀਕ ਹੋਏ ਐਵਲੈਂਸ ਵਿੱਚ ਦੋ ਜਣੇ ਜ਼ਖਮੀ ਹੋ ਗਏ ਨੇ ਅਲਬਰਟਾ ਤੋਂ ਬਚਾਓ ਅਧਿਕਾਰੀਆਂ ਨੇ ਪਰਬਤ ਅਰੁਹੀਆਂ ਲਈ ਚੇਤਾਵਨੀ ਜਾਰੀ ਕਰ ਦਿੱਤੀ ਹੈ ਕੈਲਗਰੀ ਦੇ ਪੱਛਮ ਵਾਲੇ ਪਾਸੇ ਕੇਨਮੋਰ ਦੇ ਨਜ਼ਦੀਕ ਬਰਫਾਨੀ ਟਗੰਡਗੀਆਂ ਨੇ ਦੋ ਆਦਮੀ ਮਾਊਂਟ ਚਾਰਲਸ ਸਟਿਊਰਟ ਤੇ ਚੜ੍ਹਨ ਦਾ ਯਤਨ ਕਰ ਰਹੇ ਸਨ ਜੋ ਬਰਫਾਨੀ ਟਗਾਂਡੀ ਲਪੇਟ ਵਿੱਚ ਆ ਗਏ ਪਾਕਿਸਤਾਨ ਦੇ ਸੂਬਾ ਸਿੰਧ ਦੇ ਸੱਤਨ ਕਸਬੇ ਵਿੱਚ ਸੂਫੀ ਦਰਗਾਹ ਤੇ ਖਿਦਾਈ ਬੰਬ ਧਮਾਕੇ ਵਿੱਚ ਘੱਟੋ ਘੱਟ 100 ਸ਼ਰਧਾਲੂ ਮਾਰੇ ਗਏ ਨੇ ਅਤੇ ਦਰਜਨਾਂ ਹੋਰ ਜ਼ਖਮੀ ਹੋਏ ਨੇ। ਲਾਲ ਸ਼ਹਾਬਾਜ਼ ਕਲੰਦਰ ਦੀ ਸੂਫੀ ਦਰਗਾਹ ਤੇ ਹਮਲਾ ਹੋਇਆ। ਅਤਵਾਦੀਆਂ ਵੱਲੋਂ ਪਾਕਿਸਤਾਨ ਵਿੱਚ ਇੱਕ ਹਫ਼ਤੇ ਵਿੱਚ ਇਹ ਪੰਜਵਾਂ ਭਿਆਨਕ ਹਮਲਾ ਕੀਤਾ ਗਿਆ। ਇਸਲਾਮਿਕ ਸਟੇਟ ਖੁਰਾਸਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਕਬੂਲ ਕੀਤੀ ਹੈ। ਮਰਨ ਵਾਲਿਆਂ ਵਿੱਚ ਔਰਤਾਂ ਤੇ ਬੱਚੇ ਸ਼ਾਮਲ ਨੇ। ਇਹ ਧਮਾਕਾ ਸੂਫੀ ਰਸਮੀ ਤਿਮਾਹ ਦੌਰਾਨ ਹੋਇਆ। ਜਦੋਂ ਦਰਗਾਹ ਵਿੱਚ ਸੈਂਕੜੇ ਲੋਕ ਹਾਜ਼ਰ ਸਨ ਇੱਕ ਹਮਲਾਵਰ ਨੇ ਪੀੜਤਾਂ ਵਿੱਚ ਜਾ ਕੇ ਖੁਦ ਨੂੰ ਉਡਾ ਦਿੱਤਾ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਪੀੜਤਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਾਉਣ ਦੇ ਹੁਕਮ ਜਾਰੀ ਕੀਤੇ ਨੇ ਲਾਗਲੇ ਸ਼ਹਿਰਾਂ ਤੋਂ ਐਂਬੂਲੈਂਸਾਂ ਮੰਗਵਾ ਲਈਆਂ ਗਈਆਂ ਨੇ ਜ਼ਖਮੀਆਂ ਨੂੰ ਜਲਦੀ ਹਸਪਤਾਲਾਂ ਵਿੱਚ ਭੇਜਣ ਲਈ ਹਵਾਈ ਜਹਾਜ਼ਾਂ ਦੀ ਮਦਦ ਲੈਣ ਦਾ ਵੀ ਫੈਸਲਾ ਕੀਤਾ ਗਿਆ ਉਧਰ ਲਹਿੰਦੇ ਪੰਜਾਬ ਦੀ ਪੁਲਿਸ ਨੇ ਲਾਹੌਰ ਧਮਾਕੇ ਦੇ ਸ਼ੱਕੀ ਬਾਰੇ ਸੂਚ ਦੇਣ ਲਈ 10 ਲੱਖ ਰੁਪਏ ਦਾ ਇਨਾਮ ਐਲਾਨਿਆ ਦੱਸਣਯੋਗ ਹੈ ਕਿ ਪਿਛਲੇ ਸੋਮਵਾਰ ਲਾਹੌਰ ਵਿਧਾਨ ਸਭਾ ਦੇ ਸਾਹਮਣੇ ਮਜਾਰਾ ਕਰ ਰਹੇ ਲੋਕਾਂ ਦੀ ਭੀੜ ਵਿੱਚ ਧਮਾਕਾ ਹੋਇਆ ਸੀ ਭਾਰਤ ਵਿੱਚ ਵਿਆਹ ਸ਼ਾਦੀਆਂ ਤੇ ਹੋਣ ਵਾਲੇ ਖਰਚੇ ਨੂੰ ਰੋਕਣ ਲਈ ਇੱਕ ਬਿੱਲ ਲਿਆਂਦਾ ਜਾ ਰਿਹਾ ਹੈ ਵਿਆਹ ਸ਼ਾਦੀਆਂ ਤੇ ਹੋਣ ਵਾਲੇ ਸਮਰੋਹਾਂ ਤੇ ਲੱਖਾਂ ਕਰੋੜਾਂ ਰੁਪਏ ਪਾਣੀ ਵਾਂਗ ਵਹਾਇਆ ਜਾਂਦਾ ਹੁਣ ਅਜਿਹੀ ਫਜ਼ੂਲ ਖਰਚੀ ਤੇ ਰੋਕ ਲੱਗ ਸਕਦੀ ਹੈ ਸ਼ਾਦੀਆਂ ਵਿੱਚ ਹੁੰਦੀ ਫਜ਼ੂਲ ਖਰਚੀ ਨੂੰ ਘੱਟ ਕਰਨ ਲਈ ਇੱਕ ਬਿੱਲ ਤਿਆਰ ਕੀਤਾ ਗਿਆ ਇਹ ਇੱਕ ਪ੍ਰਾਈਵੇਟ ਮੈਂਬਰ ਬਿੱਲ ਹੈ ਜਿਸ ਨੂੰ ਬਿਹਾਰ ਤੋਂ ਮੈਂਬਰ ਪਾਰਲੀਮੈਂਟ ਰਣਜੀਤ ਰੰਜਨ ਨੇ ਤਿਆਰ ਕਰਵਾਇਆ ਰਣਜੀਤ ਰੰਜਨ ਕਾਂਗਰਸ ਪਾਰਟੀ ਨੂੰ ਤਾਲੂਪ ਰੱਖਦੀ ਹੈ ਉਨ੍ਹਾਂ ਕਿਹਾ ਕਿ ਇਸ ਬਿੱਲ ਨਾਲ ਮਹਿਮਾਨਾਂ ਦੀ ਸੰਖਿਆ ਸੀਮਤ ਕਰਨ ਤੋਂ ਇਲਾਵਾ 5 ਲੱਖ ਰੁਪਏ ਤੱਕ ਖਰਚ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਜੇਕਰ ਕੋਈ ਤੈਸ਼ੁਦਾ ਰਾਸ਼ੀ ਤੋਂ ਵਧੇਰੇ ਪੈਸੇ ਖਰਚ ਕਰੇਗਾ ਤਾਂ ਤੇ 10% ਦੀ ਟੈਕਸ ਲਗਾਇਆ ਜਾਏਗਾ ਅਤੇ ਇਹ ਪੈਸਾ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਤੇ ਖਰਚ ਕੀਤਾ ਜਾਏਗਾ ਦਸੰਯੋਗ ਹੈ ਕਿ ਪਿਛਲੇ ਦਿਨੀ ਭਾਰਤ ਵਿੱਚ ਸਾਬਕਾ ਮੰਤਰੀ ਦਿਨਾਰਦਮ ਰੈਡੀ ਦੀ ਬੇਟੀ ਦੇ ਵਿਆਹ ਤੇ ਤਕਰੀਬਨ 74 ਲੱਖ ਡਾਲਰ ਖਰਚ ਕੀਤੇ ਗਏ ਸਨ ਦੇਸ਼ ਭਰ ਵਿੱਚ ਇਸ ਮਹਿੰਗੇ ਵਿਆਹ ਦੀ ਚਰਚਾ ਹੋਈ ਸੀ ਇਸ ਦੇ ਨਾਲ ਹੀ ਖਬਰਾਂ ਦਾ ਇਹ ਬਲਿਟਨ ਖਤਮ ਹੋਇਆ ਸੁਣਦੇ ਰਹੋ ਰੇਡੀਓ ਕੇ ਆਰਟੀਆਈ 1550 ਏਮ ਮੈਂ ਹਾਂ ਗੁਰਬਾਜ ਸਿੰਘ ਬਰਾੜ 12 ਵਜੇ ਕੇ 8 ਮਿੰਟ ਹੋਏ ਗੱਲਬਾਤ ਨਵੀਂ ਜਗ੍ਹਾ ਤੇ ਉਹ ਮੂਵ ਹੋ ਗਿਆ ਪੰਜਾਬ ਨੇ ਖਾਲਸਾ ਬਿਜ਼ਨਸ ਸੈਂਟਰ 84 ਤੇ 128 ਤੇ 84 128 ਸਟਰੀਟ 31 ਨੰਬਰ ਯੂਨਿਟ ਤੇ ਉਸਦੇ ਜਿੱਥੇ ਭਿੰਡਰੋਂ ਦਾ ਦਫ਼ਤਰ ਹੈ ਢਾਲੀਵਾਲ ਸਵੀਟ ਸ਼ਾਪ ਹੈ ਉਹਦੇ ਅੰਦਰ ਜਾ ਕੇ ਇਹ ਹੁਣ A1 ਹਰਬਲ ਤੇ ਅਪਾਇੰਟਮੈਂਟ ਲਈ ਤੁਸੀਂ ਫੋਨ ਕਰਦੇ ਹੋ ਅਪਾਇੰਟਮੈਂਟ ਸਮਾਂ ਕਾਫੀ ਲੱਗ ਰਿਹਾ ਪਰ ਫਿਰ ਵੀ ਉਹ ਕੋਸ਼ਿਸ਼ ਕਰਦੇ ਆ ਬਦ ਤੋਂ ਬਦ ਤੁਹਾਡੀ ਸੇਵਾ ਦੇ ਵਿੱਚ ਉਹ ਹਾਜ਼ਰ ਰਹਿ ਸਕਣ ਪਰ ਇੱਕ ਵਿੱਤ ਹੀ ਹੈ ਬੰਦੇ ਦਾ ਉਦੋਂ ਵੱਧ ਨਹੀਂ ਕਰ ਸਕਦਾ ਦੋ ਦਿਨ ਆਫ ਨੇ ਤੇ ਪੰਜ ਦਿਨ ਉਹ ਕੰਮ ਕਰਦੇ ਆ ਤੇ 70 80 ਮਰੀਜ਼ ਦਿਹਾੜੀ ਦੇਖਦੇ ਆ ਉੱਥੇ ਜਦ ਵੀ ਜਾਓ ਲਾਈਨ ਲੱਗੀਦੀ ਤੇ ਠੀ ਲੋਕ ਹੋ ਰਹੇ ਸਮਾਂ ਥੋੜਾ ਜਿਹਾ ਲੱਗਦਾ ਆਯੁਰਵੇਦ ਪ੍ਰਣਾਲੀ ਬਹੁਤ ਅਲੱਗ ਹੈ ਔਲੇ ਹਰੜ ਬਿਹੜੇ ਦੀ ਗੱਲ ਉਹ ਦੱਸ ਕੇ ਗਏ ਨੇ ਤ੍ਰਿਫਲਾ ਹੈ ਪੇਟ ਤੁਹਾਡਾ ਸਾਫ਼ ਕਰਦਾ ਔਲਾ ਬਹੁਤ ਚੰਗਾ ਹਰੜ ਤੇ ਬਿਹੜਾ ਤਿੰਨੇ ਹੀ ਗਗਨਦੀਪ ਸਿੰਘ ਹੁਣ ਕਿਹਨੇ ਅੰਗਰੇਜ਼ੀਜ਼ ਕੀ ਕਹੀਏ ਹੁਣ ਅੰਗਰੇਜ਼ੀ ਚ ਲੱਭ ਕੇ ਦੱਸੂਗਾ ਜੀ ਪਰ ਤਿੰਨੇ ਚੀਜ਼ਾਂ ਪੰਜਾਬ ਤੋਂ ਮਗਾ ਕੇ ਉਹਨਾਂ ਨੂੰ ਪੀ ਕੇ ਰੱਖ ਲੋ ਸਰਨਾਮਾ ਦੇ ਪੱਤੇ ਤੇਜ਼ ਪੱਤਰ ਹੈ ਜਿਹੜਾ ਉਹ ਪਾ ਕੇ ਤੇ ਉਹਦੇ ਬਾਅਦ ਤੁਸੀਂ ਉਸ ਚਮਚਾ ਲੈ ਸਕਦੇ ਹੋ ਤਿੰਨੇ ਵੀ ਬਹੁਤ ਵਧੀਆ ਉਹ পেট ਸਾਫ਼ ਰੱਖੋ ਖਾਣਾ ਘੱਟ ਜਿਹੜਾ ਤੁਸੀਂ ਓਵਰ ਈਟਿੰਗ ਕਰਦੇ ਆ ਨਾ ਉਹ ਵੀ ਉਹਦਾ ਕਾਰਨ ਹੈ ਦੇ ਵਿੱਚੋਂ ਹੀ ਤੁਹਾਡੀ ਮੂੰਹ ਦੀ ਵੀ ਜਿਹੜੀ ਸਮਲ ਹੈ ਜਿਹੜੀ ਫੌਲ ਸਮਲ ਹੈ ਮੂੰਹ ਦੀ ਮਿਹਦੇ ਦੀ ਹੈ ਠੀਕ ਹੈ ਔਰ ਹੱਜੀਆਂ ਵੀ ਤੁਸੀਂ ਚਾਹੀਦੇ ਆ ਮੂੰਹ ਤੁਹਾਡਾ ਸਾਫ਼ ਚਾਹੀਦਾ ਜੀਬ ਤੁਹਾਡੀ ਖਾਣੇ ਤੋਂ ਬਾਅਦ ਸਾਫ਼ ਚਾਹੀਦੀ ਹੈ ਬਰਸ਼ ਤੁਸੀਂ ਖਾਣੇ ਤੋਂ ਬਾਅਦ ਕਰੋ ਚਾਹੇ ਮੌउथ ਨੂੰ ਮੂੰਹ ਨੂੰ ਕੁਝ ਵੀ ਸਾਫ਼ ਕਰੋ ਗੰਮ ਉਹਦਾ ਸਬਸਟੀਟਿਊਟ ਨਹੀਂ ਗੰਮ ਨਾਲੋਂ ਤਾਂ ਲਾਈਚੀ ਚੰਗੀ ਹੈ ਉਹ ਮੂੰਹ ਚ ਪਾ ਲਓ ਗੰਮ ਹਰ ਦਿਨ ਚਬੀ ਜਾਣੀ ਚਬੀ ਜਾਣੀ ਉਹਦਾ ਉਹ ਗੜਬੜ ਆ ਉਹ ਚ ਕੈਮੀਕਲ ਹੈ ਉਹਦੇ ਨਾਲ ਤਾਂ ਇੱਕ ਲੌਂਗ ਸੰਦੇਹਾ ਪਾ ਲਓ ਸਾਰਾ ਦਿਨ ਉਹ ਮਲਠੀ ਬਹੁਤ ਵਧੀਆ ਗੰਮ ਗੰਮ ਕੀ ਕਰਦੀ ਹੈ ਮਲਠੀ ਦੇ ਪੀਸ ਕਰ ਲੋ ਛੋਟੇ ਛੋਟੇ ਸਟਿਕ ਲੈ ਕੇ ਤੇ ਮਲਖੀ ਇੱਕ ਜੇ ਮੂੰਹ ਚ ਪਾ ਲੋ ਸਾਰਾ ਦਿਨ ਮौज ਮੂੰਹ ਵੀ ਸਾਫ ਤੇ ਮੈਿਕਾ ਛੱਡੋਗੇ ਮੇਦੇ ਨੂੰ ਸਾਫ ਰੱਖੋ ਜਿਹਨੂੰ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਜਿਸ ਨੂੰ ਕਬਜ਼ ਹੈ ਕਬਜ਼ ਨਾ ਹੋਣ ਦਿਓ ਕਦੇ ਵੀ ਜ਼ਿੰਦਗੀ ਦੇ ਵਿੱਚ ਜਦ ਕਬਜ਼ ਸ਼ੁਰੂ ਹੋ ਗਈ ਬਿਮਾਰੀਆਂ ਉਹਦੇ ਚੋਂ ਪਾਇਲਜ਼ ਆ ਉਹਦੇ ਚੋਂ ਸੰਗਰਹਿਣੀਆਂ ਜਿਹਨੂੰ ਅਸਟ੍ਰੇਟ ਕਹਿੰਦੇ ਆ ਬਹੁਤ ਹੋ ਰਿਹਾ ਪੌਚ ਲੋਕਾਂ ਦੇ ਲੱਗੇ ਨੇ ਢਿੱਡ ਦੇ ਵਿੱਚ ਫਿੱਟ ਕੀਤੇ ਨੇ ਬਹੁਤ ਔਖਾ ਔਰ ਆਯੁਰਵੇਦ ਦੇ ਵਿੱਚ ਹੀ ਇਹਦੇ ਵਿੱਚੋਂ ਹੀ ਇਲਾਜ ਆ ਬਿਲ ਦੇ ਦਰਖਤ ਦਾ ਬਿਲ ਬਹੁਤ ਵਧੀਆ ਇੱਕ ਦਰਖਤ ਹੈ ਉਹਦੇ ਬਿਲ ਦਾ ਜਿਹੜਾ ਫਰੂਟ ਹੈ ਉਹਦੇ ਗੁੱਦੇ ਤੋਂ ਐਲਸਰੇਟਿਵ ਕੋਲਾਈਟਸ ਦੀਆਂ ਦਵਾਈਆਂ ਆਯੁਰਵੇਦ ਬਹੁਤ ਇੱਕ ਵਧੀਆ ਇਲਾਜ ਪ੍ਰਣਾਲੀ ਹੈ ਤੇ ਇਹਦੇ ਵਿੱਚ ਜਿਨ੍ਹਾਂ ਨੂੰ ਇਹਦੇ ਵਿੱਚ ਦਿਓ ਹੋ ਜੇ ਛੋਟੀ ਉਮਰੇ بڑے ਮਾਮ ਜਿਸ ਤੇ ਖੜਕਾਏ ਪੰਡ ਮਹੰਤ ਜੀ ਦੇ ਕੋਲ ਬੈਠ ਕੇ ਬਹੁਤ ਚੀਜ਼ਾਂ ਸਿੱਖੀਆਂ ਤੇ ਵੈਦ ਜੀ ਕੁਦਰਤੀ ਇਹਨਾਂ ਦੇਸ਼ਾਂ ਦੇ ਵਿੱਚ 98 ਚ ਇਹਨਾਂ ਨੇ ਉਰੇ ਆ ਕੇ ਸ਼ੁਰੂ ਕੀਤਾ ਸੀ ਕਿ ਜਦ ਦਵਾਈਆਂ ਜਿਹੜੀਆਂ ਹੈਲਥ ਕੈਨੇਡਾ ਤੋਂ ਅਪਰੂਵ ਨਹੀਂ ਸੀ ਹੈਲਥ ਕੈਨੇਡਾ ਮੁਸ਼ਕਲ ਕਰਦੀ ਸੀ ਹੁਣ ਉਹਨਾਂ ਨੇ ਅਪਰੂਵ ਕਰਾਤੀਆਂ ਤੇ ਸਾਰੀ ਜਗ੍ਹਾ ਓਪਨ ਲਈ ਚੱਲ ਰਹੀ ਹੈ ਲੋਕ ਲੋਕਾਂ ਨੂੰ ਫਾਇਦਾ ਹੋ ਰਿਹਾ ਗੱਲ ਮੈਨੂੰ ਸਭ ਤੋਂ ਵੱਡੀ ਗੱਲ ਇਹ ਹੈ ਬੱਚੇ ਦੀ ਇੱਕ ਦੀ ਫੋਟੋ ਦਿਖਾਈ ਹੈ 3 ਸਾਲ ਦੇ ਬੱਚੇ ਨੂੰ ਆਰਥਰਾਇਟਿਸ ਹੋਇਆ ਹੈ ਦੱਸੋ ਜ਼ੁਲਮ ਨਹੀਂ ਹੈ ਸੰਗ੍ਰਹਿਣੀ ਵਾਲੇ ਅਲਸਰੇਟਿਵ ਕਲਾਈਟਸ ਵਾਲੇ ਕਿੰਨੇ ਤੁਰੇ ਫਿਰਦੇ ਆ ਪਾਇਲਸ ਜਿਹੜੀਆਂ ਨੇ ਤੁਸੀਂ ਟਾਇਲਟ ਜਾਣੋਂ ਡਰਦੇ ਹੋ ਜਦ ਬਲੱਡ ਜਾਣਾ ਤਾਂ ਕਿੰਨਾ ਡਰ ਹੈ ਤੇ ਮਰਦਾਂ ਤੇ ਔਰਤਾਂ ਦੇ ਗੁਪਤ ਰੋਗ ਨੇ ਉਹਨਾਂ ਦੀ ਬਹੁਤ ਮੁਸ਼ਕਲਾਵਾਲ ਚੜਦੇ ਨੇ ਤੁਹਾਡੀਆਂ ਚਮੜੀ ਦੀਆਂ ਮੁਸ਼ਕਲਾਂ ਨੇ ਸਾਂਭੋ ਆਪਣੇ ਸਰੀਰ ਨੂੰ ਇਦੋਂ ਉੱਪਰ ਦੀ ਕੁਝ ਵੀ ਨਹੀਂ ਮੈਂ ਨਿਮਰਤ ਗਿੱਲ ਜਿਹੜੀ ਬੱਚੀ ਦੀ ਮੌਤ ਹੋਈ ਹੈ ਘੋਰਾ ਪਰ ਇਹ ਰਾਣੀ ਧੀ 3 ਸਾਲਾਂ ਦੀ ਨਾਪੇ ਦੇ ਵਿੱਚ ਮਾਪੇ ਦੋਸ਼ ਲਾ ਰਹੇ ਨੇ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਨੇ ਉਹਨੂੰ ਕੋਡ ਕੀਤਾ ਕਿ ਮਾਂ ਕਹਿ ਰਹੀ ਆ ਸੀ ਹਸਪੀਟਲ ਗਏ ਐਮਰਜੈਂਸੀ ਜਿਹਾ ਗਏ ਉਹ ਕਨੇ ਚੱਲਣ ਦੇ ਦੋ ਦੂਜੇ ਦਿਨ ਫੇਰ ਗਏ ਬੱਚੀ ਨੂੰ ਸਾਹ ਆਣੋਂ ਹਟ ਗਿਆ ਹੌਲੀ ਹੌਲੀ ਹੌਲੀ ਹੌਲੀ ਬੱਚੀ ਦਾ ਚਿਹਰੇ ਦਾ ਰੰਗ ਬਦਲਣ ਲੱਗ ਗਿਆ ਤੇ ਜਦੋਂ ਦੀ ਡੈਥ ਹੋ ਗਈ ਸਾਰੇ ਭੱਜੇ ਫਿਰਨ ਕਰਦੇ ਫਿਰਨ ਤੇ ਬਲਰਾਜ ਸਿੰਘ ਜੀ ਲਾਈਨ ਨੰਬਰ 4 ਤੁਸੀਂ ਹੈਲੋ ਜੀ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਮੈਂ ਦਾਦਾ ਬੋਲਦਾ ਜੀ ਬੇਟੀ ਦਾ ਤੇਜਾ ਸਿੰਘ ਤਿਲਕ ਅੱਛਾ ਜੀ ਸਰਦ अच्छा पहली तो गल जी बहुत ज्यादा दुखदा है समय आ, मैं इस समय परिवार दे नाल कल भी चाल साहब दा फोन आया सी मिनट तो किते विसर गया मैं कल गल करनी सी अच्छा दसो जी ये घटना होई किमे सरदार जी ये घटना जी पिछली 6 तारीख नु साडी बेटी नी मैं थोड़ी जी खंग सी फिर नाक ओदा बहंदा सी अच्छा जी ते असी रात नु बेटा मेरा आया काम ते 1:30 बजे रात नु ਤੇ ਉਹ 2 ਵਜੇ ਬੌਟੀ ਤੇ ਮੁੰਡਾ ਦੋਵੇਂ ਲੈ ਕੇ ਉਹਨੂੰ ਹਸਪੀਟਲ ਐਮਰਜੈਂਸੀ ਗਏ। ਅੱਛਾ ਜੀ। 7 ਵਜੇ ਤੱਕ ਉਹਨਾਂ ਨੇ ਉੱਥੇ ਬਸ ਬਿਠਾਈ ਰੱਖਿਆ 7 ਵਜੇ ਜਿਹੜਾ ਡਾਕਟਰ ਸੀ ਉਹ ਕਹਿੰਦਾ ਇਹਨੂੰ ਟੈਨਲ ਤੇ ਐਡਵਿਲ ਦੇ ਦਿਓ ਬਸ ਠੀਕ ਹੋ ਕੋਈ ਹੋਰ ਇਹਨੂੰ ਕੁਝ ਨਹੀਂ। ਕੋਈ ਟੈਸਟ ਨਹੀਂ ਕੀਤਾ ਉਹਨਾਂ ਨੇ। ਚੈੱਕ ਜਰੂਰ ਕੀਤਾ ਉਹਨੇ ਡਾਕਟਰ ਨੇ। ਤੇ ਅਗਲੇ ਦਿਨ ਉਹ ਉਹ ਸਾਰਾ ਦਿਨ ਅਗਲਾ ਅਸੀਂ ਦਿਨੇ ਦੇਈਗੇ ਟੈਨਲ ਜਦੋਂ ਫੇਰ ਨਾ ਠੀਕ ਹੋਈ ਥੋੜਾ ਜਿਹਾ ਇੱਕ ਵਾਰੀ ਉਹਨੇ ਜਿਹੜਾ ਦੁੱਧ ਜਿਆ ਪੀਤਾ ਸੀ ਉਹ ਕੱਢਿਆ। ਕਾਂ ਸਵੇਰੇ 5 ਵਜੇ ਫੇਰ ਮਤਲਬ 7 ਤਰੀਕ ਨੂੰ ਲੈ ਕੇ ਗਿਆ ਐਮਰਜੈਂਸੀ ਹਸਪੀਟਲ ਉਹਨੂੰ ਕਿਹਾ ਵੀ ਕੱਲ ਵੀ ਲੈ ਕੇ ਆਏ ਸੀ ਹੂੰ ਜਿਹੜਾ ਪਹਿਲਾ ਡਾਕਟਰ ਸੀ ਉਹ 7 ਵਜੇ ਤੱਕ ਆਲੇ-ਟੋਲੇ ਜੇ ਕਰੀ ਗਿਆ ਕੁੜੀਆਂ ਨੇ ਉਹ ਟੈਸਟ ਕੀਤੇ ਲਿਛੇ-ਲੁਖੇ ਜਿਹੇ ਉਹਦੇ ਜਿਹੜਾ ਲਿਖਦੇ ਹੁੰਦੀਆਂ ਨੇ ਕਾਰਵਾਈ ਤੇ 7 ਵਜੇ ਕਹਿੰਦਾ ਮੈਂ ਤਾਂ ਜਾਨਣਾ ਜੀ ਹੁਣ ਅਗਲਾ ਡਾਕਟਰ ਕਰੂਗਾ ਕੁਝ अच्छा जी ਤੇ 22 ਘੰਟੇ ਬਾਅਦ ਬੱਚੀ ਨੂੰ ਜ ਮਤਲਬ ਫੇਰ ਲੈ ਕੇ ਦੂਜੇ ਦਿਨ ਸਵੇਰੇ ਫੇਰ ਹਾਂ 22 ਲਾ ਲਓ ਦੇਖ ਲਓ ਕਿੰਨੇ ਹੋ ਗਏ ਜੀ ਤਰਕ ਉਸ ਵਜੇ ਪਹਿਲਾਂ 6 ਤਰੀਕ ਨੂੰ ਮਤਲਬ ਵਾਪਸ ਆਏ ਸੀ ਅਗਲੇ ਦਿਨ 5 ਲੈ ਗਏ ਹਾਂ ਜੀ ਜੀ ਅੱਛਾ ਤੇ ਫੇਰ ਕੀ ਹੋਇਆ ਜਦ ਵਜੇ ਗਈ ਬੱਚੀ ਹਾਂ 5 ਵਜੇ ਤੋਂ 7 ਵਜੇ ਤੱਕ ਜਿਹੜਾ ਡਾਕਟਰ ਸੀ ਜੀ ਉਹਨੇ ਮਤਲਬ ਆਪ ਕੁਝ ਨਹੀਂ ਕੀਤਾ ਉਹ ਜਿਹੜੀਆਂ ਉਹਰੇ ਫਾਰਮਲ ਕਾਰਵਾਈਆਂ ਕਰਦੀਆਂ ਨੇ ਉਹਨਾਂ ਨੇ ਉਹਦੀ ਟੈਂਪਰੇਚਰ ਦੇਖ ਲਿਆ ਉਹ ਪਾਲਸ ਦੇਖ ਲਈ ਫਰਾਂਨਾ ਦੇਖ ਲਓ ਕਰੀ ਲੀਆਂ ਕਾਰਵਾਈ ਤੇ 7 ਵਜੇ ਡਾਕਟਰ ਕਹਿੰਦਾ ਵੀ ਮੈਂ ਤਾਂ ਹੁਣ ਮੇਰੀ ਤਾਂ ਸ਼ਿਫਟ ਪੂਰੀ ਹੋ ਗਈ ਅਗਲਾ ਡਾਕਟਰ ਆਊਗਾ ਜਿਹੜਾ ਉਹ ਹੀ ਕੁਝ ਕਰੂਗਾ ਤੇ ਜਦੋਂ ਕੀ 7 ਵਜੇ ਕੋਈ ਡਾਕਟਰ ਆਇਆ ਜਦੋਂ ਲੇਟ ਆਇਆ ਜਿਹੜਾ ਡਾਕਟਰ ਅੱਧੇ ਘੰਟੇ ਘੰਟੇ ਬਾਅਦ ਉਹਨੇ ਇੱਕ ਐਕਸ ਲਿਖਤਾ ਇੱਕ ਬਲੱਡ ਟੈਸਟ ਲਿਖਤੇ ਤੇ ਆਪ ਉਹ ਲਿਖਣਾ ਸ਼ੁਰੂ ਕਰਤਾ ਉਹਨੇ ਨੋਟ ਜੇ ਬਣਾਇਆ ਕਾਰਵਾਈ ਵੀ ਕਰੀ ਆ ਤੋਂ ਬਾਅਦ ਉਹਨਾਂ ਨੇ ਉਹ ਅੱਧੇ ਘੰਟੇ ਬਾਅਦ ਐਸਟਰੀ ਵਾਲੇ ਨੇ ਐਸਟਰੀ ਲਿਆ ਫਿਰ ਉਹਦੀ ਮਤਲਬ ਦੂਜਾ ਬਲੱਡ ਵਾਲਾ ਤੇ ਉਹਨਾਂ ਨੇ ਬੱਚੀ ਦਾ ਕੋਈ ਧਿਆਨ ਨਹੀਂ ਕੀਤਾ ਕੋਈ ਉਹਨੂੰ ਦਵਾਈ ਨਹੀਂ ਦਿੱਤੀ ਤੇ 10 ਵਜੇ ਤੱਕ ਉਹਦਾ ਰੰਗ ਬਦਲਣ ਲੱਗਾ ਚਮੜੀ ਦਾ ਮੇਰੀ ਨੂੰਹ ਨੇ ਬਹੁਤ ਰੌਲਾ ਪਾਇਆ ਉਹਨਾਂ ਨੂੰ ਕਿਹਾ ਉਹਨਾਂ ਨੇ ਕੁਝ ਨਹੀਂ ਗੋਲਿਆ ਉਹਦੇ ਤੇ ਕੋਈ ਹਣੀਤਰ ਆ ਉਹ ਨੋਟ-ਨੋਟ ਜੇ ਬਣਾਇੰਗੇ 10:30 ਵਜੇ ਲਗਭਗ ਜਦੋਂ ਬੱਚੀਾਂ ਵੀ ਪੂਰੀ ਹੋ ਗਈ ਸਮਝੋ ਬੇਟੀ ਤੋਂ ਲੈ ਕੇ ਬੱਚੀ ਨੂੰ ਇਹਨੂੰ ਬਾਹਰ ਕੱਢਤਾ ਉਹਨੇ ਆਪਦੀ ਕੋਡ ਕਾਲ ਕਰਕੇ ਦੂਜੇ ਡਾਕਟਰ ਬੁਲਾ ਲਏ ਤੇ ਮਗਰੋਂ ਆ ਆਕਸੀਜਨ ਆਕਸੀਜਨ ਲਾਉਣ ਦਾ ਟਕਾਉਂ ਜਰਾਸ ਲਿਆ ਟਰਾਮਾ ਕੀਤਾ ਪੂਰਾ ਆ ਕਹਾਣੀ ਹੋਈ ਹੈ ਜੀ ਚੰਗੀ ਪਲੀ ਖੇੜੀ ਨੱਚਦੀ ਪੁੱਦੀ ਸਾਡੀ ਬੇਟੀ ਸਾਡੇ ਹੱਥਾਂ ਚੋਂ ਅਜਾਈ ਬਿਨਾ ਕਿਸੇ ਦਵਾਈ ਦਿੱਤੇ ਖੋ ਲਈ ਕਮਾਲ ਹੋ ਗਈ ਜੀ ਦੱਸੋ ਤੁਸੀਂ ਜਾਂ ਪਹਿਲੇ ਦਿਨ ਉਹਨਾਂ ਨੇ ਚਲੋ ਮੰਨਦੇ ਆ ਇੱਕ ਦਿਨ ਫਲੂ ਦੇ ਸਿੰਪਟਮ ਦੱਸ ਕੇ ਕਹਿੰਦਾ ਕਲੋਨਲ ਦੇ ਦਿਓ ਐਡਵੋਲ ਦੇ ਘੰਟੇ ਬਾਅਦ ਬੱਚੀ ਦੁਬਾਰਾ ਰੀ ਕਰਨ ਗਈ ਹੈ ਉਹ ਠੀਕ ਨਹੀਂ ਉਹਨੂੰ ਸਾਹ ਨਹੀਂ ਆਉਂਦਾ ਪੈਂਦੀ ਆ ਤਾਂ ਉਹ ਸਾਹ ਉਹਦਾ ਰੁਕਦਾ ਉਹਨੂੰ ਬਿਠਾਉਨੇ ਕੋਈ ਨਮੂਨੀਆ ਹੋਇਆ ਜਾਂ ਨਹੀਂ ਉਹ ਤਾਂ ਦੱਸਣਗੇ ਪਰ ਇਹ ਹੈਰਾਨੀ ਦੀ ਨਹੀਂ ਗੱਲ ਕਿਸੇ ਨੇ ਕਿਸੇ ਨੇ ਉੱਤਾਂ ਨਹੀਂ ਵਾਚਿਆ ਉਹਨੇ ਬੇਟੀ ਨੇ ਤੁਹਾਡੀ ਨੇ ਮਦਦ ਕੋਲ ਕਿਸੇ ਨੇ ਨਹੀਂ ਵਾਚਿਆ ਤੁਸੀਂ ਉਹਨਾਂ ਨਾਲ ਕੋਈ ਵੀ ਸੰਪਰਕ ਕਰਕੇ ਪਤਾ ਲੈ ਲਓ ਵੀ ਤੁਸੀਂ ਕੋਈ ਚੀਜ਼ ਕੁਝ ਦਿੱਤਾ ਉਹਨੂੰ ਉਹਦੇ ਪੂਰੀ ਹੁਣ ਤੱਕ ਹੂੰ 10:30 ਵਜੇ ਲਗਭਗ ਉਹ ਪੂਰੀ ਹੋ ਗਈ ਇਹਨਾਂ ਨੇ ਵੈਸੇ 10:40 ਤੇ ਉਹ ਕੀਤਾ ਵੀ ਉਹਦਾ ਖੜ ਗਿਆ ਸਭ ਕੁਝ 11:10 ਤੇ ਡਿਕਲੇਅਰ ਕਰਤਾ ਇਹਨਾਂ ਨੇ ਤੁਹਾਡੇ ਤੁਹਾਡੇ ਮਨ ਦੇ ਵਿੱਚ ਕੀ ਹੈ ਵੀ ਜੇ ਬੱਚੀ ਦੀ ਕੇਅਰ ਹੁੰਦੀ ਏ ਉਹਨੂੰ ਚਲੋ ਬਾਕੀ ਜਿਹੜੀ ਮੌਤ ਆ ਜਿਉਂ ਤਾਂ ਟਾਲ ਸੱਚਾਈ ਹੈ ਪਰ ਜੇ ਜਿਹੜੇ ਵਸੀਲੇ ਨੇ ਜਿਹੜੇ ਵਸੀਲੇ ਨੇ ਉਹ ਤਾਂ ਹੋਣੇ ਚਾਹੀਦੇ ਆ ਨਾ ਕੋਈ ਆਕਸੀਜਨ ਲਾਈ ਜਾਂਦੀ ਕੋਈ ਜਿਹੜਾ ਮੂੰਹ 'ਚ ਕੋਈ ਦਵਾਈ ਜਾਂਦੀ ਹੁਣ ਦੇਖੋ ਜਿਹੜਾ ਬਿਮਾਰ ਆ ਜੇ ਉਹਨੂੰ ਕੋਈ ਦਵਾਈ ਨਹੀਂ ਗਈ ਫਿਰ ਰੋਗ ਥੰਮ ਫਿਰ ਉਹ ਬੱਚੂ ਕਿੱਥੋਂ ਸਾਡਾ ਇਹੀ ਰੋਸ ਹੈ ਜੀ ਵੀ ਬੱਚੀ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਕੋਈ ਕੋਈ ਫਸਟ ਏਡ ਕੁਝ ਵੀ ਕੁਛ ਤਾਂ ਦੇਣੀ ਚਾਹੀਦੀ ਐਮਰਜੈਂਸੀ ਚ ਲੈ ਕੇ ਗਿਆ ਬਟ ਇਹਦਾ ਮਤਲਬ ਕੀ ਹੈ ਤੇ ਨੰਬਰ 2 ਮਾਂ ਉਹਦੀ ਦੱਸ ਰਹੀ ਆ ਵੀ ਇਹਦੇ ਵਿੱਚ ਫਰਕ ਪੈ ਰਿਹਾ ਇਹਦੇ ਬੋਡੀ ਦਾ ਰੰਗ ਬਦਲ ਰਿਹਾ ਇਹਨੂੰ ਪਾ ਰਹੀ ਕਰੋ 1 ਮਿੰਟ ਗੱਲ ਤੁਸੀਂ ਕਰ ਲਓ ਹਾਂਜੀ ਲਓ ਬੇਟੀ ਉਹ ਕੌਰ ਇਹਦਾ ਨਾਮ ਮੇਰੇ ਵਿੱਚ ਨੁੰਦਾ ਕਰਾਇਓ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਹੀ ਬਹੁਤ ਦੁੱਖ ਦੀ ਖਬਰ ਆ ਭੈਣ ਜੀ ਰਾਣੀ ਧੀ ਉਹਦੀਆਂ ਮੈਂ ਫੋਟੋਆਂ ਵੇਖ ਰਿਹਾ ਸੀ ਇੰਨਾ ਵਧੀਆ ਉਹ ਘਰ ਦਾ ਸ਼ਿੰਗਾਰ ਹੈ ਕਿੰਨੀ ਸੋਹਣੀ ਸੁਨੱਖੀ ਉਹ ਧੀ ਹੈ ਤੇ ਜਦ ਤੁਸੀਂ ਦੂਸਰੇ ਦਿਨ ਗਏ ਜਦ ਤੁਸੀਂ ਜਾ ਕੇ ਮੁੜ ਦੱਸਿਆ ਉਹਨਾਂ ਨੂੰ ਵੀ ਮੈਂ ਕੱਲ ਵੀ ਲੈ ਕੇ ਆਈਆਂ ਅੱਜ ਫੇਰ ਲੈ ਕੇ ਆਈਆਂ ਜਦ ਤੁਸੀਂ ਉੱਥੇ ਪਹੁੰਚ ਗਏ 5 ਵਜੇ ਸਵੇਰੇ 5 ਵਜੇ ਤੋਂ 10 ਵਜੇ ਦੇ ਉਹ 5 ਘੰਟਿਆਂ ਬਾਰੇ ਦੱਸੋ ਜੀ ਕੀ ਕੀ ਬੇਟੀ ਬਾਰੇ ਫਰਕ ਪਿਆ ਤੇ ਤੁਸੀਂ ਕਿਹਨੂੰ ਕਿਹਨੂੰ ਦੱਸਿਆ ਉੱਥੇ ਹਾਂਜੀ ਜਦੋਂ ਮੈਂ ਲੈ ਕੇ ਗਈਆਂ ਪਹਿਲਾਂ ਉਹਨਾਂ ਨੇ ਲਾਈਕ ਜਿੱਦਾਂ ਆਪਣੀ ਐਂਟਰੀ ਕਰਵਾਉਂਦੇ ਹੁੰਦੇ ਆ ਉਹ ਕਰ ਲਈ ਮੈਂ ਉਹਨਾਂ ਨੂੰ ਦੱਸਿਆ ਵੀ ਇਹਨੂੰ ਅੱਜ ਫੇਰ ਇਹ ਵੀ ਖੰਗ ਕਰਕੇ ਟੈਕ ਨਹੀਂ ਸਕੀ ਅਸੀਂ ਵੀ ਆਏ ਸੀ ਤੇ ਉਹਨਾਂ ਨੇ ਐਂਟਰੀ ਕਰਕੇ ਸਾਨੂੰ ਬਿਠਾਤਾ ਤੇ ਬਾਹਰ ਸਾਨੂੰ ਆਈ ਥਿੰਕ 20-25 ਮਿੰਟ ਵੇਟ ਕਰਨੀ ਪਈ ਫੇਰ ਸਾਡੀ ਡਾਕਟਰ ਨਾ ਵੀ ਅੰਦਰ ਚਲੇ ਗਏ ਕਰੋਨਾ ਨੇ ਨਾਸ ਨੀ ਬੁਖਾਰ ਚੈੱਕ ਕੀਤਾ ਕਹਿੰਦੀ ਬੁਖਾਰ ਇਹਨੂੰ ਹੈ ਨਹੀਂਗਾ ਹੂੰ ਹਾਂਜੀ ਤੇ ਫਿਰ ਉਹਦਾ ਮੈਂ ਉਹਨਾਂ ਨੂੰ ਦੱਸਿਆ ਕਿ ਇਹ ਕਰ ਰਹੀ ਹੈਗੀ ਆ ਹਾਂਜੀ ਤੇ ਉਹਦੇ ਲਈ ਉਹਨਾਂ ਨੇ ਜਸਟ ਆਪਣੀ ਜਿਹੜੀ ਦਿੰਦੇ ਹੈ ਗਿਆ ਉਹ ਦਿੱਤੀ ਬੌਮਿਟਿੰਗ ਲਈ ਤੇ ਫਿਰ ਡਾਕਟਰ ਆਏ ਅੱਧੇ ਘੰਟੇ ਬਾਅਦ ਮੈਂ ਉਹਨਾਂ ਨੂੰ ਦੱਸਿਆ ਵੀ ਵੀ ਸਿੱਕ ਸੀਗੀ ਕੱਲ ਨਹੀਂ ਸੁੱਤੀ ਮੈਂ ਲੈ ਕੇ ਆਈ ਸੀ ਵੀ ਚੈੱਕ ਕਰਕੇ ਤੁਸੀਂ ਕਿਹਾ ਠੀਕ ਹੈ ਫੇਰ ਸੌ ਸਕੀ ਤੇ ਅੱਜ ਬੌਮਿਟਿੰਗ ਵੀ ਕਰ ਰਹੀ ਆ ਤੇ ਉਹ ਕਹਿੰਦਾ ਮੇਰੀ ਹੁਣ ਸ਼ਿਫਟ ਡੰਨ ਆਲਮੋਸਟ ਵੀ ਨੈਕਸਟ ਡਾਕਟਰ ਇਹਨੂੰ ਚੈੱਕ ਕਰੂਗਾ ਫਿਰ ਕੰਟੀ ਬਾਦ ਆਈ ਥਿੰਕ ਦੂਜਾ ਡਾਕਟਰ ਆਇਆ ਉਹਨੇ ਚੈੱਕਅਪ ਵੀ ਕੀਤਾ ਤੇ ਫਿਰ ਬਲੱਡ ਵਰਕ ਤੇ ਐਕਸ-ਰੇ ਲਿਖਿਆ ਤੇ ਫਿਰ ਉਹ ਉਹਿੰਦੀ ਜਲਦੀ ਤੋਂ ਕਰਦੇ ਨੀ ਹੈਗੇ ਕੰਟੀ ਬਾਅਦ ਘੰਟਾ ਘੰਟਾ ਫਿਰ ਉਸ ਤੋਂ ਅੱਧੇ ਪੌਣੇ ਘੰਟੇ ਬਾਅਦ ਬਲੱਡ ਵਾਲੇ ਆਏ ਨੇ ਉਹਨਾਂ ਨੇ ਉਹ ਕਹਿੰਦੇ ਟੈਸਟ ਇਹਦੇ ਕਰਨੇ ਆ ਤੇ ਉਹਦੇ ਲਈ ਬਲੱਡ ਚਾਹੀਦਾ ਫਿਰ ਬੱਚੇ ਨੇ ਈਜ਼ੀਲੀ ਤਾਂ ਬਲੱਡ ਦਿੰਦੇ ਨਹੀਂ ਹੈਗੇ ਹੌਲੀ-ਹੌਲੀ ਉਹਨਾਂ ਨੇ ਜਾਨੀ ਕਾਫੀ ਉਹ ਕਰਕੇ ਬਲੱਡ ਲਿਆ ਫਿਰ ਉਹ ਕਹਿੰਦੇ ਹੁਣ ਤਾਂ ਵੀ ਦੋ ਟੈਸਟਾਂ ਲਈ ਹਜੇ ਹੋਇਆ ਤੇ ਫਿਰ ਅਸੀਂ ਬੈਕ ਆਉਨੇ ਆਂ ਇਦਾਂ ਕਹਿ ਕੇ ਉਹ ਵੀ ਚਲੇ ਗਏ ਉਸ ਤੋਂ 10 ਮਿੰਟ ਬਾਅਦ ਮੈਨੂੰ ਲੱਗਿਆ ਬੱਚੀ ਇਰੀਟੇਟ ਹੋਣ ਲੱਗ ਗਈ ਆ ਅੱਛਾ ਤੇ ਬਾਈਟ ਕਰ ਰਹੀ ਆ ਆਪਣੇ ਜਿੱਦਾਂ ਮੈਨੂੰ ਲੱਭੀ ਇਹਨੂੰ ਰਹੀ ਹੈ ਮੈਂ ਨਰਸ ਨੂੰ ਬੁਲਾਇਆ ਮੈਂ ਕਿਹਾ ਵੀ ਇਹ ਬੱਚੀ ਹੁਣ ਇਦਾਂ ਕਿਉਂ ਕਰਦੀ ਆ ਵੀ ਇਰੀਟੇਟ ਜੀ ਕਿਉਂ ਹੋਈ ਜਾ ਰਹੀ ਆ ਵੀ ਇਹ ਬਾਈਟ ਕਰ ਰਹੀ ਆ ਮੈਂ ਉਹਨੂੰ ਬੁੱਲ ਦਿਖਾਏ ਇਹ ਤਾਂ ਕਰ ਰਹੀ ਹੈ ਹੁਣ ਤੇ ਉਹ ਕਹਿੰਦੀ ਕੋਈ ਨਾ ਪਏ ਦਾ ਬਲੱਡ ਵਰਕ ਕੀਤਾ ਇਸ ਲਈ ਵੀ ਇੱਥੇ ਜ ਰਹੀ ਆ ਕਿਉਂਕਿ ਵੀ ਕਿੰਨਾ ਔਖਾ ਆਪਾਂ ਲੈਣੇ ਦਾ ਮੈਂ ਯਕੀਨ ਕਰ ਲਿਆ ਵੀ ਇਹਨਾਂ ਦਾ ਰੋਜ਼ ਦਾ ਕੰਮ ਹੋ ਸਕਦਾ ਤੇ ਬਾਹਾਂ ਤੇ ਦਾਣੇ ਜੇ ਬਣ ਰਹੇ ਨੇ ਸਕਿਨ ਤੇ ਕੀ ਹੁੰਦਾ ਉਹ ਕਹਿੰਦੀ ਸੂਈਆਂ ਜ਼ਿਆਦਾ ਥਾਂਵੇਂ ਮਾਰਨ ਨਾਲ ਇਹਦੇ ਰੈਸ਼ ਹੋ ਗਈ ਹੈ ਸਕਿਨ ਰੈਸ਼ ਚਲੋ ਆਪਾਂ ਇਹ ਵੀ ਸੋਚ ਲਿਆ ਕਿ ਸੌਫਟ ਸਕਿਨ ਨਾ ਹੋ ਸਕਦਾ ਵੀ ਜ਼ਿਆਦਾ ਕਰਨ ਨਾਲ ਹੋ ਗਈ ਹੋ ਤੇ ਫਿਰ ਦੇ ਦੇਖ ਕੇ ਕਿੰਨਾ ਕਰਦੇ ਆ ਵੀ ਡਾਕਟਰਾਂ ਦਾ ਲਾਈਕ ਨਹੀਂ ਕਰਦੇ ਉਹ ਫਿਰ ਉਹਨੇ ਕੋਈ ਨਾ ਹੋ ਨਹੀਂ ਕੀਤਾ ਵੀ ਡਾਕਟਰ ਆਇਆ ਜਾਂ ਨਹੀਂ ਪਹਿਲਾਂ ਤਾਂ ਜਦੋਂ ਵੀ ਕੋਈ ਆਉਂਦਾ ਸੀ ਉਹ ਕਰਦੀ ਸੀਗੀ ਸਵੇਰ ਦੀ ਤਾਂ ਤੇ ਮੈਂ ਕਿਹਾ ਵੀ ਹੁਣ ਵੀ ਇਹ ਇਹਨੇ ਕੋਈ ਰਿਐਕਸ਼ਨ ਨਹੀਂ ਕੀਤਾ ਵੀ ਜਿੱਦਾਂ ਡਾਕਟਰ ਆਇਆ ਉਹ ਉਹਦੇ ਨੋਟ ਬਣਾਈ ਜਾ ਰਿਹਾ ਮੈਂ ਕਿਹਾ ਹੁਣ ਇਹਦੀ ਵੀ ਪਹਿਲਾਂ ਇੰਨੀ ਕ ਬਾਹ ਲਾਲ ਸੀ ਜਦ ਕਹਿੰਦੇ ਸੀ ਇਹ ਬਲੱਡ ਕਰਨ ਕਰਕੇ ਹੋਇਆ ਵੀ ਆ ਹੁਣ ਇਹਦੀ ਹੋਰ ਵੀ ਹੋ ਗਈ ਆਲਮੋਸਟ ਵੀ ਪੂਰੀਆਂ ਹੀ ਬਾਹਾਂ ਪਹਿਲਾਂ ਤਾਂ ਕਹਿੰਦੀ ਸੀ लेट्स ਗੋ ਹੋਮ ਮੰਮਾ लेट्स ਗੋ ਹੋਮ ਮੈਂਨ ਕਿਹਾ ਮੈਂ ਕਿਹਾ ਆਪਣੇ ਟੈਸਟ ਹੋ ਜਾਂਦੇ ਪੁੱਤੇ ਆਪਾਂ ਚੱਲਦੇ ਆ ਘਰੇ ਅੱਛਾ ਜੀ ਅੱਛਾ ਫੇਰ ਅੱਗੇ ਕੀ ਹੋਇਆ ਜੀ ਹਾਂਜੀ ਉਹਨੇ ਤਾਂ ਬਸ ਆਪਦੇ ਨੋਟ ਲਿਖੀਆ ਕਹਿੰਦਾ ਇਹਦੀ ਬਾਡੀ ਟੈਂਪਰੇਚਰ ਨਾਲ ਫਾਈਟ ਕਰ ਰਹੀ ਹੈ ਇੱਕ ਡਾਕਟਰ ਦਾ ਰਿਸਪਾਂਸ ਸੀ ਮੈਂ ਸੋਚਿਆ ਵੀ ਹੋ ਸਕਦਾ ਇੰਨੀ ਟੈਂਪਰੇਚਰ ਹੋਵੇ ਬੱਚੇ ਨੂੰ ਵੀ ਇਹ ਬਾਡੀ ਫਾਈਟ ਕਰ ਰਹੀ ਹੈ ਤੇ ਜਦ ਫਿਰ ਉਹ ਲਿਖੀਆ ਲਿਖੀਆ ਕਾਫੀ ਟਾਈਮ ਬਾਅਦ ਉਹਨੇ ਦੇਖਿਆ ਹੋਊਗਾ ਵੀ ਇਹ ਹੈਗੀ ਆ ਹਾਲਤ ਪਹਿਲਾਂ ਤਾਂ ਜਾਨੀ ਉਹਨੇ ਦੇਖਣ ਲਈ ਆਈ ਥਿੰਕ ਉਹਦੇ ਕੋਲ ਟਾਈਮ ਹੀ ਨਹੀਂ ਸੀ ਮੈਂ ਪਹਿਲਾਂ ਬੱਚੇ ਨੂੰ ਦੇਖ ਲਾ ਨੋਟ ਤਾਂ ਬਾਅਦ ਚ ਵੀ ਬਣਾ ਸਕਦਾ ਸੀ ਮੈਨੂੰ ਕਹੀ ਜਾ ਰਹੀ ਆ ਵੀ ਇਹ ਡਾਕਟਰ ਨੂੰ ਦੇਖ ਕੇ ਤਾਂ ਇਦਾਂ ਬੈਠਦੀ ਨਹੀਂ ਇਹਦੀ ਸਕਿਨ ਦਾ ਕਿਉਂ ਕਲਰ ਚੇਂਜ ਹੋਈ ਜਾ ਰਿਹਾ ਹੈ ਇਹ ਬੁੱਲਣੋਂ ਹੁਣ ਤੈਨੂੰ ਕਹਿੰਦੀ ਨਹੀਂ ਕੁਛ ਘਟੀ ਜਾ ਵੱਲ ਦੇਖਣ ਦੀ ਆਈ ਥਿੰਕ ਤੇ ਜਦੋਂ ਉਹਨੇ ਦੇਖਿਆ ਫਿਰ ਜਾ ਕੇ ਬਾਹਰ ਕੋਡ ਕਾਲ ਕਰਤੀ ਉਹਨੇ ਫਿਰ ਸਾਰਾ ਹਸਪੀਟਲ ਆ ਗਿਆ ਈਵਨ ਇੰਨੇ ਉਹਦੇ ਜਾਣ ਦੇ 2 ਸੈਕਿੰਡ ਬਾਅਦ ਇੱਕ ਬਲੱਡ ਵਰਕ ਕਰਨ ਦੀ ਲੇਡੀ ਆਈ ਆ ਉਹ इवन ਉਹਦੀਆਂ ਨੀਲੀਆਂ ਹੋਈਆਂ ਬਾਹਾਂ ਚੋਂ ਵੀ ਬਲੱਡ ਕੱਢ ਰਹੀ ਮੈਂ ਉਹਨੂੰ ਕਹਿ ਰਹੀ ਆ ਵੀ ਇਹਦੀਆਂ ਬਾਹਾਂ ਨੂੰ ਇਹਨੇ针 ਨੂੰ ਵੀ ਹੈ ਉਹਨੂੰ ਮਤਲਬ ਬਲੱਡ ਲੈਣਾ ਚਲੇ ਜਾਣਾ ਜਨਰਲ ਹੈ ਨਹੀਂ ਜੀ ਨੌਲੇਜ ਹੈ ਨਹੀਂ ਜਿਹੜਾ ਉਹ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਨਹੀਂ ਚਾਹਦੇ ਅੱਛਾ ਭੈਣ ਜੀ ਇਹ ਘਟਨਾਕਰਮ ਤੁਸੀਂ ਆਪਣੇ ਉੱਪਰ ਹੰਡਾਇਆ 5 ਘੰਟੇ ਤੁਹਾਡੇ ਹੱਥਾਂ ਦੇ ਵਿੱਚੋਂ ਬੱਚੀ ਚਲੀ ਗਈ ਹੁਣ ਤੁਸੀਂ ਕੀ ਸੋਚਦੇ ਹੋ ਕਿ ਨੂੰ ਦੋਸ਼ ਇੱਥੇ ਦਿੱਤਾ ਜਾ ਸਕਦਾ ਕੀ ਗਲਤੀ ਕਿੱਥੇ ਹੋਈ ਡਾਕਟਰਾਂ ਨੇ ਕੀ ਕੀਤਾ ਜਾਂ ਉਹਦੀ ਕੇਅਰ ਨਹੀਂ ਹੋਈ ਕੀ ਤੁਹਾਡਾ ਮਨ ਕੀ ਕਹਿੰਦਾ ਕੀ ਚਾਹੁੰਦੇ ਹੋ ਹੁਣ ਤੁਸੀਂ ਜੀ ਜੇ ਡਾਕਟਰ ਉਹਨੂੰ ਪ੍ਰੋਪਰਲੀ ਲਾਈਕ ਇਲਾਜ ਕਰਦੇ ਕੋਈ ਉਹਨੂੰ ਅੰਡਰਸਟੈਂਡ ਕਰਦੇ ਉਹਦਾ ਇਲਾਜ ਹੋ ਸਕਦਾ ਸੀ ਇੰਨੀ ਤਾਂ ਕੋਈ ਹੈ ਨਹੀਂ ਸੀ ਬਿਮਾਰੀ ਬੀਵੋ ਦਾ ਇਲਾਜ ਨਾ ਹੋ ਸਕੇ ਨਾਲੇ 5 ਬਹੁਤ ਜ਼ਿਆਦਾ ਨ ਇੱਕ ਲਾਈਫ ਸੇਵ ਬੱਚਾ ਹੋਵੇ ਜੀ ਬਹੁਤ ਤੇ ਦੁੱਖ ਦੀ ਖਬਰ ਹੈ ਤੇ ਮੈਂ ਤੁਹਾਡੀ ਇਹ ਗੱਲ ਮੈਂ ਸਮਝ ਸਕਦਾ ਇੱਕ ਮਾਂ ਦਾ ਹਿਰਦਾ ਜਿਹਦੇ ਉਹਦੀਆਂ ਫੇਕ ਫੋਟੋਆਂ ਬੱਚੀ ਦੀ ਮੈਂ ਵੇਖ ਜੀ ਤੁਹਾਡੀ ਇੰਟਰਵਿਊ ਸੁਣੀ ਬਹੁਤ ਦੁੱਖ ਦੀ ਘੜੀ ਹੈ ਪਰਿਵਾਰ ਤੇ ਤੁਸੀਂ ਇਸ ਦੇਸ਼ ਜਿਹੜਾ ਦੁਨੀਆ ਦੇ ਸਭ ਤੋਂ ਬੈਸਟ ਅੱਜ ਖਬਰ ਆਈ ਹੈ ਕਿ ਨਿਊਜ਼ੀਲੈਂਡ ਤੇ ਹੋਰ ਦੇਸ਼ ਉਹਨਾਂ ਦੇ 73% ਦੇ ਕਰੀਬ ਲੋਕ ਨੇ ਜਿਨ੍ਹਾਂ ਨੂੰ ਇੱਕ ਦਿਨ ਦੇ ਵਿੱਚ ਡਾਕਟਰ ਦੇਖ ਜਾਂਦਾ ਤੇ 43% ਕੈਨੇਡੀਅਨ ਜਿਨ੍ਹਾਂ ਨੂੰ ਫਸਟ ਦੇ ਡਾਕਟਰ ਦੂਸਰੇ ਦਿਨ ਦਿੰਦਾ ਪਰ ਡਾਕਟਰ ਰੱਬ ਦਾ ਰੂਪ ਹੈ 5 ਘੰਟੇ ਐਮਰਜੈਂਸੀ ਦੇ ਵਿੱਚ 3 ਬੱਚੀ ਡਾਕਟਰ ਐਮਰਜੈਂਸੀ ਡਿਪਾਰਟਮੈਂਟ ਚ ਨਹੀਂ ਕਿ ਇਹਦਾ ਸੋਚਿਆ ਹੀ ਨਹੀਂ ਸੀ ਜੇ ਆਪਾਂ ਕਹਿੰਦੇ ਵਾਕੈਂਸੀ ਚਲੋ ਉਹਨਾਂ ਕੋਲ ਇਨਸਟਰੂਮੈਂਟ ਨਹੀਂ ਸੀ ਜਾਂ ਕੋਈ ਨਹੀਂ ਪ੍ਰੋਪਰਲੀ ਕੇਅਰ ਕਰ ਸਕਿਆ ਆਪਾਂ ਮੰਨ ਲੈਂਦੇ ਵੀ ਹੋ ਗਿਆ ਪਰ ਉਹਨਾਂ ਕੋਲੇ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਬੱਚੀ ਨੂੰ ਆਕਸੀਜਨ ਤੱਕ ਨਹੀਂ ਨਸੀਬ ਹੋਈ ਹਮਮ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਜੀ ਦੇਖੋ ਕੁਝ ਕਿ ਚੀਜ਼ਾਂ ਜਿਹੜੀਆਂ ਆਪਣੇ ਹੱਥ ਨੇ ਪਰ ਤੁਹਾਡਾ ਰੋਸਾ ਤੇ ਦੁੱਖ ਜਿਹੜਾ ਉਹ ਬਿਲਕੁਲ ਸਿਰ ਤੇ ਐ ਸਿਸਟਮ ਦੀ ਕਿਤੋਂ ਫੇਲ ਹੋ ਰਿਹਾ ਡਾਕਟਰਾਂ ਦੀ ਅਣਗਹਿਲੀ ਆ ਜਾਂ ਕਿਸੇ ਗਲਤ ਔਰ ਗੱਲਬਾਤ ਇਹਨੂੰ ਹੋਏਗੀ ਇਹਦਾ ਪੱਖ ਮੈਂ ਲੱਭਣ ਦੀ ਕੋਸ਼ਿਸ਼ ਕਰਾਂਗਾ ਤੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਹੁਣ ਇਹੀ ਇੱਕ ਦੁਆ ਹੈ ਕਿ ਉਸ ਬੱਚੀ ਨੇ ਜਿਹਨੇ ਜ਼ਿੰਦਗੀ ਹੁਣ ਇਹੀ ਇੱਥੇ ਆ ਕੇ ਗੱਲਾਂ ਮੁੱਕਦੀਆਂ ਉਹ ਕਹਿੰਦਾ ਪੱਠ ਪਵੇ ਇਹੋ ਜਿਹਾ ਕੈਨੇਡਾ ਜੀ ਨੂੰ ਮੈਂ ਕੀ ਕਰਨਾ ਹੁਣ ਜਦ ਮੇਰਾ ਪਰਿਵਾਰ ਦਾ ਸਾਰਾ ਕੁਝ ਇਹ ਹੋ ਗਿਆ 5 ਘੰਟੇ ਇੱਕ ਬੱਚੀ ਐਮਰਜੈਂਸੀ 'ਚ ਰਹਿੰਦੀ ਆ ਤੇ ਵਿੱਚ ਕੋਈ ਬਲੱਡ ਲੈ ਗਿਆ ਕੋਈ ਐਕਸ ਵਾਲੇ ਲੈ ਗਿਆ ਉਹ ਠੀਕ ਹੈ ਉਹਨਾਂ ਦਾ ਪ੍ਰੋਟੋਕਾਲ ਆ ਉਥੋਂ ਉਹਨੂੰ ਪਤਾ ਲੱਗਣਾ ਕਿ ਇਹਨੂੰ ਨੁਕਸ ਕੀ ਆ ਬਲੱਡ ਵਰਕ ਤੋਂ ਤੇ ਹਾਂਜੀ ਪਹਿਲਾਂ ਬੇਸਿਕ ਤੋਂ ਉਹਨੂੰ ਦੋ ਨਾ ਫਿਰ ਚਲੋ ਸਾਰਾ ਦਿਨ ਹੀ ਲਾ ਹਾਂ ਬਿਲਕੁਲ ਸਭੋ ਉਹਨੂੰ ਪਹਿਲਾਂ ਬਿਲਕੁਲ ਯੈਸ ਯੈਸ ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ ਵੀ ਜਦ ਤੱਕ ਉਹਨੂੰ ਤੁਸੀਂ ਡਾਇਗਨੋਸ ਕਰ ਰਹੇ ਹੋ ਜਦ ਤੱਕ ਉਹਦੀ ਕੇਅਰ ਹੋਵੇ ਜਦ ਤੁਸੀਂ ਦੱਸ ਰਹੇ ਹੋ ਉਹ ਬੱਚੀ ਦਾ ਰੰਗ ਬਦਲ ਰਿਹਾ ਉਹਦਾ ਚਿਹਰਾ ਠੀਕ ਹੋ ਰਿਹਾ ਉਹ ਇਰੀਟੇਟ ਹੋ ਰਹੀ ਆ ਉਹਦੀਆਂ ਆਲਮਤਾਂ ਨੂੰ ਖਿਆਲ ਨਹੀਂ ਰੱਖਿਆ ਇਹ ਇਹ ਗੱਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਉਹ ਜਦੋਂ ਆਲਮੋਸਟ ਉਹਨਾਂ ਚੁੱਪ ਹੋ ਹੀ ਚੁੱਕੀ ਸੀ ਜਦੋਂ ਉਹਨੇ ਜਾ ਕੇ ਬਾਹਰ ਹੀ ਸਰ ਦੇ ਫਿਰ ਜਿੱਦਾਂ ਅੱਧਾ ਘੰਟਾ ਪੂਰੇ ਹਸਪੀਟਲ ਦੇ ਡਾਕਟਰਾਂ ਨੂੰ ਬੇਲ ਆ ਗਈ ਪੰਜ ਪੰਜ ਮਿੰਟ ਇੱਕ ਡਾਕਟਰ ਨਹੀਂ ਆ ਸਕਿਆ ਚੈੱਕ ਕਰ ਉੱਥੇ ਸੀ ਫਿਰ ਕੋਈ ਪੇਸ਼ੈਂਟ ਨੂੰ ਨੀਡ ਨਹੀਂ ਸੀ ਉਹਨਾਂ ਦੀ ਆਈ ਡੋਨਟ ਨੋ ਫਿਰ ਉਹਨਾਂ ਨੂੰ ਕਿੱਦਾਂ ਇੰਨੀ ਬੇਲ ਆ ਠੀਕ ਆ ਭੈਣ ਜੀ ਧੰਨਵਾਦ ਤੁਹਾਡੇ ਸਮੇ ਲਈ ਥੈਂਕ ਯੂ ਬੇਟੀ ਅਮਰਤ ਗਿੱਲ ਦੀ ਗੱਲਬਾਤ ਸੁਣ ਕੇ ਉਹਨਾਂ ਦੀ ਮਾਤਾ ਜੀ ਤੋਂ ਬਹੁਤ ਦੁੱਖ ਦੀ ਗੱਲ ਹੈ ਮਨਪ੍ਰੀਤ ਸੰਘਾ ਅਮਰੀਕਾ ਵਾਲੇ ਪਾਸੋਂ ਉਹ ਕਹਿੰਦੇ ਸਾਡਾ ਇਸ ਲੱਖ ਗੁਣਾ ਚੰਗਿਆ ਇਹਦੇ ਹਿਸਾਬ ਨਾਲ ਅਸੀਂ ਪੇ ਤਾਂ ਕਰਦੇ ਆ ਪਰ ਸਾਡੇ ਐਮਰਜੈਂਸੀ ਦੇ ਵਿੱਚ 15 ਤੋਂ 20 ਮਿੰਟ ਵੇਟ ਆ ਆ ਹਾਲ ਨਹੀਂ ਇਹ ਤਾਂ ਫਿਰ ਗੱਲ ਇਹ ਹੋ ਗਈ ਵੀ ਰਾਦਰ ਤੁਸੀਂ ਬਾਕੀ ਖਰਚਾ ਵੀ 4000 ਪਰਿਵਾਰ ਪਾ ਨੂੰ ਕਰਦੇ ਹੀ ਹੋ 100 ਸਵਾ 100 ਐਮਐਸਪੀ ਵਾਲੇ ਵੀ ਲੈ ਜਾਂਦੇ ਆ ਔਰ ਲੈਜਨ 2 400 ਕੋਈ ਲੈ ਦੇ ਕਮ ਸੇ ਕਮ ਬੱਚੇ ਤਾਂ ਸਾਡੇ ਇੱਕ ਘਟਨਾ ਨਹੀਂ ਹੋਈ ਅੱਗੇ ਤੋਂ ਅੱਗੇ ਇਹ ਘਟਨਾਵਾਂ ਹੁਣ ਤੁਸੀਂ ਸੁਣ ਲਿਓ ਜਦ ਕਾਲਜ ਆਉਣੀਆਂ ਨੇ ਫਿਰ ਪਤਾ ਲੱਗਣਾ ਕਿ ਅਣਗਹਿਲੀਆਂ ਕਿੱਥੇ ਨੇ ਕੀ ਹੋ ਰਿਹਾ ਤੇ ਨਾਲ ਹੁਣ ਮੇਰੇ ਖੁਸ਼ ਨੇ ਉਹਨਾਂ ਨੇ ਇੱਕ ਵਿਦਿਆਰਥੀ ਜਿਹੜਾ ਇੱਥੇ ਆਇਆ ਹੋਇਆ ਸੀ ਜਿਸ ਪਿਤਾ ਦੀ ਮੌਤ ਪਿੱਛੇ ਪੰਜਾਬ ਚ ਹੋਈ ਹੈ ਤੇ ਉਹ ਇੱਥੇ ਦਮ ਤੋੜ ਗਿਆ ਜੀ ਡਾਊਨ ਟਾਊਨ ਦੇ ਵਿੱਚ ਤੇ ਉਸਦਾ ਸਰੀਰ ਪੰਜਾਬ ਨੂੰ ਹੁਣ ਭੇਜਣਾ ਦੇ ਬਾਰੇ ਉਹ ਜਾਣਕਾਰੀ ਦੇਣ ਆਏ। ਖੁਸ਼ ਜੀ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬੱਚੀ ਬਾਰੇ ਸੁਣ ਰਹੀ ਸੀ ਅਸੀਂ ਵੀ ਉਹਦੀਆਂ ਪਿਕਚਰਾਂ ਦੇਖੀਆਂ ਬੜਾ ਦੁੱਖ ਹੋਇਆ। ਚਲੋ ਰੱਬ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਜੀ। ਤੇ ਆਪਾਂ ਜਿਵੇਂ ਨਾਲ ਕੱਲ ਗੱਲ ਕੀਤੀ ਸੀ ਜੀ ਮੁੰਡਾ ਸੀਗਾ 20 ਸਾਲਾਂ ਦਾ ਨੌਜਵਾਨ ਤੇ 10 ਮਹੀਨੇ ਉਹਦੇ ਪਿਤਾ ਦੀ ਕੈਂਸਰ ਨਾਲ ਡੈਥ ਹੋ ਗਈ। ਕਾਫੀ ਪੈਸਾ ਬੂਸੋ ਉਹਨਾਂ ਦੀ ਬਿਮਾਰੀ ਲੱਗ ਗਿਆ ਤੇ ਮੀਨ ਕਹਨੇ ਕਰਕੇ ਮੁੰਡਾ ਆਇਆ ਸੀ ਤੇ 5 ਤਰੀਕ ਪਿਛਲੀ 5 ਤਰੀਕ ਨੂੰ ਉਹ ਪੂਰਾ ਹੋ ਗਿਆ ਇੱਥੇ ਸੈਂਟ ਪੌਲ ਹਸਪੀਟਲ ਤੇ ਬੋਡੀ ਪਈ ਆ ਮੈਂ ਤਾਂ ਵੈਸੇ ਮੁੰਡੇ ਨੂੰ ਜਾਣਦਾ ਵੀ ਨਹੀਂ ਸੀ ਪਰ ਮੇਰੀ ਟੋਰਾਂਟੋ ਤੋਂ ਡਿਊਟੀ ਲਾਈ ਮੁੰਡੇ ਨੇ ਉਹ ਨੂੰ ਤੋਂ ਕਾਹ ਜਾਣਦਾ ਸੀ ਕਿਸੇ 3 ਦਿਨ ਪਹਿਲਾਂ ICU 'ਚ ਰਿਹਾ ਉੱਥੇ ਹਸਪੀਟਲ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਕਿਸੇ ਸੋਸ਼ਲ ਵਰਕਰ ਨੇ ਲੱਭਿਆ ਪਤਾ ਕੀਤਾ ਕਾਲਜ 'ਚ ਕਿਹੜੇ 'ਚ ਪੜਦਾ ਉੱਥੋਂ ਫਿਰ ਮੁੰਡਿਆਂ ਤੋਂ ਨੰਬਰ ਲੈ ਕੇ ਸਾਡੇ ਤੱਕ ਤਾਂ ਇਨਫਰਮੇਸ਼ਨ ਪਹੁੰਚੀ ਦੇ ਫ੍ਰਾਂਟੋ ਵਾਲੇ ਮੁੰਡੇ ਦੇ ਮੰਮੀ ਡੈਡੀ ਇੱਥੇ ਆਏ ਹੋਏ ਨੇ ਫਾਰਮੈਟੀਆਂ ਪੂਰੀਆਂ ਕਰਨ ਜੀ ਤੇ ਹੁਣ ਅਸੀਂ ਚਾਹੁੰਦੇ ਆ ਵੀ ਉਹਦੀ ਬੋਡੀ ਇੰਡੀਆ ਪਹਚਾ ਲਈਏ ਤੇ ਤਾਂ ਕਿ ਜੇ ਮਾੜੇ ਮੋٹے ਪੈਸੇ ਬੱਤੇ ਉਹਨਾਂ ਦੀ ਮਾਤਾ ਜੀ ਨੂੰ ਦੇ ਦਈਏ ਨੋਹਰਾਪਿੰਡ ਆ ਜੀ ਉਹਦਾ ਨਬਰ ਸੀਲ 'ਚ ਪਿਆ ਰਹੇ ਤੇ ਆਪਾਂ ਹੁਣ ਫੰਡ ਰੇਜ਼ ਕਰ ਰਹੇ ਆਂ ਆਪਾਂ ਹੋਰ ਵੀ ਰੇਡੀਓ ਸਟੇਸ਼ਨ ਤੇ ਗੱਲ ਕੀਤੀ ਸੀ 35 3600 ਦੀ ਕੱਲ ਦਾ 15 16 ਘੰਟੇ ਇਕੱਠਾ ਹੋ ਗਿਆ ਤੇ ਮੈਂ ਉਹਦੇ ਲਈ ਦੱਸਿਆ gofundme.com /ਜਸ਼ਨ ਸਿੰਘ ਜੀ ਉੱਥੇ ਜਾ ਕੇ ਤੁਸੀਂ ਕਾਰਡ ਤੋਂ ਆਪਣੇ ਤੋਂ ਡੋਨੇਸ਼ਨ ਦੇ ਸਕਦੇ ਹੋ gofundme.com/jashansingh ਤੇ ਬਾਕੀ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਜੀ ਮੇਰਾ ਨੰਬਰ ਹੈ ਜੀ 604 779 0300 ਤੁਸੀਂ ਕੋਈ ਨੰਬਰ ਰਿਪੀਟ ਕਰ ਦਿਓ ਜੀ 604 779 0300 ਇਹ ਅੱਛਾ ਇੱਕ ਜਿਹੜਾ ਟ੍ਰਾਂਟੋਲ ਵਾਲੀ ਗੱਲ ਤੁਸੀਂ ਦੱਸ ਰਹੇ ਹੋ ਉਹ ਅਲੱਗ ਕੋਈ ਹੋਈ ਹੈ ਕਟਨਾ ਨਹੀਂ ਨਹੀਂ ਨਹੀਂ ਨਹੀਂ ਜੀ ਟ੍ਰਾਂਟੋ ਤੋਂ ਮੁੰਡੇ ਨੇ ਡਿਊਟੀ ਲਈ ਆ ਉਹ ਜਾਣਦਾ ਸੀ ਮਿਲਿਆ ਉਹ ਵੀ ਨਹੀਂ ਕਿਉਂਕਿ ਜਿਹੜਾ ਬੱਚਾ ਪੂਰਾ ਹੋਇਆ ਜੀ ਸਾਲਾਂ ਦਾ ਮੁੰਡਾ ਸੀ ਸਟੂਡੈਂਟ ਉਹ ਜਦੋਂ ਸੋਸ਼ਲ ਵਰਕਰ ਨੂੰ ਪਤਾ ਲੱਗਿਆ ਸਟੂਡੈਂਟ ਆ ਕਲੰਬੀਆ ਗਈ ਉੱਥੋਂ ਨੇ ਪਤਾ ਪੁੱਤਾ ਕਰਕੇ ਨਾਲਦਿਆਂ ਤੋਂ ਪਤਾ ਕੀਤਾ ਫਿਰ ਉਹਨਾਂ ਨੂੰ ਦੱਸਿਆ ਫਿਰ ਉਹ ਮੁੰਡੇ ਨੇ ਕਿਵੇਂ ਨਾ ਕਿਵੇਂ ਟ੍ਰਾਂਟੋ ਖ਼ਬਰ ਪਹੁੰਚਾਈ ਮੁੰਡੇ ਕੋਲੇ ਰੱਬ ਜਾਣੇ ਫੇਸਬੁੱਕ ਤੋਂ ਦੇਖਿਆ ਫਿਰ ਉਹ ਮੁੰਡੇ ਨੇ ਮੇਰੀ ਇੱਥੇ ਡਿਊਟੀ ਲਈ ਆ ਹੁਣ ਉਹ ਮੁੰਡੇ ਦੇ ਮੰਮੀ ਡੈਡੀ ਟ੍ਰਾਂਟੋ ਵੇ ਇਹ ਇਸੇ ਮੁੰਡੇ ਦਾ ਇਸੇ ਮੁੰਡੇ ਦਾ ਸਲਾਣਾ ਪਿੰਡ ਦਾ ਕੋਈ ਕਨੈਕਸ਼ਨ ਆਏ ਕੋਈ ਸਲਾਣਾ ਪਿੰਡ ਆ ਜਿਹੜਾ ਖੰਨੇ ਮੁੰਡਾ ਟ੍ਰੌਂਟ ਉਹ ਸਲਾਣੇ ਦਾ ਉਹ ਬਸ ਅੱਛਾ ਪਰ ਉਹ ਮਿਲਿਆ ਉਹ ਵੀ ਨਹੀਂ ਕਦੇ ਬਸ ਉਹ ਇੱਕ ਜਣਗੀ ਚਲੋ ਵੀ ਰੱਬ ਨੇ ਚਲੋ ਮੇਕਰੀਆ ਪੰਜ ਵੀ ਹੈਲਪ ਕਰ ਰਹੇ ਆ ਉਹਦੇ ਮੰਮੀ ਡੈਡੀ ਹੋਰੀ ਮਾੜਾ ਮੋਟਾ ਉਹਨਾਂ ਨੂੰ ਜਾਣਦੇ ਨੇ ਤੇ ਉਹ ਆਏ ਹੋਏ ਨੇ ਜੀ ਹੁਣ ਕੱਲ ਪਾਸਪੋਰਟ ਲੈ ਕੇ ਮੈਂ ਉਹਦੇ ਨਾਲ ਜਿਹੜਾ ਸਟੂਡੈਂਟ ਮੁੰਡਾ ਪੜ੍ਹਦਾ ਸੀ ਉਹ ਤੋਂ ਲੈ ਕੇ ਪਾਸਪੋਰਟ ਉਹਦੇ ਮੰਮੀ ਡੈਡੀ ਨੂੰ ਅੱਜ ਦਿੱਤਾ ਸੈਂਟ ਪੌਲ ਵਾਲਿਆਂ ਨੇ ਉਹਨਾਂ ਦਾ ਪਾਸਪੋਰਟ ਤੇ ਸਟੂਡੈਂਟ ਡਾਕੂਮੈਂਟ ਮੰਗਾਇਆ ਸੀ ਉਹ ਗਏ ਨੇ ਉਹ ਤਾਂ ਕਹਿੰਦੇ ਸੀ ਮਹਾਰਾਣੀ ਪ੍ਰਨੀਤ ਕੌਰ ਨੇ ਫੋਨ ਕਰਤਾ ਇੰਡੀਅਨ ਕੌਂਸੂਲੇਟ ਮੂ ਵੀ ਹੈਲਪ ਕਰਨਗੇ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਮਿਲਣਾ ਤੇ ਹਸਪੀਟਲ ਵਾਲਿਆਂ ਨੇ ਦਿੱਤਾ ਸ਼ਾਇਦ ਨਹੀਂ ਕੋਈ ਬਿੱਲ ਆ ਜਿੰਨਾ ਮੈਂ ਨਾਲ ਜਿਹਦੇ ਨਾਲ ਮੁੰਡੇ ਨਾਲ ਰਹਿੰਦਾ ਸੀ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਸੋਸ਼ਲ ਵਰਕਰ ਨੇ ਉਹ ਫਾਰੀਜ ਰਿਸਪੌਂਸਿਬਿਲਟੀ ਉਹਨੇ ਲੈ ਲਈ ਆਪਾਂ ਤਾਂ ਇਹਨਾ ਕਰਨਾ ਵੀ ਉਹਦੀ ਬੋਡੀ ਇੰਡੀਆ ਪਹੁੰਚ ਜੇ ਉਹਦੇ ਲਈ ਫੰਡ ਰੇਸ ਕਰ ਰਹੇ ਹਾਂ ਜੀ ਉਹਦੇ ਲਈ ਖਰਚਾ ਟੋਟਲ ਮੈਂ ਜੀ 700 ਨਾਲ ਗੱਲ ਕੀਤੀ ਸਾਰੇ ਕਹਿੰਦੇ ਅੰਦਾਜ਼ਨ 10000 ਡਾਲਰ ਲੱਗ ਜੂਗਾ ਆਪਣੇ ਕੋਲੇ ਤੇ ਆਪਾਂ ਵੀ ਚਲੋ ਜੇ ਬੱਟ ਗਏ ਉਹ ਮੁੰਡਾ 10ਵੇਂ ਮਹੀਨੇ ਪਹਿਲਾਂ ਉਹਦੇ ਡੈਡੀ ਦੀ ਡੈਥ ਹੋ ਗਈ ਸੀ ਜੀ ਹੁਣੇ 5 ਨਵੰਬਰ ਨੂੰ ਇੰਡੀਆ ਗਿਆ ਸੀ ਤੇ ਪਿਛਲੇ ਸਾਲ ਉਹ 20 ਮਾਰਚ ਨੂੰ ਆਇਆ ਸੀ ਮੁੰਡਾ ਇੱਥੇ ਸਟੂਡੈਂਟ ਪਹਿ 5 ਨਵੰਬਰ ਨੂੰ ਗਿਆ ਸੀ ਜਨਵਰੀ ਐਂਡ ਚ ਮੁੜਿਆ ਤੇ ਬਸ ਪੂਰਾ ਹੋਣ ਤੋਂ 10 ਦਿਨ ਪਹਿਲਾਂ ਤੋਂ ਇੰਡੀਆ ਤੋਂ ਮੁੜਿਆ ਸੀਗਾ ਕਿਉਂਕਿ ਇਹਦਾ ਜੀ ਪੂਰੀ ਚੰਗੀ ਤਰ੍ਹਾਂ ਡਿਟੇਲ ਤਾਂ ਨਹੀਂ ਮੈਨੂੰ ਮਿਲੀ ਜਿੰਨਾ ਮੈਨੂੰ ਮੁੰਡੇ ਨੇ ਦੱਸਿਆ ਹਸਪੀਟਲ ਨੇ ਕਿਹਾ ਵੀ ਬਾਥਰੂਮ ਦੇ ਡਿੱਗਿਆ ਸੀਗਾ ਹਸਪੀਟਲ ਬੈਂਕੂਵਰ ਚ ਕਿਤੇ ਉਹਨਾਂ ਨੇ ਚੱਕ ਕੇ 911 ਕਰਤੀ ਤੇ 3 ਦਿਨ ਆਈਸੀਯੂ ਚ ਰਿਹਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਕੀ ਹੋਇਆ ਕੀ ਨਹੀਂ ਫਿਰ ਸੋਸ਼ਲ ਵਰਕਰ ਨੇ ਜਿਮਤ ਕੀਤੀ ਉਹਨੇ ਪਤਾ ਕੀਤਾ ਵੀ ਇਹ ਸਟੂਡੈਂਟ ਸੀ ਕਲੰਬੀਆ ਕਾਲਜ ਪੜਦਾ ਸੀ ਸਾਇੰਸ ਵਰਲਡ ਕੋਲੇ ਜਿਹੜਾ ਉੱਥੋਂ ਫੇਰ ਗਾਂ ਹੌਲੀ ਹੌਲੀ ਸਾਨੂੰ ਗਾ ਇਨਫੋਰਮੇਸ਼ਨ ਆਈ ਗਈ ਠੀਕ ਹੈ 604 779 0300 ਨੰਬਰ ਹੈ ਖੁਸ਼ ਦਾ ਤੇ ਮੈਨੂੰ ਆਪਣਾ ਕੋਈ ਲਿੰਕ ਫੇਸਬੁੱਕ ਤੇ ਵੀ ਭੇਜ ਦਿਓ ਮੈਂ ਸ਼ੇਅਰ ਕਰ ਦਵਾਂ ਜੀ ਤੇ ਇਹਨੂੰ ਆਪਾਂ ਛੇਤੀ ਤੋਂ ਛੇਤੀ ਇਕੱਠੇ ਕਰਕੇ ਪੈਸੇ ਭੇਜ ਹਾਂਜੀ ਹਾਂਜੀ ਸਭ ਤੋਂ ਸਭ ਤੋਂ ਵਧੀਆ ਤਰੀਕਾ ਹੈ ਜੀ gofundme.com /ਜਸ਼ਨ ਸਿੰਘ ਉਥੇ ਨਾਲ ਦੀ ਨਾਲ ਅਪਡੇਟ ਵੀ ਹੋਈ ਜਾਂਦਾ ਕਿ ਲੈ 35 3600 ਜੀ ਹੋ ਗਿਆ ਆਪਣੇ ਕੋਲ 12 15 ਘੰਟੇ ਵੈਰੀ ਗੁੱਡ ਤੇ ਆਪਣਾ ਟਾਰਗੇਟ ਹੈ ਜੀ 12000 ਤੱਕ ਕਰਨੀ ਕਰਨਾ ਬਾਕੀ ਜਿਹੜੇ ਪੈਸੇ ਵੱਜ ਜਾਣਗੇ ਉਹਦੀ ਮਾਤਾ ਜੀ ਨੂੰ ਭੇਜ ਦਾਂਗੇ ਕਿਉਂਕਿ ਪਰਿਵਾਰ ਦੀ ਵੀ مالی ਵੀ ਉੰਨੀ ਵਧੀਆ ਨਹੀਂ ਕਿਉਂਕਿ ਪਿਤਾ ਜੀ ਤੇ ਟੈਨਸਰ ਹੀ ਹੈਪੀ ਟੈਟਰੀ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਉਦੋਂ ਉਹਨਾਂ ਤੇ ਬਹੁਤ ਪੈਸੇ ਲੱਗੇ ਸੀ ਉਥੇ ਪਿੱਛੇ ਵੀ gofundme ਆਪਣਾ ਕਿਲੇ ਜ਼ਮੀਨ ਦੀ ਹਾਂਜੀ gofundme.com/jashan singh ਜਸ਼ਨ ਸਿੰਘ ਜੀ ਐਫ ਐਸ ਐਚ ਐਨ ਸਿੰਘ ਜਸ਼ਨ ਸਿੰਘ ਉਸ ਵੀ ਮੁੰਡੇ ਦੀ ਇੱਕ ਚਿਹਰਾ ਸਾਰਥੀ ਡਿਟੇਲ ਕੀਤੀ ਹੋਈ ਹੈ ਜੀ ਤੇ ਉੱਥੇ ਤੁਸੀਂ ਆਪਣਾ ਨਾਮ ਈਮੇਲ ਪਾ ਕੇ ਆਪਣੇ ਕਾਰਡ ਤੋਂ ਤੁਸੀਂ ਜਿੰਨੀ ਜਿੰਨੀ ਜਿਸ ਤੋਂ ਬਣਦੀ ਹੈ ਜੀ ਉਨੀ ਮਦਦ ਮarli ਮਦਦ ਕਰ ਸਕਦੇ ਠੀਕ ਹੈ ਜੀ ਖੁਸ਼ ਧੰਨਵਾਦ ਤੁਹਾਡਾ ਮੈਂ ਫੋਨ ਨੰਬਰ ਫੇਰ ਦਿੰਦਾ 60477903200 ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਟਾਈਮ ਦੇਣ ਲਈ ਬਹੁਤ ਨਹੀਂ ਕੋਈ ਗੱਲ ਨਹੀਂ ਸਾਡੀ ਡਿਊਟੀ ਬਣਦੀ ਹੈ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਧੰਨਵਾਦ ਲਾਲਜੋਤ ਸਿੰਘ ਜੀ ਲਾਈਨ ਨੰਬਰ 3 ਤੁਸੀਂ ਏਅਰ ਤੇ ਹੋ ਹਾਂਜੀ ਭਾਈ ਹਾਂਜੀ ਭਾਈ ਹਰਜੀਤ ਸਿੰਘ ਜੀ ਆਪ ਤੇ ਆਪ ਦੇ ਸਰੋਤਿਆਂ ਨੂੰ ਸਤਿਕਾਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦੇਖੋ ਪਹਿਲਾਂ ਤਾਂ ਜੋ ਐਫਐਸ ਦੇ ਵਿੱਚ ਬੱਚੀ ਦੀ ਘਟਨਾ ਹੋਈ ਆ ਉੱਤੇ ਦੁੱਖ ਪ੍ਰਗਟ ਕਰਦੇ ਆ ਦੂਸਰੀ ਇਹ ਲੜਕੇ ਦੀ ਘਟਨਾ ਹੋਈ ਆ ਦੁੱਖ ਪ੍ਰਗਟ ਕਰਦੇ ਆ ਹਮਦਰਦੀ ਪ੍ਰਗਟ ਕਰਦੇ ਆ ਸਤਿਗੁਰੂ ਇਹਨਾਂ ਦੀ ਵਿਛੜੀ ਹੋਈ ਆਤਮਾ ਨੂੰ ਪਰਿਵਾਰ ਨੂੰ ਵੀ ਭਾਣਾ ਮੰਨਣ ਦਾ ਤੇ ਆਤਮਾ ਨੂੰ ਚਰਨਾਂ ਚ ਨਵਾਸਣ ਤੇ ਜਿਹੜੀ ਉਹ ਬੱਚੀ ਐ ਵਾਲੀ ਆ ਉਹਨਾਂ ਦਾ ਜਿਹੜਾ ਮਾਮਾ ਜੀ ਆ ਉਹ ਮੇਰੇ ਨਾਲ ਘੰਟੇ ਤੇ ਮੈਂ ਕਿਹਾ ਇੰਨੇ ਦਿਨ ਮਿਲੇ ਨਹੀਂ ਉਹ ਕਹਿੰਦੇ ਸੀ ਬੱਚੀ ਚੜ੍ਹਾਈ ਹੋ ਗਈ ਮੈਂ ਕਿਹਾ ਕੀ ਗੱਲ ਹੋਈ ਜੀ ਉਹਨਾਂ ਦਾ ਨਾਮ ਜੀਤ ਸਿੰਘ ਚਾਹਲਾ ਤੇ ਉਹ ਕਹਿੰਦਾ ਵੀ ਹਸਪੀਟਲ ਦੀ ਅਣਗਹਿਲੀ ਦੇ ਕਾਰਨ ਇਹ ਕੰਮ ਹੋਇਆ ਤੇ ਸਾਨੂੰ ਬੜਾ ਦੁੱਖਾ ਕਿ ਇਦੂ ਤਾਂ ਅਸੀਂ ਜੇ ਖਾੜਵੜ ਕੰਟਰੀ ਦੇ ਵਿੱਚ ਹੁੰਦੇ ਤਾਂ ਪੈਸੇ ਦੇ ਕੇ ਤਾਂ ਇਲਾਜ ਕਰ ਸਾਨੂੰ ਇਹ ਤਾਂ ਨਾ ਦੁੱਖ ਹੁੰਦਾ ਮਨ ਚ ਮਹਿਸੂਸ ਹੁੰਦਾ ਵੀ ਅਸੀਂ ਇਲਾਜ ਦੇ ਦੁੱਖੋ ਸਾਡੀ ਪੜੀ ਪੜਾਈ ਪੋਲੋਸੀ ਜਿਹੜੀ ਬੱਚੀ ਆ ਸਾਡੇ ਹੱਥਾਂ ਚੋਂ ਚੱਲ ਗਈ ਆ ਇਹ ਹੁਣ ਆਪਾਂ ਜੇ ਦੇਖੀਏ ਭਾਈ ਮਹਰ ਸਿੰਘ ਦੀ ਗਲਤੀ ਕਿਤੇ ਗਲਤੀ ਸਾਡੇ ਸਿਸਟਮ ਦੀ ਆ ਕਿਉਂਕਿ ਪੈਸਾ ਜੇ ਆਪਾਂ ਕਹੀਏ ਨਾ ਹਸਪੀਟਲਾਂ ਚ ਪ੍ਰਬੰਧ ਨਹੀਂ ਨਾ ਪ੍ਰਬੰਧ ਦੀ ਆ ਮਸ਼ੀਨਾਂ ਸਾਰੀਆਂ ਦਵਾਈਆਂ ਸਾਰੀਆਂ ਸਿਸਟਮ ਜਿਹੜਾ ਉਹ ਅਬਿਊਜ਼ ਕਰ ਰਿਹਾ ਵਾ ਇਹ ਜਿਹੜੇ ਹੈਗੇ ਆ ਆਪਣੇ ਐਮਰਜੈਂਸੀ ਤੇ ਮਰੀਜ਼ ਆਉਂਦੇ ਤੁਸੀਂ ਦੇਖਿਆ ਹੋਊਗਾ ਕਿੰਨੀਆਂ ਕੋਈ ਲਾਈਨ ਤੇ ਵੇਟ ਕਰਦਾ ਚੜਾਈ ਕਰ ਗਿਆ ਹਾਂਜੀ ਕਿਸੇ ਨੂੰ ਕੋਈ ਟਾਈਮ ਸਿਰ ਦੇ ਉੱਤੇ ਮੈਡੀਕ ਮਿਲੀ ਹੁਣ ਇਸ ਕੁੜੀ ਲੜਕੀ ਨੂੰ 25 ਨੂੰ ਅ ਹੋ ਕੇ ਉਹਦੇ ਲੰਗਸ ਦੇ ਵਿੱਚ ਪਾਣੀ ਭਰ ਗਿਆ ਸੀ ਉਹਨੂੰ ਸਾਹ ਦੀ ਤਕਲੀਫ ਹੋ ਗਈ ਸੀ ਇਹ ਨਹੀਂ ਇਹਨੂੰ ਪਤਾ ਲੱਗਾ ਕਿ ਉਸ ਲੜਕੀ ਦੇ ਪਿਤਾ ਨੂੰ ਹੋਇਆ ਸੀ ਪਿਤਾ ਦਾ ਸਾਰਾ ਕੁਝ ਚੈੱਕ ਕਰ ਲਿਆ ਵਿੱਚ ਤੈਨੂੰ ਹੋਇਆ ਵਾ ਬੇ ਤੈਨੂੰ ਅਸੀਂ ਦਵਾ ਦੇ ਦਿੰਦੇ ਆਂ ਲੜਕੀ ਦਾ ਕੁਝ ਨਹੀਂ ਕੀਤਾ 25 ਦਾ ਪੈਨਲ ਦੀ ਦਾ ਇਸ ਸਾਡੀ ਪ੍ਰੈਕਟਿਕ ਕਲੰਬੀਆ ਦੀ ਗਵਰਨਮੈਂਟ ਇਹਨੂੰ ਸਿਸਟਮ ਦੇ ਵਿੱਚ ਸੁਧਾਰ ਲਿਆਉਣਾ ਚਾਹੀਦਾ ਵੀ ਉਹ ਸਿਸਟਮ ਚ ਕਿੱਦਾਂ ਸੁਧਾਰ ਆਵੇ ਤੇ ਉਹ ਜਿਹੜਾ ਸਿਸਟਮ ਪਾਰਦਰਸ਼ਿਕ ਹੋ ਕੇ ਜਿਹੜਾ ਰੀਅਲ ਐਮਰਜੈਂਸੀ ਬੰਦਾ ਉਹਨੂੰ ਟਰੀਟ ਪਹਿਲ ਦੇ ਆਧਾਰ ਦੇ ਉੱਤੇ ਕੀਤਾ ਜਾਣਾ ਚਾਹੀਦਾ ਤਬੋਂ ਕੇ ਜੇਕਰ ਖਦਾਲਾ ਵਾਸਤਾ ਕਦੇ VGH ਚ ਲੈ ਆਉਂਦੇ ਸ਼ਾਇਦ ਬੱਚੀ ਦੀ ਜਾਨ ਇਹ ਬਚ ਜਾਂਦੀ ਪਰ ਉਦੋਂ ਸਨੋ ਵੀ ਬੜੀ ਪਈ ਹੋਈ ਸੀ ਤੇ ਆਪਾਂ ਇੱਥੇ ਦਾ ਫਰਕ ਵੀ ਬਹੁਤ ਉਹ ਘੰਟੇ ਡੇਢ ਘੰਟੇ ਦੀ ਡਰਾਈਵ ਆ ਤੇ ਮੈਂ ਫੇਰ ਜ਼ੋਰ ਕਰਦਾ ਕਿ ਸਾਡੇ ਸਿਸਟਮ ਦੇ ਵਿੱਚ ਸਾਡੀ ਗਵਰਨਮੈਂਟ ਜਾਂ ਜਿਹੜੀ ਫਰੇਜਰ ਅਥਾਰਟੀ ਆ ਉਹ ਸੁਧਾਰ ਲਿਆਏ ਇਦਾਂ ਦੀ ਘਟਰਾਵਾ ਇਹ ਕੋਈ ਪਹਿਲੀ ਨਹੀਂ ਹੋਈ ਇਹ ਪਿੱਛੇ ਬਹੁਤ ਹੋ ਚੁੱਕੀਆਂ ਇਹਨਾਂ ਨੇ ਸਬਕ ਨਹੀਂ ਲਿਆ ਕਿ ਇਦਾਂ ਹੁੰਦੀਆਂ ਰਹਿਣੀਆਂ ਜਿੰਨਾ ਟੱਕਰ ਪਾਵਰ ਪ੍ਰੈਸ਼ਰ ਨਾਲ ਬਣਿਆ ਇਹਨਾਂ ਦੇ ਉੱਤੇ ਤੇ ਇਹ ਵੀ ਹੁਣ ਸੁਣਵਾਈ ਵੀ ਹੋਣੀ ਚਾਹੀਦੀ ਕਾਰਨਰ ਦੇ ਕੋਲ ਕਈ ਹੋਈ ਰਿਕੁਐਸਟ ਉਹ ਕਾਰਨਰ ਕਰੇ ਜਾਂ ਸਾਨੂੰ ਵੀ ਪਟੀਸ਼ਨ ਫਾਈਲ ਕਰਕੇ ਇਹਦਾ ਹੱਲ ਔਰ ਜਿਹੜਾ ਬੰਦਾ ਗਲਤ ਆ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਦੂਸਰਾ ਜਿਹੜਾ ਸਾਡਾ ਇੱਕ ਨੌਜਵਾਨ ਇਥੇ ਪੜ੍ਹਨ ਆਇਆ ਜਿਹੜੀ ਉਹ ਹੁਣੇ ਗੱਲ ਕੀਤੀ ਸੀਗੀ ਉਹਦੇ ਵਾਸਤੇ ਸਾਨੂੰ ਤਨਮਨ ਧੰਦੇ ਨਾਲ ਜ਼ਰੂਰ ਉਹਦੇ ਵਾਸਤੇ ਔਰ ਉਹਦੀ ਮਾਤਾ ਪਿੱਛੇ ਕੱਲੀ ਆ ਪਿਤਾ ਕੈਂਸਰ ਦੇ ਨਾਲ ਚੜ੍ਹਾਈ ਕਰ ਗਿਆ ਸੀ 5 ਏਕੜ ਜ਼ਮੀਨ ਆ ਤੇ ਕਾਫੀ ਕਰਜ਼ਾ ਵੀ ਚੜਿਆ ਕਰਜ਼ਾ ਲੈ ਕੇ ਆਇਆ ਸੀਗਾ ਤੇ ਕੈਂਸਰ ਤੇ ਵੀ ਪੈਸੇ ਲੱਗੇ ਮਾਂ ਵਿਚਾਰੀ ਹੁਣ ਕੱਲੀ ਆ ਕਿੱਥੇ ਉਹਨੂੰ ਪੁੱਤ ਦੇ ਉਤੋਂ ਡਿਗਰੀ ਆਈ ਦੇ ਉਤੇ ਪਾਣੀ ਵਾਰ ਕੇ ਪੀਣਾ ਸੀ ਢੋਲੀ ਤੇ ਹੁਣ ਕਿੱਥੇ ਉਹ ਮਾਂ ਜਿਹੜੀ ਹੈਗੀ ਆਵੇ ਆਪਣੇ ਜਿਹੜੇ ਪੁੱਤ ਦੀ ਆ ਉਹਦੇ ਉਤੋਂ ਵੀ ਪਾਣੀ ਪਰ ਵਾਰਨਾ ਪਰ ਪਾਣੀ ਕਿਹੜਾ ਵਾਰਨਾ ਸਾਰਿਆਂ ਨੂੰ ਪਤਾ ਵਾ ਕਿ ਡਿਊਟੀ ਵੇਥੇ ਮਾਤਾ ਰੋਵੇ ਲੈ ਗਏ ਭਾਈ ਹੁਣ ਡਿਊਟੀ ਤੇ ਬੈਠੀ ਜਦੋਂ ਦੇਖੂਗੀ ਕਿ ਪੁੱਤ ਦੀ ਅਰਥੀ ਭੈਣ ਭਰਾ ਜਿਹੜੇ ਲੱਗਦੇ ਘਰ ਦੇ ਹੋਰ ਚੱਕੇ ਲੈ ਕੇ ਜਾਣਗੇ ਤੇ ਮਾਂ ਉਹ ਘੜਾ ਪਨੂ ਤੇ ਕੀ ਸੋਚੂਗੀ ਕਿ ਮੈਂ ਆਪਕਾ ਤੋਂ ਡਗੋਰੀ ਬਣਨ ਪਾਲਿਆ ਸੀ ਕਿ ਪਰ ਡਗੋਰੀ ਹੁਣ ਮੈਨੂੰ ਬਣਨੀ ਪਈ ਮੈਂ ਬੇਨਤੀ ਕਰਦਾ ਕਿ ਸਾਨੂੰ ਮਲਮ ਪੱਟੀ ਕਹਿੰਦੇ ਚਿੜੀ ਚੁੰਝ ਪਰ ਨੀਰ ਨਾ ਕਟੇ ਨਦੀ ਦੇ ਵਿੱਚੋਂ ਇੱਕ ਚਿੜੀ ਚੁੰਝ ਭਰ ਕੇ ਲੈ ਜਾਏ ਨੀਰ ਨਹੀਂ ਕਰਦਾ 150 ਡਾਲਰ ਦੇਣ ਦੇ ਨਾਲ ਸਾਡਾ ਕੁਝ ਨਹੀਂ ਘਟਣਾ ਔਰ ਉਹਨਾਂ ਦੇ ਮਾਂ ਦੇ ਉੱਤੇ ਤੇ ਉਸ ਬੱਚੇ ਦੀ ਅਰਥੀ ਜਾਣ ਵਾਸਤੇ ਇਹ ਜਿਹੜਾ 150 ਡਾਲਰ ਬਹੁਤ ਸਹਾਈ ਹੋ ਸਤ ਬੇਨਤੀ ਆ ਅਰੇ ਹੀ ਇਹਦੇ ਬਾਅਦ ਵੱਧ ਤੋਂ ਵੱਧ ਕਰਨਾ 15000 ਡਾਲਰ ਇਕੱਠਾ ਹੋ ਜਾਏ ਤਾਂ ਉਹਨਾਂ ਦਾ ਵੀ ਮਲਮ ਪੱਟੀ ਵੀ ਲੱਗ ਜਾਏ ਧੰਨਵਾਦ ਜੀ ਭਾਈ ਮਜੀਤ ਸਿੰਘ ਜੀ ਜੋ ਕੁਛ ਬੱਚੀ ਦੇ ਨਾਲ ਹੋਇਆ ਬੜਾ ਮਾੜਾ ਹੋਇਆ ਜੀ ਜਿਵੇਂ ਕਿ ਤੁਸੀਂ ਅਨਾਉਂਸ ਵੀ ਕੀਤਾ ਸੀ ਪਿਛਲੇ ਸਾਲ ਦਸੰਬਰ ਦੇ ਵਿੱਚ ਜਦੋਂ ਸਾਡੇ ਪਰਿਵਾਰ ਦੇ ਨਾਲ ਇਹੋ ਜਿਹਾ ਹੋਇਆ ਸੀਗਾ ਤਕਰੀਬਨ ਤੁਸੀਂ ਇਹ ਦੇਖੋ ਵੀ ਬੇਟਾ ਸਿਰਫ 5 ਸਾਲ ਦੀ ਉਹਦੀ ਉਮਰ ਆ ਚਾਰ ਤਕਰੀਬਨ 4 ਜਾਂ 5 ਵਾਰ ਉਹਨੂੰ ਮੋਰਫੀਨ ਦਈ ਹੈ ਪਰ ਇਹਦੇ ਪੁੱਤਾਂ ਸਰਜਰੀ ਯਲੋ ਕਦਮੀ ਕੀਤੀ ਕਿਸੇ ਆਪਾ ਜਿਹਨੂੰ ਰੋਜ਼ ਨਿੰਦਦੇ ਆ ਪਾਣੀ ਪੀ ਪੀ ਕੇ ਉਥੋਂ ਦੇ ਮਾੜੇ ਤੋਂ ਮਾੜਾ ਝੋਲਾ ਛਾਪ ਡਾਕਟਰ ਵੀ ਇਹ ਕਹਿੰਦਾ ਵੀ ਭਾਈ ਜਦੋਂ ਜਦੋਂ ਇਹ ਕਲੀਅਰ ਹੋ ਗਿਆ ਆ ਵੀ ਅਪੈਂਡਿਕਸ ਦੀ ਪ੍ਰੋਬਲਮ ਆ ਤੇ ਰਾਈਟ ਵੇ ਸਰਜਰੀ ਹੋਣੀ ਚਾਹੀਦੀ ਆ ਅੰਦਰ ਆਪਰੇਸ਼ਨ ਥੀਟਰ ਦੇ ਅੰਦਰ ਜਾ ਕੇ ਵੀ ਤਕਰੀਬਨ ਡੇਢ ਘੰਟਾ ਵੇਟ ਕਰਨੀ ਪਈ ਮੈਂ ਆਪ ਇਸ ਚੀਜ਼ ਦਾ ਖੁਦ ਗਵਾਹ ਆ ਪਰ ਜਿਹੜੀ ਚੀਜ਼ ਹੋਣੀ ਦੇਖਣ ਵਾਲੀ ਆ ਉਹ ਇਹ ਆ ਕਿ ਫ੍ਰੀਜ਼ਰ ਹੈਲਥ ਦੇ ਅੰਦਰ ਹੀ ਜਿਹੜਾ ਆ ਰਾਇਲ ਕਲੰਬੀਅਨ ਹਸਪਤਾਲ ਆਉਂਦਾ ਫ੍ਰੀਜ਼ਰ ਹੈਲਥ ਦੇ ਥੱਲੇ ਹੀ ਸਰੀ ਮੈਮੋਰੀਅਲ ਲਾਉਂਦਾ ਫ੍ਰੀਜ਼ਰ ਹੈਲਥ ਦੇ ਥੱਲੇ ਆਪਸ ਫੋਰਡ ਦੇ ਹਸਪੀਟਲ ਆਉਂਦੇ ਆ ਪਰ ਸੋਚਣ ਵਾਲੀ ਗੱਲ ਇਹ ਆ ਕਿ ਰਾਇਲ ਕਲੰਬੀਅਨ ਦਾ ਕਿੰਨਾ ਫਰਕ ਫਰਕ ਕਹਿ ਲਈਏ ਚੀਜ਼ ਦੇ ਵਿੱਚ ਕੋਈ ਅਰਥਕਤਨੀ ਨਹੀਂ ਹੋਊਗੀ ਜਿਹਦੇ ਤੋਂ ਇਹ ਸਾਹਸ ਝਲਕਦਾ ਕਿ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਇੱਥੇ ਬਿਹੇਵੀਅਰ ਹੋ ਰਿਹਾ ਜੇ ਉਹੀ ਬੱਚੀ ਮੈਂ ਦਾਅਵੇ ਨਾ ਕਹਿ ਸਕਦਾ ਜੇ ਉਹੀ ਬੱਚੀ ਵੈਨਕੂਵਰ ਚਿਲਡਰਨ ਹਸਪੀਟਲ ਦੇ ਵਿੱਚ ਚਲ ਜੰਦੀ ਦੇ ਰਾਈਟ ਵੇ ਇਲਾਜ ਹੋਣਾ ਸੀਗਾ ਤੇ ਜਿਹੜੇ ਹੁਣ ਸਾਡੇ ਜਿਹੜੇ ਫੋਟੋਆਂ ਖਿਚਾਖਚਾ ਮੁੱਖ ਮੰਤਰੀ ਸਹਿਬਾਨਾ ਯਮਲੇਸ਼ਤਾਨ ਦੇ ਨਾਲ ਪਾਉਂਦੇ ਆ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਇਸ ਕੌਮ ਦੇ ਲਈ ਕੁਝ ਕਰ ਲਓ ਨਹੀਂ ਤਾਂ ਤੁਹਾਡਾ ਬੇੜਾ ਬਹਿ ਜਾ ਤੁਸੀਂ ਘਰੇ ਬਹਿ ਜਾ ਹੋਰ ਕੋਈ ਕੰਮ ਕਰਨੇ ਨੂੰ ਤੁਹਾਡੇ ਮੰਤਰੀ ਕੋਲ ਟਾਈਮ ਹੈ ਨਹੀਂਗਾ ਤੇ ਤੁਹਾਡੇ ਟੱਬਰਾਂ ਦੇ ਨਾਲ ਫੋਟੋਆਂ ਖਿਚਾਖਚਾ ਪਾਉਣ ਨੂੰ ਤੁਹਾਡੇ ਕੋਲ ਟਾਈਮ ਹੈਗਾ ਹੂੰ ਸੋ ਇੱਕ ਚੀਜ਼ ਜਿਹੜੀ ਮੇਨ ਚੀਜ਼ ਸਾਨੂੰ ਦੇਖਣੀ ਪੈਣੀ ਹੈ ਇਹਦੇ ਲਈ ਆਵਾਜ਼ ਚੱਕਣੀ ਪੈਣੀ ਆ ਕਿ ਫਰੀਜ਼ਰ ਹੈਲਥ ਦੇ ਅੰਡਰ ਜਿਹੜੇ ਦੋ ਹਸਪੀਟਲ ਆ ਉੱਥੇ ਵੱਖੋ ਵੱਖਰੇ ਤਰ੍ਹਾਂ ਦਾ ਕਿਉਂ ਟ੍ਰੀਟਮੈਂਟ ਹੋ ਰਿਹਾ ਆ ਅਲੱਗ ਸਟੈਂਡਰਡ ਕਿਉਂ ਆ ਯੈਸ ਸੋ ਇਹਦੇ ਤੋਂ ਕਲੀਅਰਲੀ ਸਾਬਤ ਹੁੰਦਾ ਆ ਵੀ ਅਸੀਂ ਭਾਵੇਂ ਲੱਖ ਟਾਰਾਂ ਮਾਰੀ ਜਾਈਏ ਵੀ ਸਾਡੇ ਆ ਜੀ ਇਦਾਂ ਹੈ ਅਸੀਂ ਆਉਤਾ ਆ ਪਰ ਦੂਜੇ ਤਰ ਜਿਹੜੇ ਸ਼ਹਿਰੀਆਂ ਸਾਡੇ ਨਾਲ ਇੱਥੇ ਵੀ ਬਿਹੇਵੀਅਰ ਹੁੰਦਾ ਹੈ ਸੋ ਇਹਦੇ ਲਈ ਜਿਹੜੀ ਸਾਰਿਆਂ ਤੋਂ ਵੱਡੀ ਲੋੜ ਆ ਜਿਹੜੇ ਸਾਡੇ ਗੁਰਦੁਆਰਾ ਸਹਿਬਾਨ ਆ ਸੋ ਮੈਨੂੰ ਲੱਗਦਾ ਉਹਨਾਂ ਨੂੰ ਤਾਂ ਕੋਈ ਏਸੀ ਦਾ ਕੋਈ ਫਿਕਰ ਹੀ ਹੈ ਨਹੀਂਗਾ ਉਹਨਾਂ ਨੂੰ ਤਾਂ ਸਿਰਫ ਇਹ ਹੈ ਵੀ ਗੋਲਕ ਦੇ ਵਿੱਚ ਬੱਦ ਤੋਂ ਬੱਦ ਦਮੜੇ ਅਸੀਂ ਕਿਹੜੇ ਢੰਗ ਦੇ ਨਾਲ ਲਿਆਉਣੇ ਆ ਕਿਹੜਾ ਅਸੀਂ ਪ੍ਰਚਾਰਕ ਲਿਆਉਣਾ ਆ ਉਹਨਾਂ ਨੂੰ ਕੋਈ ਇਹ ਇਹਦਾ ਫਿਕਰ ਨਹੀਂ ਕਿ ਆਲੇ ਦੁਆਲੇ ਕੀ ਹੋ ਰਿਹਾ ਆ ਕੀ ਅਸੀਂ ਕਰਨਾ ਚਾਹੀਦਾ ਕੀ ਅਸੀਂ ਨਹੀਂ ਕਰਨਾ ਤੇ ਬੜੀ ਤਕਲੀਫ ਖਬਰਾਂ ਹੁੰਦੀਆਂ ਜਦੋਂ ਅਸੀਂ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਇਹਨਾਂ ਵਿਕਸਿਤ ਦੇਸ਼ ਦੇ ਵਿੱਚ ਬੈਠੇ ਆ ਤੇ ਜੋ ਵਿਕਸਿਤ ਦੇਸ਼ ਦੇ ਵਿੱਚ ਜੋ ਕੁਝ ਇਹੋ ਜਿਹੀ ਗੱਲਾਂ ਹੁੰਦੀਆਂ ਮੈਂ ਕਹਿੰਦਾ ਵੀ ਜੇ ਇਹਨਾਂ ਨੂੰ ਮਾੜੀ-ਮੋਟੀ ਵੀ ਇਹਨਾਂ ਦੇ ਵਿੱਚ ਕਿਤੇ ਕੁਝ ਹਿਊਮਨਿਟੇਰੀਅਨ ਕੰਪੈਸ਼ਨੇਟ ਲਈ ਕੋਸ਼ਿਸ਼ ਹੋਵੇ ਤੇ ਨੱਕ ਡੋਬ ਕੇ ਮਰ ਜਾਣੇ ਧੰਨਵਾਦੀ ਗਗਨ ਸਿੰਘ ਜਦ ਤੁਸੀਂ ਦੇ ਨਾਲ ਸੌਰੀ ਤੁਹਾਡੀ ਗਾਲ ਗਗਨ ਸਿੰਘ ਉਹਨਾਂ ਦੇ ਬੇਟੇ ਨੂੰ ਸਲੀ ਮੋਰਿਓ ਹਸਪੀਟਲ ਦੇ ਵਿੱਚ ਰੱਖਿਆ ਤੇ ਉੱਤੜ ਫਰੇ ਬੱਚੇ ਦੀ ਉਹਨਾਂ ਫੋਟੋਆਂ ਬਿਲਕੁਲ ਦੇ ਦੀਆਂ ਪਾਈਆਂ ਕਿ ਇੱਥੇ ਕੋਈ ਨਹੀਂ ਪੁੱਛਦਾ ਹੁਣ ਇਸ ਬੱਚੀ ਦੇ ਕੇਸ ਤੇ ਵਿੱਚ ਡਾਕਟਰ ਆਲੇ ਫਿਰ ਰਿਹਾ ਪਹਿਲਾ ਡਾਕਟਰ ਕਹਿੰਦਾ ਮੇਰੀ ਸ਼ਿਫਟ ਖਤਮ ਹੋ ਗਈ ਦੂਜਾ ਡਾਕਟਰ ਆ ਗਿਆ ਬਲੱਡ ਵਰਕ ਹੋ ਰਿਹਾ ਨਾਲ ਐਕਸਰੇ ਹੋ ਰਿਹਾ ਬੱਚੀ ਦੇ ਹਾਲਾਤ ਨੇ ਜਿਹੜੇ ਉਹ ਅੱਧੇ ਅੱਧੇ ਘੰਟੇ ਬਾਅਦ ਵਿਗੜ ਰਹੇ ਨੇ ਮਾਂ ਬਿਲਕ ਰਹੀ ਹੈ ਤੇ ਫਿਰ ਜਦ ਉਹਦਾ ਸਾਹ ਟੁੱਟ ਰਿਹਾ ਤਾਂ ਸਾਰਾ ਹਸਪਤਾਲ ਉੱਥੇ ਇਕੱਠਾ ਹੋਇਆ ਉਹ ਪ੍ਰੋਟੋਕਾਲ ਆ ਉਹ ਕੋਡ ਹੋ ਗਿਆ ਜੀ ਇਹ ਹੋ ਗਿਆ ਤੇ ਪਹਿਲਾਂ ਜਦੋਂ ਕਹਿ ਰਹੀ ਹੈ ਇਸ ਕਾਗਜ਼ਾਂ ਪੱਤਰਾਂ ਤੇ ਇਹ ਬਲੱਡ ਵਰਕ ਤੇ ਤੇ ਜਿਹੜੀਆਂ ਪੜਾਈਆਂ ਕੀਤੀਆਂ ਲਾਮਤਾਂ ਨੂੰ ਦੇਖ ਕੇ ਡਾਕਟਰ ਨੂੰ ਨਹੀਂ ਪਤਾ ਲੱਗਦਾ ਵੀ ਮਰੀਜ਼ ਦੀ ਹਾਲਾਤ ਹਾਲਤ ਕਿਹਜੇ ਆ ਫਿਰ ਸਾਨੂੰ ਜਿਹੜਾ 1.5 ਸੌ ਡਾਲਰ ਐਮਐਸਪੀ ਦੇ ਕੇ ਤਾਂ ਸਾਡਾ 1.5 ਸੌ 200 300 ਹੋਰ ਹੋ ਜਾ 400 ਐਟਲੀਸ ਸਾਡਾ ਪ੍ਰਾਈਵੇਟ ਇਹ ਸਾਡਾ ਇਹੋ ਜਿਹਾ ਕੁਝ ਹੋ ਜਾਵੇ ਸਾਨੂੰ ਕੇਅਰ ਤਾਂ ਮਿਲੇ ਅਮਰੀਕਾ ਵਾਲੇ ਪਾਸੇ ਗੱਲ ਠੀਕ ਹੈ 5-700 ਇੱਕ ਹਫ਼ਤੇ ਮਹੀਨੇ ਦਾ ਇੱਕ ਪਰਿਵਾਰ ਦਾ ਖਰਚਾ ਪਰ 20 ਮਿੰਟ ਦੀ ਵੇਟ ਐ ਐਮਰਜੈਂਸੀ ਦੇ ਵਿੱਚ ਔਰ ਸਟੇਟ ਆਫ ਦਾ ਆਰਟ ਜਿਹੜੀਆਂ ਉਹਨਾਂ ਦੀਆਂ ਫੈਸਿਲਿਟੀਆਂ ਨੇ ਕੋਈ ਐਂਉਂ ਨਹੀਂ ਹੈ ਆ ਤਾਂ ਐਂਉਂ ਲੱਗਦਾ ਜਿਵੇਂ ਨਾਈਜੀਰੀਆ ਤੁਸੀਂ ਬੈਠੇ ਹੋ ਬੱਚੀ ਤੁਹਾਡੇ ਹੱਥਾਂ 'ਚ ਦਮ ਤੋੜ ਜਾਏ ਇਦੋਂ ਉੱਪਰ ਕੀ ਐ ਦ੍ਰਿਸ਼ਟੀਕਲਾਰ ਕਹਿੰਦੀ ਮੈਂ ਸਰਪ੍ਰੋਸ ਕਰਨਾ ਬਜਟ ਟਰੂਡੋ ਕਹਿੰਦਾ ਮੈਂ ਸੀਰੀਅਨ ਰਿਫਿਊਜੀ ਲੈ ਕੇ ਆਉਣੇ ਜਿਹੜੇ ਪੈਸੇ ਦੇ ਰਹੇ ਨੇ ਉਹਨਾਂ ਦੇ ਬੱਚੇ ਉਹਨਾਂ ਦੀਆਂ ਬੁੱਕਲਾਂ 'ਚ ਮਰ ਰਹੇ ਨੇ ਆ ਦੇਖ ਲਿਓ ਮਈ ਤੋਂ ਪਹਿਲਾਂ ਅਪ੍ਰੈਲ ਤੇ ਮਾਰਚ ਦੇ ਵਿੱਚ ਹੁਣ ਦੇਖਿਓ ਦਮ ਛੱਲਿਆਂ ਨੇ ਵੀ ਕਿਵੇਂ ਹੋਣਾ ਗਰਮ ਤੇ ਗੱਲਾਂ ਦੇਖ ਫੈਰੀਆਂ ਆ ਰਹੀਆਂ ਸੜਕਾਂ ਵੱਲ ਰਹੀਆਂ ਸਰਪਲਸ ਹੋ ਰਿਹਾ ਵੱਡੀਆਂ ਲਾਈਨਾਂ ਪੈ ਰਹੀਆਂ ਹਸਤਾਲ ਵੱਲ ਰਹੇ ਨੇ ਬ੍ਰਿਜ ਚੌੜੇ ਹੋ ਰਹੇ ਨੇ ਟੰਡਲਾਂ ਵੱਲ ਰਹੀਆਂ ਨੇ ਉੱਬਰ ਆ ਰਹੀ ਹੈ ਇਹ ਹੈ ਬਸ ਜਿਵੇਂ ਪਿਛਲੇ ਦੇਸ਼ ਵਾਲਾ ਆਪਣੇ ਪੰਜਾਬ ਵਾਲਾ ਬਾਈ ਬੋਲਦੋਂ ਦੀ ਸੜਕਾਂ ਵੱਲ ਰਹੀਆਂ ਉਹੀ ਗੱਲ ਇੱਥੇ ਚੱਲੀ ਹੋਈ ਆ ਪਤਾ ਨਹੀਂ ਇਹ ਤਾਂ ਜੇਸਤਾਨ ਲੱਗਿਆ ਉਹੀ ਜਾਣੇ ਜਿਹਦੇ ਧੀ ਪੁੱਤੋ ਦੇ ਹੱਥਾਂ ਦੇ ਵਿੱਚ ਪੂਰਾ ਹੋ ਗਿਆ ਉਹ ਤਾਂ ਇਹਦੇ ਨਾਲੋਂ ਪੰਜਾਬ ਤੋਂ ਚੰਗਾ ਕੀ ਸਹੂਲਤਾਂ ਬਹੁਤ ਮੈਡੀਕਲ ਫ੍ਰੀ ਹੈ ਜੀ ਆਹ ਮੈਡੀਕਲ ਫ੍ਰੀ ਨਾਲੋਂ ਤਾਂ ਅਗਲਾ ਪੈਸੇ ਦੇ ਦੇ ਗੁਰਮੀਤ ਸਿੰਘ ਸਿੱਧੂ ਜੀ ਲਾਈਨ ਨੰਬਰ 5 ਤੁਸੀਂ ਇਰ ਤੇ ਹੋ ਵਾਰੀ ਕਾਲ ਕਰ ਰਹੇ ਪਰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਤੇ ਤੁਸੀਂ ਹਮੇਸ਼ਾ ਸੱਚ ਲਈ ਬੋਲਦੇ ਹੋ ਮੈਂ ਪਹਿਲਾਂ ਧੰਨਵਾਦ ਪਰਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਾ ਤੇ ਮੇਰੀ ਐਫਸੋਰਡ ਪਰਿਵਾਰ ਨਾਲ ਦੇ ਵਿਚਾਰੇ ਇਹ ਹੈਗਾ ਕਿ ਅਸੀਂ ਐਮਰਜੈਂਸੀ ਤੇ ਜਾਨੇ ਐਮਰਜੈਂਸੀ ਦਾ ਮਤਲਬ ਕੀ ਹੈ ਉੱਥੇ ਜਾ ਕੇ ਵੀ ਅਸੀਂ 6-7 ਘੰਟੇ ਵੇਟ ਕਰੀ ਜਾਂਦੇ ਆ ਬੈਠੇ ਐਮਰਜੈਂਸੀ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਗਏ ਅੱਧਾ ਘੰਟਾ ਲੱਗ ਸਕਦਾ ਘੰਟਾ ਲੱਗ ਸਕਦਾ ਪਰ ਇੱਕ ਪਾਸੇ ਅਸੀਂ ਰੇਡੀਓ ਟੌਂਗ ਤੇ ਕਰਕੇ ਪੈਸੇ ਇਕੱਠੇ ਕਰਕੇ ਦਿੰਨੇ ਆ ਕਦੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਬਾਰ ਤੇ ਨਾਂ ਰੱਖ ਲਿਆ ਕਦੇ ਅਸੀਂ ਮਾਤਾ ਕ੍ਰਿਪਟੀ ਦੇ ਨਾਂ ਤੇ ਰੱਖ ਲਿਆ ਉਹ ਲੋਕ ਜਿਹੜੇ ਪੈਸੇ ਇਕੱਠੇ ਕਰਦੇ ਨੇ ਆਪਦੇ ਮਤਲਬ ਲਈ ਪੈਸੇ ਇਕੱਠੇ ਕਰਦੇ ਨੇ ਪਰ ਜਿੰਨਾ ਚਿਰ ਤੱਕ ਸਾਡੀ ਕਮਿਊਨਿਟੀ ਨੂੰ ਮੈਡੀਕਲ ਦੀ ਸੇਵਾ ਸਹੀ ਨਹੀਂ ਮਿਲਦੀ ਅਸੀਂ ਉਹਨਾਂ ਚਿਰ ਤੱਕ ਇਹ ਕੰਮ ਕੀ ਕਰਨੇ ਬਿਲਕੁਲ ਮਿਲੀਅਨਸ ਆਫ ਡਾਲਰ ਇਕੱਠੇ ਕਰਕੇ ਦੇ ਦਿਓ ਤੇ ਉਹਦੇ ਬਾਅਦ ਮੈਨੂੰ ਦੱਸੇ ਕਮਿਊਨਿਟੀ ਵੀ ਉਹਨਾਂ ਨੂੰ ਉਸ ਦੇ ਐਵਿਜ਼ ਦੇ ਵਿੱਚ ਲਾਓ ਜੀ ਆ ਤੁਹਾਨੂੰ ਸਪੈਸ਼ਲ ਅਸੀਂ ਦੇ ਰਹੇ ਤੇ ਨਾਲੇ ਤਾਂ ਉਹ ਐਮਐਸਪੀ ਦੇਣ ਮਹੀਨੇ ਦਾ ਨਾਲੇ ਫੇਰ ਉਹ ਜੇਬਾਂ ਚੋਂ ਕੱਢ ਕੇ ਜਿਹੜੀ ਦਿਮਾਗੀ ਤੌਰ ਤੇ ਕਰਕੇ ਉਹ ਦਿਨਾਂ ਦੇ ਵਿੱਚ ਜਦੋਂ ਜੀ ਬਾਬੇ ਨਾਨਕ ਦਾ ਦਿਨ ਹੈ ਆਪਾਂ ਉਸ ਸਮੇਂ ਮੂਡ ਦੇ ਵਿੱਚ ਆਂ ਦਾਨ ਕਰੋ ਮੈਂ ਨਹੀਂ ਕਹਿੰਦਾ ਨਾ ਦਾਨ ਕਰੋ ਦਾਨ ਸਾਰੇ ਰੇਡੀਓ ਹੁੰਦੇ ਆ ਤੇ ਅਸੀਂ ਕਰਦੇ ਆਂ ਸਾਰੇ ਪਰ ਉਹਦੇ ਵਿੱਚੋਂ ਸਾਨੂੰ ਕੀ ਮਿਲਦਾ ਕੋਈ ਦਫੇ ਦਾ ਸਹੀ ਵੀ ਅਸੀਂ 2-3 ਮਿਲੀਅਨ ਡਾਲਰ ਖਰਚਿਆ ਕੋਈ ਕਮਿਊਨਿਟੀ ਨੇ ਦਿੱਤਾ ਉਹਦਾ ਫਾਇਦਾ ਕੀ ਆ ਕੋਈ ਕਹੋ ਪੇਸ਼ੈਂਟ ਉੱਥੇ ਘੰਟੇ ਵੇਟ ਬਾਰ ਸਾਨੂੰ ਸਾਡਾ ਪੁੱਛਗਿੱਛ ਕਰਦੇ ਨੇ ਉੱਥੇ ਤਾਂ ਅਸੀਂ 7-8 ਘੰਟੇ ਆ ਕੇ ਰੁਲੀ ਜਾਂਦੇ ਨੇ ਇਹ ਲੋਕ ਜਿਹੜੇ ਪੈਸੇ ਇਕੱਠੇ ਕਰਦੇ ਨੇ ਆਪਦੇ ਮਤਲਬ ਨੂੰ ਪੈਸੇ ਇਕੱਠੇ ਕਰ ਰਹੇ ਨੇ ਸਾਰੇ ਧੰਨਵਾਦ ਸਿੱਧੂ ਸਾਹਿਬ ਥੈਂਕ ਯੂ ਠੀਕ ਹੈ ਨਾ ਸਿਕੋਪੀ ਵੀ ਸ਼ੁਕਰੀਆ ਥੈਂਕ ਯੂ ਦੱਸੇ ਤਾਂ ਸਹੀ ਕੋਈ ਤਾਹੇ ਤਾਂ ਸਹੀ ਵੀ ਆ ਫਿਰ ਜੇ ਅਸੀਂ ਐਮਐਸਪੀ ਵੀ ਦੇਣਾ 750 ਡਾਲਰ ਨਿਊਯਾਰਕ ਤੋਂ ਇੱਕ ਮੈਸੇਜ ਆਇਆ ਉਹ ਕਹਿੰਦਾ ਮੈਂ 89 ਡਾਲਰ ਪਰ ਵੀਕ ਦੇਣਾ ਚਾਰ ਪੰਜ ਮੈਂਬਰ ਨੇ ਮੇਰੇ ਪਰਿਵਾਰ ਦੇ ਸੋ 400 ਡਾਲਰ ਹੋ ਗਿਆ ਮਹੀਨੇ ਦਾ ਤੇ 130 30 35 35 ਅਸੀਂ ਐਮਐਸਪੀ ਦੇ ਦਿੰਨੇ ਆ ਇੱਕ ਮਹੀਨਾ ਲੇਟ ਹੋ ਜਵੇ ਤੁਹਾਡੀ ਖਲ ਖਾਲੰਦ ਐਸਪੀ ਵਾਲੇ ਦੇ ਰਿਕਾਰਡਡ ਐਡ ਤੇ ਰਿਕਾਰਡਡ ਮੈਸੇਜ ਤੇ ਮੈਸੇਜ ਬਿੱਲ ਜਿਹੜੇ ਨੇ ਉਹ ਰਿਕਾਰਡਡ ਐਡ ਤੇ ਉਹਨਾਂ ਨੇ ਸਿਸਟਮ ਚ ਪਾਈ ਹੈ ਜਿਹਦਾ ਲੇਟ ਹੋ ਗਿਆ ਫੋਨ ਆਇਆ 250 ਤੋਂ ਤੁਹਾਡਾ ਐਮਐਸਪੀ ਲੇਟ ਹੋ ਗਿਆ ਤੁਹਾਡਾ ਆ ਹੋ ਗਿਆ ਤੁਹਾਡਾ ਇੱਧਰ ਕੋਈ ਦਿਨ ਸੋਦਾਉਂਦਾ ਹੈ ਇੱਧਰੋਂ ਗਰਾਰੀ ਅਸੀਂ ਚਾੜ ਲੈਣੀ ਹੈ ਦਿਮਾਗ ਚ ਫਿੱਟ ਕਰ ਲੈਣਾ ਪੁੰਨ ਤੇ ਪਾਪ ਜੀ ਤੇ ਆਹ ਤੇ ਉਹ ਜੀ ਦਿਓ ਜੀ ਕਰੋ ਜੀ ਚੱਕ ਕੇ ਦੇ ਦਿਓ ਤੇ ਆਪਣਾ ਨੌ ਬਣਾ ਲਓ ਉੱਥੇ ਤੇ ਉੱਥੋਂ ਤੁਹਾਡੇ ਆ ਜਿਹੜੀਆਂ ਤੁਹਾਡੇ ਮੋਢਿਆਂ ਦੀਆਂ ਪੌੜੀਆਂ ਮੈਂ ਬਹੁਤ ਵਾਰ ਲੋਕਾਂ ਨੂੰ ਕਹਿੰਦਾ ਤੁਸੀਂ ਸਾਰੇ ਪਾਸੇ ਪੱਟੀ ਦੇਉ ਸਾਰੇ ਪਾਸੇ ਮਿਲੀਅਨਸ ਆਫ ਡਾਲਰ ਦੇ ਨਾਲ ਤਾਂ ਬਿਜ਼ਨਸ ਦੇ ਉਹ ਖੋਲ ਕੇ ਫਿਰ ਮਿਲੀਅਨਸ ਡਾਲਰ ਪੌਕੇਟ ਚੋਂ ਦਉ ਤੇ ਜਿਹੜੇ ਕਰਕੇ ਜਿਨ੍ਹਾਂ ਦੇ ਨੌ ਲਮਕਦੇ ਆ ਨਾ ਉੱਪਰਲੇ ਬੰਨੇ ਜਿਨ੍ਹਾਂ ਨੂੰ ਸੈਟ ਗਿਆ ਫਲਾਣੇ ਨੇ 30 ਦੇ ਫਲਾਣੇ ਨੇ 35 ਫਲਾਣੇ ਨੇ 40 ਦੇ ਉਹਨਾਂ ਦੇ ਜਿਗਾਰ ਵੀ ਵੇਖਿਓ ਕਿਵੇਂ ਸੈਟ ਕੀਤੇ ਹੋਇਆ ਮੇਰੇ ਅਰਕਾ ਦਿਹਾੜੀ 100 ਦੀ ਕਮਾਖਿਆ ਤਾਂ 100 ਮੈਂ ਵੀ ਦੇਣਾ ਮੇਰਾ ਨੌ ਬੋਲ ਸਰਾਰ ਗੁਰਮukh ਸਿੰਘ ਗਿੱਲ 100 ਡਾਲਰ 100 ਦਮੜੇ ਖਤਮ ਕਹਾਣੀ ਕਰੇ ਜਵਾਬ ਕਹਿੰਦਾ ਵੀ ਮੈਨੂੰ ਕੰਪਿਊਟਰ ਲੈ ਕੇ ਦੋ 200 ਡਾਲਰ ਦਾ ਮੈਂ ਪੜਨਾ ਹੈ ਕਹਿੰਦਾ ਨਾ ਪਹਿਲਾਂ দান ਦੇਣ ਦੇ ਬੰਦੇ ਕਿਤੇ ਨਹੀਂ ਇਹ ਪ੍ਰਥਾ ਰੱਖੀ ਧਰਮ ਵਿੱਚ ਤੇ ਕਿਉਂ ਫਸੇ ਹੋਇਓ ਤੁਸੀਂ ਇਹਦੇ ਰਪਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ ਲਾਈਨ ਬਾਈ ਜੀ ਜਿਵੇਂ ਮੈਂ ਤੁਹਾਡਾ ਪ੍ਰੋਗਰਾਮ 5-6 ਸਾਲ ਤੋਂ ਸੁਣ ਰਿਹਾ ਬੜਾ ਤਰਕੀ ਨਾਲ ਕਰ ਰਹੇ ਆ ਕਿਉਂਕਿ ਇਹ ਧੀਰਾ ਦਾ ਮਤਲਬ ਉਹ ਮਾਰਾ انا સમાચાર ਮਿਲਿਆ ਸੇਮ ਪ੍ਰੋਬਲਮ ਮੇਰੀ ਧੀ ਨੂੰ ਵੀ ਜੀ ਸੇਮ ਮੈਨੂੰ ਲੱਗਦਾ ਨਮੂਨੀਆਂ ਦੀ ਸ਼ਿਕਾਇਤ ਹੈ ਕਿਉਂਕਿ ਮੇਰੀ ਧੀ ਵੀ ਅਕਸਰ ਆਲਮੋਸਟ ਖਾਦਮ ਸੀ ਪਰ ਅਸੀਂ ਜਦੋਂ ਹਸਪੀਟਲ ਲੈ ਜਾਂਦੇ ਆ ਤਾਂ ਇਹਨਾਂ ਮੁਲਕਾ ਨੂੰ ਲੱਗਦਾ ਯਾਰ ਇਹ ਪੰਜਾਬ ਥੋੜੋ ਵੈੰਦੀਆ ਥੋੜੋ ਇਸੇ ਦਾ ਬਸ ਮਤਲਬ ਹਮ ਇੱਥੇ ਸਾਨੂੰ ਇੱਥੇ ਮਤਲਬ ਡਾਕਟਰਾਂ ਨੇ ਸਹੀ ਲਾਇਕ ਕੀਤਾ ਸਮੇਂ ਸਰ ਮੇਰੀ ਧੀ ਬਾਜੀ ਹਣ 5 ਸਾਲ ਦੀ ਆ 3 ਸਾਲ ਲਗਾਤਾਰ ਸੇਮ ਪ੍ਰੋਬਲਮ ਚ ਰਹੀ ਹੈ ਮੈਂ ਉਹ ਮਾਂ ਦਾ ਤੱਕ ਤੰਗ ਸਕਦਾ ਤੇ ਇਹ ਬਹੁਤ ਮਤਲਬ ਮਾੜੀ ਘਟਨਾ ਹੋਈ ਆ ਉਹਨਾਂ ਨੂੰ ਪਰਮਾਤਮਾ ਸਮਤ ਬਖਸ਼ੇ ਤੇ ਮੈਂ ਰਹਿ ਨਹੀਂ ਸਕਿਆ ਫੋਨ ਕਰਨ ਤੋਂ ਅੱਜ ਕਿਉਂਕਿ ਬਹੁਤ ਪਿਆਰੀਆਂ ਜੀ ਬਾਈ ਜੀ ਮੈਨੂੰ ਤੁਹਾਡੇ ਸਿਹਤ ਸੁਭਾਵਾ ਕਹਿ ਜੀ ਇੱਥੇ ਆਸਟ੍ਰੇਲੀਆ ਦੇ ਵਿੱਚ ਕਿਹੜੇ ਸ਼ਹਿਰ ਜਿਹੜੇ ਨੇ ਤੁਸੀਂ ਹਾਂ ਤੁਹਾਡੇ ਸਿਹਤ ਸੁਭਾਵਾ ਕਹਿ ਜੀ ਮੈਂ ਕਿਹਾ ਹਾਂਜੀ ਹਾਂਜੀ ਜਿਵੇਂ ਮੈਂ ਰਿਹਾ ਕਿਡਨੀ ਸਾਲ ਤੇ ਲਾਸਟ ਈਅਰ ਮੈਂ ਮੈਲਬਨ ਮੂਵ ਹੋਇਆ ਸੀ ਇੱਥੇ ਵੀ ਕਾਫੀ ਠੀਕ ਆ ਪਰ ਇੱਥੇ ਈਵਰ ਵੇਟਿੰਗ ਕਰਨੀ ਪੈਂਦੀ ਜਦੋਂ ਅਸੀਂ ਆਪ ਜੀਪੀ ਨੂੰ ਮਿਲਣ ਜਾਂਦੇ ਆ ਨਾ ਉੱਥੇ ਕੀ ਬੋਲਦਾ ਘੰਟਾ ਬਹਿਣਾ ਪੈਂਦਾ ਨਾਲ ਇੱਥੇ ਸਵਾਗ 2 ਕਰੋੜ ਦੀ ਆਬਾਦੀ ਐ ਚ ਤੇ ਇਹ ਤੁਹਾਨੂੰ ਆ ਜੀ ਇੱਥੇ ਠੀਕ ਆ ਜੀ ਇੱਥੇ ਮਤਲਬ ਵੇਟਿੰਗ ਤਾਂ ਕਰਨੀ ਪੈਂਦੀ ਐ ਇਹ ਚ ਕੋਈ ਗੱਲ ਨਹੀਂ ਹੁਣ ਜਿਵੇਂ ਐਮਰਜੈਂਸੀ ਗਏ ਅੱਧਾ ਤੱਕ ਜੇ ਤਾਂ ਰੀਲੀ ਐਮਰਜੈਂਸੀ ਆ ਫਿਰ ਨਹੀਂ ਤੁਹਾਨੂੰ ਬਾੜੀ ਵੇਟ ਕਰਾਉਂਦੇ depend bhi kivein ha tode sat lagi aa ya tonu haar us ha unna tonu andar cheeji le ja jande aa par mainu ve adi afi happy anda di aa na like salaama to haje hm theek aa ji thank you bhai ji bahut dhanwaad bahut bahut thank you gal sir thank you thank you ji thank you tusi dooron phone kita chiran de sunde ho aa main mashkoor aa thank ਅਨੇ ਭਾਈ ਬਹੁਤ ਵਕ ਹੋਇਆ ਸੁਣ ਕੇ ਮੈਂ ਕੱਲ ਰਾਤ ਹੀ ਫੇਸਬੁੱਕ ਤੇ ਪੜਦਾ ਸੀਗਾ ਤੇ ਮੈਂ ਵੀ ਹੁੰਦਾ ਡਾਇਮਸਪੋਟ ਦੇ ਹਸਪੀਟਲ ਦੀ ਉਹ ਘਟਨਾ ਵਾ ਮੈਂ ਹੋ ਗਿਆ 2 ਮਹੀਨੇ ਮੇਰੀ ਲੜਕੀ ਹੈ ਛੋਟੀ 3 ਸਾਲ ਦੀ ਜਦੋਂ ਦਰਦ ਬਹੁਤ ਹੁੰਦਾ ਏ ਢਿੱਡ 'ਚ ਤੇ ਮੈਂ ਉਹਨੂੰ ਲੈ ਗਿਆ ਸਨੋ ਪੂਰੀ ਪੈਂਦੀ ਸੀ ਜਦੋਂ ਇਹ ਪਹਿਲਾਂ ਸਨੋ ਪਈ ਆ ਬਹੁਤ ਜ਼ਿਆਦਾ ਸਨੋ ਪੈਂਦੀ ਸੀ ਆਬਰੂ ਲੈ ਕੇ ਗਿਆ ਉੱਥੇ ਤੇ ਉਹ ਬੈਠ ਰਹੀ ਸੀ ਹੁੰਦਾ ਖੜੀ ਰਹਿੰਦੀ ਏ ਪੈਂਦੀ ਸੀ ਜਦੋਂ ਇਹ ਦਰਦ ਹੁੰਦਾ ਈ ਆ ਚੱਲ ਉੱਥੇ ਜਾ ਕੇ ਐਂਟਰੀ ਕਰਾਈ ਤੇ ਉਹ ਕੁੜੀ ਜਿਹੜੀ ਮੂਰੇ ਰਿਸੈਪਸ਼ਨਿਸਟ ਹੁੰਦੀ ਆ ਮੈਂ ਉਹਨੂੰ ਕਿਹਾ ਮੈਂ ਐਂ ਕਰਕੇ ਤੂੰ ਖੜ੍ਹ ਨਹੀਂ ਹੁੰਦਾ ਕਿ ਨਹੀਂ ਕੋਈ ਨਾ ਵੇਟ ਕਰੋ ਤੇ ਉਹ ਮੇਰੀ ਲੜਕੀ ਉਹ ਕੁੜੀ ਬਿਚਾਰੀ ਉਹ ਪਾਣੀ ਮੰਗੇ ਕਹਿੰਦੀ ਪਾਪਾ ਪਾਣੀ ਲੈਣਾ ਪਾਣੀ ਲੈਣਾ ਉਹ ਤਾਂ ਬੈਂਡਿੰਗ ਨਹੀਂ ਕੀਤੀ ਆ ਜੀ ਉੱਥੇ ਪਾਣੀ ਉੱਥਾਂ ਨਹੀਂ ਮਿਲਦਾਗਾ ਰਬਾਸਤ ਕੀਤੀ ਨੀ ਕੁੜੀ ਨੂੰ ਉਹ ਕਹਿੰਦੀ ਉਹ ਬੈਂਡਿੰਗ ਮਸ਼ੀਨ ਚੋਂ ਲੈ ਲੈ ਮੈਂ ਕਿਹਾ ਮੇਰੇ ਕੋਲ ਕੈਸ਼ ਹੈ ਨਹੀਂ ਮੇਰੇ ਕੋਲ ਚੱਲਣਾ ਨਹੀਂ ਉਹ ਪਲੀਜ਼ 2 ਘੰਟੇ ਵੱਸ ਹੋਰ ਖੋਲ੍ਹਿਆ ਕਰੋ ਸਾਨੂੰ ਰੇਡੀਓ ਤੇ ਜਾਂ ਤੁਹਾਡੇ ਟੀਵੀ ਤੇ ਨਹੀਂ ਇਹਨਾਂ ਚਾਹੀਦਾ ਇੱਕ ਬਹੁਤ ਮਸ਼ਹੂਰ ਡਾਕਟਰ ਆਪਣੇ ਇੱਥੇ ਸਭ ਸਾਰਿਆਂ ਨੂੰ ਪਤਾ ਹੀ ਹੋਣਾ ਜਿਆਦਾ ਹੁੰਦੇ ਆ ਰੇਡੀਓ ਟੀਵੀ ਤੇ ਤੇ ਮੈਂ ਉਹਨਾਂ ਕੋਲੇ ਲੈ ਕੇ ਆਪਣੀ ਛੋਟੀ ਸਰੀ ਸੀਗੀ ਉਦੋਂ 3 ਕ ਮਹੀਨਿਆਂ ਦੀ ਸੀ ਉਹਨੂੰ ਕੋਈ ਪ੍ਰੋਬਲਮ ਸੀਗੀ ਸਾਨੂੰ ਕਹਿੰਦੇ ਇਹਨੂੰ ਸੁਹਣੀ ਸਾਹ ਦਾ ਬਾਤ ਤੇ ਮੜਾ ਵੀ ਦੱਖ ਹੁੰਦਾ ਹੀ ਜਦੋਂ ਕੋਈ ਇਹੋ ਜਿਹਾ ਬੇਫਿਕਰਦਾ ਵਾ ਇਹੀ ਆ ਵੀ ਜਾਂ ਜਿੰਨਾ ਟਾਈਮ ਆਪਾਂ ਹੋ ਕੇ ਕੋਈ ਐਕਸ਼ਨ ਨਹੀਂ ਲੈਂਦੇ ਉਹਨਾਂ ਟਾਈਮ ਸ਼ਾਇਦ ਆਪਣੇ ਨਾਲ ਹੀ ਕੁਝ ਧੰਨਵਾਦ ਜੀ ਧੰਨਵਾਦ ਇਹ ਬੜੀ ਮੁਸ਼ਕਲ ਹੈ ਜੀ ਕੀ ਕੀਤਾ ਜਾਵੇ ਮੈਨੂੰ ਨਹੀਂ ਪਤਲਾਦਾ ਕਿੱਥੋਂ ਗੱਲ ਤੋੜਾਂ ਕਿੱਥੇ ਖਤਮ ਕਰਾਂ ਹਰ ਰੋਜ਼ ਜਿਹੜੀ ਹੈ 779 ਜਿਹੜਾ ਨੰਬਰ 0360 ਮੈਨੂੰ ਮੇ ਤੋਂ ਗਲਤ ਦਿੱਤਾ ਗਿਆ ਸੁੱਖੇ ਦਾ ਨੰਬਰ ਹੈ ਸ਼ੇਰਪੁਰ ਦਾ ਇਹ 778 ਨਹੀਂ 6047790300 ਨੰਬਰ ਹੈ ਜੀ 604 ਨਾਲ ਕਰੋ 6047790300 ਖੁਸ਼ ਦਾ ਨੰਬਰ ਹੈ ਜਨਮ ਸਾਹਿਬ ਨੇ ਨਹੀਂ ਲਾਉਣਾ 6047790300 ਸ਼ੇਰਦੇਵ ਸਿੰਘ ਜੀ ਲਾਈਨ ਨੰਬਰ 5 ਸ੍ਰੀ ਗੁਰਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਗੱਲ ਸਾਬ ਜਦੋਂ ਪੜ੍ਹਦੇ ਆ ਗੱਲਾਂ ਸੁਣ ਤੁਸੀਂ ਨਾ ਬੜਾ ਹੀ ਦੁੱਖ ਹੁੰਦਾ ਸੀਗਾ ਨਾਲ ਉਹਨਾਂ ਦੇ ਹੱਥ ਵਿੱਚੋਂ ਰੇਤ ਦੀ ਬੱਚੀ ਕਰ ਗਈ ਬਾਕੀ ਸਹੀ ਗੱਲ ਆ ਵੀ ਇਹ ਦੋ ਨੰਬਰ ਦੇ ਸ਼ਹਿਰੀ ਸਮਝਿਆ ਆ ਜੇ ਹੋਰ ਕਿਸੇ ਹਸਪੀਟਲ ਜੇ ਹੁੰਦੀ ਉਹ ਬੱਚੀ ਨੇ ਜਿਉਂਦੀ ਹੋਣਾ ਸੀਗਾ ਬਾਈ ਜੀ ਮੈਂ ਵਾਲੇ ਵੀ ਕਿਹਾ ਜਦੋਂ ਮੈਂ ਵੀ ਜਿਹੜੇ ਕਸਟੀ ਗਾਕ ਨੂੰ ਕਹਿੰਦੇ ਸਾਡੀ ਭੈਣ ਆ ਉਹ ਆ ਆਪਣੀ ਭੈਣ ਨੂੰ ਮੈਂ ਤਤਾਲੇ ਕਾ ਨਾ ਵੀ ਸਾਡਾ ਤਾਂ ਸੋਨੇਰ ਦਾ ਜਵਾਕ ਹੱਥੋਂ ਕਰ ਗਿਆ ਡਾਕਟਰ ਦੀ ਜੈਦੀ ਨਾਲ ਵੀ ਜਿਹੜੀਆਂ ਨੰਬਰ ਪਲੇਟਾਂ ਲੱਗੀਆਂ ਹੋਈਆਂ ਨਾ ਇਹ ਵੀ ਹੁੰਦੇ ਹੁੰਦੇ ਆ ਇਹ ਲਾਉਣ ਵਾਲਿਆ ਨਹੀਂ ਨਹੀਂ ਲਾਉਣੀਆਂ ਇਹ ਤਾਂ ਮੇਰਾ ਖਿਆਲ ਲੋਕਾਂ ਨੂੰ ਇਕੱਠੇ ਹੋਗੇ ਨਾ ਆਪ ਹੀ ਉਥੋਂ ਪੱਟ ਲੈਣੀ ਚਾਹੀਦੀ ਵਾ ਇਹਨੇ ਟਕਵਾਜ ਬਣਾਇਆ ਸਾਰੇ ਤੋਂ ਵੱਡੀ ਗਲਤੀ ਆ ਵੀ ਅਸੀਂ ਇਹਨਾਂ ਨੂੰ ਫਰੇ ਪੈਸੇ ਹੀ ਦਿੰਨੇ ਆ ਨਾਲੇ ਅਸੀਂ ਆਪਦੇ ਜਵਾਬ ਵਰਵਾਉਂਨੇ ਆ ਥੈਂਕ ਯੂ ਭਾਈ ਭੈਣ ਜੀ ਨੇ ਹੁਣ ਸੀਟਾਂ ਤਾਂ ਦੇਤੀਆਂ ਹੁਣ ਭੈਣ ਜੀ ਹੋਰ ਕੀ ਦੇ ਅੱਧੀ ਚੀਜ਼ ਮਿਲਦੀ ਜਾਂਦੀ ਸਾਰੀਆਂ ਨਹੀਂ ਮਿਲਦੀ ਹਰਜੀਤ ਸਿੰਘ ਦੀ ਲਾਈਨ ਨੰਬਰ 3 ਤੁਸੀਂ ਏਅਰ ਤੇ ਹੋ ਸਿੰਘ ਲਾਈਨ ਨੰਬਰ 3 ਰਜੋਤ ਸਿੰਘ ਜੀ ਲਾਈਨ ਨੰਬਰ 4 ਗੁਰਜੇ ਦਾ ਖਾਲਸਾ ਵਾਈਬਰ ਜੀ ਸਤਿ ਜੀ ਵੈਖਰ ਜੀ ਦਾ ਖਾਲਸਾ ਸਾਹਿਬ ਜੀ ਦੀ ਫਤਿਹ ਆ ਤੇ ਬਹੁਤ ਜਿਹਦਾ ਦੁੱਖ ਹੁੰਦਾ ਜਦੋਂ ਇਹਦਾ ਕੋਈ ਕਿਸੇ ਦੀ ਅਣਗਹਿਲੀ ਨਾਲ ਇਦਾਂ ਦੀ ਗੱਲ ਹੁੰਦੀ ਆ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਐਮਰਜੈਂਸੀ 'ਚ ਅਸੀਂ ਜਾਂਦੇ ਆ ਤਾਂ ਉੱਥੇ ਕੁਝ ਸਿਸਟਮੇ ਹੋ ਜਾ ਰੱਖਿਆ ਬਸ ਆਪਣੇ ਵਿਚਾਰ ਕੇ ਫੋਲੋ ਕਰੀ ਜਾਂਦੇ ਆ ਜਿਹੜੀ ਹੋਣੀ ਚਾਹੀਦੀ ਉਹ ਹੈ ਨਹੀਂ ਗੀ ਹੁਣ ਆਪਣੇ ਭਰਾਵਾਂ ਨੇ ਗੱਲ ਕੀਤੀ ਅਸੀਂ ਪੈਸੇ ਇਕੱਠੇ ਕਰਕੇ ਲੈਂਦੇ ਆ ਇੱਥੇ ਵੀ ਅਸੀਂ ਹਡਮੈਂਟਨ ਤੇ ਵੀ ਅਸੀਂ ਗੁਰਨਾਨਕ ਹੀਲਿੰਗ ਗਾਰਡਨ ਜਿਹੜਾ ਹਾਰਟ ਡਿਪਾਰਟਮੈਂਟ ਬਣਾਇਆ ਤੁਸੀਂ ਵੀ ਹੈ ਇੱਥੇ ਇਕੱਠੇ ਤੇ ਇੱਥੇ ਕੈਲ ਗਰੀ ਵੀ ਸਾਰੇ ਪਾਸੇ ਸਾਡੀਆਂ ਕਮਿਊਨਿਟੀ ਜੇ ਕੋਈ ਆਫਤ ਆਉਂਦੀ ਹੈ ਉੱਥੇ ਵੀ ਅਸੀਂ ਮੋਰੇ ਪਰ ਉਹ ਰੈਕਗਨਾਈਜ਼ ਕਿਤੇ ਨਹੀਂ ਹੁੰਦੀ ਉਹਦਾ ਕਾਰਨ ਇਹੋ ਹੀ ਆ ਦੇਖੋ ਜਦੋਂ ਵੀ ਕੋਈ ਦੁਖਾਂਤ ਦੁਖਾਂਤ ਕਿਸੇ ਦਾ ਵੀ ਮਾੜਾ ਆ ਪਰ ਜਿਹੜਾ ਸਾਡੀ ਕਮਿਊਨਿਟੀ ਦੇ ਦੁਕਾਨ ਤੋਂ ਆਉਂਦਾ ਤੇ ਜਿਹੜੇ ਇਥੇ ਮেইনਸਟ੍ਰੀਮ ਕਮਿਊਨਿਟੀ ਹੈਗੀ ਉਹਨਾਂ ਦੇ ਦੁਕਾਨ ਆਉਂਦਾ ਕੁਝ ਫਰਕ ਇਹ ਆ ਚਾਰ ਦਿਨ ਗੱਲ ਕਰਨੀ ਗੱਲ ਕਰਕੇ ਉਸ ਚੁੱਪ ਕਰਕੇ ਬੈਠ ਜਾਣਾ ਘਰੋ ਘਰੀ ਸਾਰੇ ਆਪਣੇ ਬਸ ਗੱਲਾਂ ਕਰ ਲਈਆਂ ਤੇ ਗੱਲ ਖਤਮ ਹੁਣ ਇਸ ਦੁਕਾਨ ਤੋਂ ਚੰਗੀ ਗੱਲ ਵੀ ਨਿਕਲ ਸਕਦੀ ਹੈ ਜਿੱਦਾਂ ਉਹ ਭਾਈ ਸਾਹਿਬ ਤੇ ਦੇ ਹੋਈ ਹੈਗੀ ਆ ਹਾਸਾ ਹੋਇਆ ਲੱਗਦਾ ਆ ਉਹ ਜਿੱਦਾਂ ਪੀਐਸਡੀ ਹੈਗੇ ਆ ਬਜਾ ਕਿੰਨਾ ਗੱਲ ਨੂੰ ਹਾਂ ਤੱਕ ਲਿਜਾ ਸਕਦੇ ਆ ਜੇ ਉਹ ਇਸ ਗੱਲ ਨੂੰ ਲੀਡ ਕਰਨ ਤੇ ਮੀਡੀਆ ਵੱਲੋਂ ਜਿਹੜੀ ਆ ਸਪੋਰਟ ਮਿਲੇ ਤਾਂ ਅਸੀਂ ਕੁਝ ਚੰਗੀ ਗੱਲ ਵੀ ਕੱਢ ਸਕਦੇ ਆ ਦੁਕਾਨ ਜਿਹੜਾ ਹੋਣਾ ਸੀ ਹੋ ਚੁੱਕਾ ਪਰ ਅਸੀਂ ਇਸ ਗੱਲ ਨੂੰ ਜਿੱਦਾਂ ਆਪਾਂ ਕਈ ਵਾਰ ਦੇਖਦੇ ਆ ਕਈ ਇਸੇ ਜਿਹੇ ਦੁਕਾਨ ਹੁੰਦੇ ਆ ਉਹਨਾਂ ਵਿੱਚੋਂ ਬਿਲ ਨਾਮੇ ਨਿਕਲਦੇ ਆ ਨਾਮੇ ਰੈਗੂਲੇਸ਼ਨ ਨਿਕਲਦੇ ਆ ਜਿਨ੍ਹਾਂ ਨਾਲ ਗੱਲ ਜਿਹੜੀ ਆ ਚੰਗੇ ਪਾਸੇ ਨੂੰ ਤੁਰ ਪੈਂਦੀ ਆ ਹੁਣ ਵੀ ਜੇ ਅਸੀਂ ਕਮਿਊਨਿਟੀ ਐਜ਼ ਅ ਕਮਿਊਨਿਟੀ ਅਸੀਂ ਇਕੱਠੇ ਹੋਈਏ ਜਿੱਦਾਂ ਦੱਸਦੇ ਆ ਕਿ ਜਿਹੜੇ ਹਸਪੀਟਲ ਹੈਗੇ ਆ ਜਿਹੜੇ ਬਿਲਕੁਲ ਗੱਲ ਸਹੀ ਆ ਜਿਹੜੀਆਂ ਤੇ ਚਾਹੇ ਸਾਡੇ ਵਰਗੀਆਂ ਕਮਿਊਨਿਟੀਆਂ ਇਹਨਾਂ ਦੇ ਜਿਹੜੇ ਹਸਪੀਟਲ ਆ ਉਹਨਾਂ ਦੀ ਕੇਅਰ ਦਾ ਜਿਹੜਾ ਲੈਵਲ ਆ ਉਹ ਡਿਫਰੈਂਟ ਆ ਜਿਹੜੀਆਂ ਦੂਜੀਆਂ ਉਹਨਾਂ ਚ ਡਿਫਰੈਂਟ ਹੈਗਾ ਸੋ ਅਸੀਂ ਜੇ ਚਾਹੁੰਦੇ ਆ ਕਿ ਇਹਨੂੰ ਮਿਆਰ ਨੂੰ ਉੱਪਰ ਲਈਏ ਬਾਕੀ ਸਟੈਂਡਰਡ ਉਹਨਾਂ ਹਸਪੀਟਲਾਂ ਵਰਗੇ ਇੱਥੇ ਵੀ ਹੋਣ ਤੇ ਉਹਦੇ ਲਈ ਸਾਨੂੰ ਹੀ ਐਫਰਟ ਕਰਨੇ ਪੈਣੇ ਆ ਉਹ ਟਰੱਕਾਂ ਵਾਲੇ ਭਰਾਵਾਂ ਦਾ ਵੀ ਦੁਕਾਨ ਤੇ ਇਦਾਂ ਅਸੀਂ ਦੂਜਾ ਦਿਨ ਗੱਲ ਕਰਦੇ ਆਂ ਪਰ ਜਦੋਂ ਆਪਣੀ ਸਾਡੀ ਕਿੰਨੀ ਹੁੰਦੀ ਅਸੀਂ ਟਰਾਈ ਇੰਨਾ ਟਾਈਮ ਹੋ ਗਿਆ ਕੋਈ ਅਸੀਂ ਦੂਜਾ ਦਿਨ ਟਰੱਕਾਂ ਵਾਲੇ ਭਰਾਵਾਂ ਨੇ ਇੰਨੀ ਤਾਂ ਕੋਈ ਸ਼ੁਰੂਆਤ ਨਹੀਂ ਕੀਤੀ ਦੂਜੇ ਪਾਸੇ ਇਕੱਠੇ ਕਰਨੀ ਸ਼ੁਰੂ ਕਰ ਲਈ 100 200 ਜੇ ਕੱਲ ਨੂੰ ਸਟ੍ਰਾਈਕ ਕਰਨ ਉਹਨਾਂ ਕੋਲ ਕੁਸਤੰਦ ਹੋਵੇ ਸੋ ਸਾਡੇ ਵਿੱਚ ਉਹ ਪਲੈਨਿੰਗ ਦੀ ਘਾਟ ਹੈ ਸਾਡੇ ਵਿੱਚ ਜਿਹੜੇ ਲੀਡਰ ਹੈਗੇ ਆ ਉਹ ਲੀਡ ਤਾਂ ਕਰਦੇ ਆ ਪਰ ਉਹਨਾਂ ਕੋ ਵਿਜਨ ਦੀ ਘਾਟ ਹੈਗੀ ਆ ਵਿਜਨ ਨਹੀਂ ਹੈਗੀ ਅਸੀਂ ਵਿਜਨ ਨਾਲ ਨਹੀਂ ਚੱਲਦੇ ਸਾਨੂੰ ਥੋੜਾ ਜਿਆਦਾ ਦੂਜਾ ਦਿਨ ਸੋਚ ਚਾਹੁੰਗੇ ਕਿ ਚੱਲਣਾ ਪੈਣਾ ਵਿਜਨ ਲੈ ਕੇ ਚੱਲਣਾ ਪੈਣੀ ਹੈ ਟਾਰਗੇਟ ਪਹਿਲਾਂ ਅਸੀਂ ਸੈੱਟ ਕਰੀਏ ਫੇ ਉਹ ਤੇ ਐਕਟ ਕਰੀਏ ਇਦਾਂ ਨਾ ਹੋਵੇ ਕਿ ਸਾਡੇ ਕੋਲ ਜਿਹੜੀ ਆਫਤ ਆ ਗਈ ਆ ਉਹਦੇ ਤੇ ਫੇ ਆਪਾਂ ਦੁਬਾਰਾ ਦੌੜੇ ਭੱਜੇ ਫੜਦੇ ਆ ਵਗ ਦੇਖੋ ਸਰ ਚਲਵਾਜੀ ਫਤਿਹ ਜੀ ਖਾਲਸਾਬਾਜੀ ਫਤਿਹ ਇਹ ਗੱਲ ਠੀਕ ਐ ਸਾਬ ਪ੍ਰਵਜੋਤ ਸਿੰਘ ਉਹਨਾਂ ਦੀ ਕਿ ਗੱਲ ਮੁਸ਼ਕਲ ਆ ਗਈ ਮੁਸ਼ਕਲ ਵਾਰੇ ਆਪਾਂ ਵਿਚਾਰ ਕਰ ਲਿਆ ਤੇ ਉੱਥੇ ਛੱਡ ਦਿੰਨੇ ਆਪਾਂ ਉਹਨੂੰ ਗਾਹ ਨਹੀਂ ਤੋਰਦੇ ਕੁਛ ਅਜੇ ਅਜੇ ਪ੍ਰੈਸੀਡੈਂਟ ਸੈੱਟ ਹੋਣੇ ਚਾਹੀਦੇ ਆ ਜਿਨ੍ਹਾਂ ਨਾਲ ਅੱਗੇ ਤੋਂ ਸਾਡੀ ਮੁਸ਼ਕਲ ਨਾ ਪਵੇ ਸਰੀ ਦੇ ਵਿੱਚ ਰਹਿੰਦੇ 60% ਲੋਕ ਜਦ ਐਮਰਜੈਂਸੀ ਦਾ ਉਹਨਾਂ ਦੇ ਦਿਮਾਗ ਚੋਂ ਕਹਿੰਦੇ ਚੱਲ ਜਾਂ ਤਾਂ ਜਾਂਦੇ ਨੇ ਪੀਐਸਆਰ ਚ ਜਾਂ ਡੈਲਟਾ ਹਸਪੀਟਲ ਜਾਂਦੇ ਆ ਬੱਚਿਆਂ ਵਾਲੇ ਜਿੰਨਾਂ ਹਸਪਤਲ ਜਾਣ ਲੱਗੇ ਸਰੀ ਮੋਰੀਅਲ ਵੱਲ ਨੂੰ ਲੋਕ ਮੂੰਹ ਨਹੀਂ ਕਰਦੇ ਉਹ ਟਾਵਰ ਬਣਾਤਾ ਜੀ ਅਸੀਂ ਇਹ ਬਣਾਤਾ ਵੇਹ ਤਾਂ ਉਹੀ ਹੈ ਜਿੰਨਾਂ ਜਨ ਟਾਵਰ ਬਣਾਇਆ ਜਨ ਤਿੰਨ ਸਾਲਾਂ ਚ 35000 ਬੰਦਾ ਹੋਰ ਆ ਗਿਆ 12000 1000 12000 ਸਾਲ ਚ ਬੰਦਾ ਆਉਂਦਾ ਹੈ ਹੁਣ ਜਿਹੜਾ ਹਸਪਤਲ ਸਿਰਫ ਤੇ ਸਿਰਫ ਜਿਹੜੇ ਜੇ ਤੁਸੀਂ ਪੀ ਸਰਚ ਦਾ ਨਾਮ ਲੈਣ ਉਹ ਵਾਈਟ ਰੌਕ ਦਾ ਹਸਪਤਲ ਹੈ 16 ਤੋਂ ਸਾਊਥ ਵਾਲਾ ਜਿੰਨਾ ਏਰੀਆ ਉਹਦਾ ਹਸਪਤਲ ਹੈ ਕਹਿੰਦੇ ਤਾਂ ਤੁਹਾਨੂੰ ਕੁਝ ਨਹੀਂ ਪਰ ਜਾਣਦੇ ਹੋ ਤੁਸੀਂ ਉਹ ਭਰਿਆ ਪਿਆ ਹੁੰਦਾ ਅੱਗੇ ਪਹਿਲਾਂ ਪਹਿਲਾਂ ਲੈਂਡਰ ਹਸਪੀਟਲ ਬਹੁਤ ਜਾਂਦੇ ਹੁੰਦੇ ਸੀ ਉੱਥੇ ਹੁਣ ਉਹ ਨਕਬੁੱਲ ਨਕਬੁੱਲ ਕੀ ਮਾਰਦੇ ਉੱਥੇ ਵੀ ਬੰਦ ਹੈ ਜਿਹੜੇ ਸ਼ਹਿਰ ਦਾ ਹਸਪਤਾਲ ਆ ਉੱਥੇ ਜਾਣਾ ਚਾਹੀਦਾ ਇਹ ਸਰਪਲਸ ਜੀ ਤੇ ਆ ਹੁਣ ਸੁਣ ਲਿਓ 2 ਮਹੀਨੇ ਆਉਣ ਵਾਲੇ ਤੁਸੀਂ ਸੁਣਨਾ ਹੀ ਆ ਕੀ ਕੀ ਹੁੰਦਾ ਸੁਣਿਓ ਸਹੀ ਤੁਸੀਂ ਜਸਪ੍ਰੀਤ ਸਿੰਘ ਲਾਈਨ ਨੰਬਰ 5 ਹੈਲੋ ਹੈਲੋ ਹਾਂਜੀ ਦੇਖੋ ਜੀ ਬੜੀ ਦੁੱਖ ਦੀ ਗੱਲ ਹੈ ਕਿ ਇਸ ਬੱਚੀ ਨੂੰ ਬਚਾਇਆ ਜਾ ਸਕਦਾ ਸੀ ਤੇ ਇੱਥੋਂ ਦਾ ਜਿਹੜਾ ਮੇਨਸਟ੍ਰੀਮ মিডিਆ ਵਾ ਪੜਦਾ ਪਾਉਂਦਾ ਸਦਾ ਲੋਕਾਂ ਵਿੱਚ ਹੈਣਾ ਝੂਠੀ ਤਸੱਲੀ ਕ੍ਰੀਏਟ ਕਰਦਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਲੋਕੀ ਵੀ ਸੁਣਣ ਕੇ ਕਹੀ ਜਾਂਦੇ ਜੀ ਬਹੁਤ ਵਧੀਆ ਬਹੁਤ ਵਧੀਆ ਬਿਨਾਂ ਸਲੀਅਤ ਨੂੰ ਜਾਣੇ ਹੋਏ ਹੁਣ মিডিਆ ਕਰਦਾ ਕਿਦਾਂ ਵਾ ਇਹ ਉਹਨੇ ਇੱਕ ਸਟ੍ਰੈਟਜੀ ਬਣਾਈ ਹੋਈ ਆ ਕਿ ਦੂਜੇ ਦੇਸ਼ਾਂ ਦੇ ਇੰਡੀਆ ਜਾਂ ਹੋਰ ਦੇਸ਼ਾਂ ਦੇ ਜਿਹੜੇ ਮਾੜੇ ਪੁਆਇੰਟ ਆ ਹਨਾ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਰੱਖੋ ਆ ਵਾ ਇਦਾਂ ਬੋਲਤਾ ਤੇ ਉਪਰੇ ਚੰਗੇ ਨਹੀਂ ਦਿਖਾਉਣੇ ਮਾੜੇ ਦਿਖਾਉਣੇ ਆ ਤੇ ਇੱਥੋਂ ਦੇ ਸਿਰਫ ਚੰਗੇ ਦਿਖਾਉਣੇ ਆ ਇੱਥੋਂ ਜਮਾਈ ਦਿਖਾਉਣੇ ਤੇ ਫਿਰ ਉਹਨੂੰ ਕੰਪੇਅਰ ਕਰੀ ਜਾਓਗੇ ਤੇ ਇੱਕ ਅਨਬਿਆਸਤ ਮਤਲਬ ਕਿ ਉਹ ਫਿਰ ਕਰਦੇ ਆ ਕਿ ਹਾਂ ਵੀ ਲੋਕ ਇੱਥੇ ਨਿਰਣਾ ਕੱਢ ਲੈਂਦੇ ਆ ਵੀ ਇੱਥੇ ਸਿਸਟਮ ਬਹੁਤ ਵਧੀਆ ਜੋ ਦੋ ਇਨਾਂ ਕੋ ਆਲਦੀ ਹਾਲਾਤ ਨਹੀਂ ਸੁਧਰਦੇ ਹੈਣਾ ਇਹ ਕਹਿੰਦੇ ਹੁਣ ਦੂਜਿਆਂ ਨੂੰ ਕ੍ਰਿਟੀਸਾਈਜ਼ ਕਰਨ ਲੱਪੋ ਆਹਦੇ ਹਾਲਾਤ ਨਹੀਂ ਸੁਰੂ ਤੇ ਹੈਣਾ ਦੂਜੇ ਨੂੰ ਕ੍ਰਿਟੀਸਾਈਜ਼ ਕਰੋ ਤਾਂ ਕਿ ਲੋਕਾਂ ਨੂੰ ਲੱਗੇ ਉਹ ਵਧੀਆ ਥਾਂ ਤੇ ਰਹਿ ਰਹੇ ਆ ਹੈਣਾ ਹੁਣ ਇੱਥੇ ਕਿੰਨੀਆਂ ਖਾਮੀਆਂ ਆ ਤੁਹਾਨੂੰ ਪਰ ਜੇ ਕੈਨੇਡੀਅਨ 100 ਡਾਲਰ ਕਮਾਉਂਦਾ 41 ਡਾਲਰ ਟੈਕਸ ਵਿੱਚ ਦਿੰਦਾ ਉਹ ਦੁਨੀਆ 'ਚ ਸਭ ਤੋਂ ਜ਼ਿਆਦਾ ਟੈਕਸ ਇੱਥੇ ਦੇਈਦਾ ਫੇਰ ਵੀ ਨਾ ਕੋਈ ਹੈਲਥ ਸਿਸਟਮ ਸੁਧਾਰ ਹੁੰਦਾ ਦੂਜੀ ਗੱਲ ਲੋਕੀ ਕਹਿੰਦੇ ਰਹਿੰਦੇ ਫ੍ਰੀ ਫ੍ਰੀ ਫ੍ਰੀ ਕਹਦਾ ਤੁਸੀਂ ਇਨਾਂ ਐਕਸ ਦਿੰਦੇ ਦੂਜੀ ਗੱਲ ਫ੍ਰੀ ਹੈ ਨਹੀਂ ਅਸੀਂ ਐਮਐਸ ਫੇਰ ਵੀ ਇਨਾਂ ਕੋਲ ਹੈਲਥ ਸਿਸਟਮ ਸੁਧਾਰ ਹੁੰਦਾ। ਇਹ ਕੀ ਗੱਲ ਇਹ ਹੁਣ ਪੋਪੂਲੇਸ਼ਨ ਦੇ ਲੋਈ ਇਨਾਂ ਦੀ ਸਾਰੀ ਕਿੰਨੀ ਪੋਪੂਲੇਸ਼ਨ ਹੈ 3.5 ਕਰੋੜ ਹੈ ਇਨਾਂ ਕੋਲ 3.5 ਕਰੋੜ ਪੋਪੂਲੇਸ਼ਨ ਸਰਵਿਸ ਨੂੰ। ਮੈਂ ਕਹਿੰਦਾ ਇੰਡੀਆ ਇਨਾਂ ਤੋਂ ਮਹਾਨ ਹੈ 125 ਕਰੋੜ ਲੋਕ ਰਹਿ ਰਹੇ ਆ ਉੱਥੇ ਫੇਰ ਵੀ ਉਹਨਾਂ ਦਾ ਵੀ ਹੈਲਥ ਸਿਸਟਮ ਇਨਾਂ ਨਾਲੋਂ ਬੈਟਰ ਵਾ। ਬਾਕੀ ਜੇ ਹੁਣ ਆਪਾਂ ਗੱਲ ਕਰ ਲਈਏ ਕਿ ਇਨਾਂ ਦੀ ਜੀ ਮੈਡੀਸਨ ਦੀ ਆ ਜਿਹੜੀ ਐਲੋਪੈਥੀ ਇਹ ਤਾਂ ਆਪਣੇ ਆਪ ਦੀ ਬਿਮਾਰੀਆਂ ਦੀ ਜੜਵਾਂ ਇੱਕ ਬਿਮਾਰੀ ਨੂੰ ਖਤਮ ਕਰਦੀ ਤੇ ਤਿੰਨ ਹੋਰ ਪਾ ਦਿੰਦੀ ਸਰੀਰ ਵਿੱਚ। ਸਾਡਾ ਜਿਹੜਾ ਭਾਰਤੀ ਆਯੁਰਵੇਦ ਸਿਸਟਮ ਤੇ ਯੋਗਾ ਸਿਸਟਮ ਹੈ ਜੇ ਉਹਨੂੰ ਪੜਾਵਾਂਗੇ ਇਹਨਾਂ ਦੀ ਮੈਡੀਸਨ ਦੀ ਵੈਸੇ ਨਹੀਂ ਲੋੜ ਰਹਿਣੀ ਵੇਦਵੰਦ ਵੀ ਰਹੋਗੇ ਹੈਨਾ ਹੁਣ ਦੇਖੋ ਇਹਨਾਂ ਦਾ ਕੰਮ ਕੀ ਆ ਜਿੰਨੇ ਵੀ ਆ ਵੈਸਟਰਨ ਜੋ ਵੀ ਆ ਇਹਨਾਂ ਦਾ ਕੰਮ ਆ ਸਿਰਫ ਪੈਸਾ ਕਮਾਉਣਾ ਹਸਪੀਟਲ ਹੋਵੇ ਚਾਹੇ ਕੋਸ਼ਿਵ ਹੋਵੇ ਪੈਸਾ ਕਮਾਉਣਾ ਜੀ ਪਰ ਐਮਰਜੈਂਸੀ ਬੰਦਾ ਉੱਥੇ ਖੰਨ ਕਰਨੀ ਆਂਦਾ ਉੱਥੇ ਐਮਰਜੈਂਸੀ ਕੋਈ ਦੁੱਖ ਤੇ ਤ੍ਰੀਸ ਚ ਜਾਂਦਾ ਤੇ ਪਾਰਕਿੰਗ ਫੀਸ ਉੱਥੇ ਉੱਥੇ ਵੀ ਪਾਰਕ ਹਸਪੀਟਲ ਚ ਵੀ ਪਾਰਕਿੰਗ ਫੀਸ ਬਿਲਕੁਲ 5 5 ਡਾਲਰ ਕਰਦੇ ਆ। ਤਾਂ ਇਹਨਾਂ ਨੂੰ ਕਿ ਹਸਪੀਟਲ 'ਚ ਬੰਦਾ ਰੀਕ੍ਰੀਏਸ਼ਨ ਦੀ ਕਰਨ ਜਾ ਰਿਹਾ ਨਾ ਕਮਾਓ ਪੈਸੇ ਵੀ ਕਮਾਈ। ਬਾਅਦ ਇਹਨਾਂ ਨੂੰ ਪੈਸੇ ਨਾਲ ਆ ਕੋਈ ਇਹਨਾਂ 'ਚ ਕੰਪਟੀ ਹੈ ਨਹੀਂ। ਇੱਕ ਲੋਕਾਂ ਨੂੰ ਬਹੁਤ ਸਿੱਕਿਆ ਦੇਖੂ ਬਣਾਇਆ ਜਾਂਦਾ ਤੇ ਲੋਕ ਵੀ ਬਣ ਰਹੇ ਆ। ਬਿਨਾਂ ਅਸਲੀਅਤ ਜਾਣੇ ਤੇ ਜਦੋਂ ਅਸਲੀਅਤ ਜਾਣੋਗੇ ਤਾਂ ਲੱਗਣਾ ਕਿ ਜਿੰਨਾ ਕ੍ਰਾਫਟ ਕੰਟਰੀ ਕੈਨੇਡਾ ਅਮਰੀਕਾ ਇੰਗਲੈਂਡ ਵਾ ਉਹਨਾਂ ਹੋਰ ਕੋਈ ਹੈ ਨਹੀਂ। ਥੈਂਕ ਯੂ ਜੀ। ਥੈਂਕ ਯੂ। ਹਾਂ ਐਸਪ੍ਰੇਸ਼ਨ ਦੇ ਵਿੱਚ ਉਹ ਗੱਲਾਂ ਨੇ ਗੱਲ ਠੀਕ ਹੈ ਉਹਨਾਂ ਦੀ ਐਮਰਜੈਂਸੀ ਦੇ ਵਿੱਚ ਬੰਦਾ ਲੰਮਕਿਆ ਤੇ 8 ਡਾਲਰ ਘੰਟੇ ਦੇ ਉੱਥੇ ਉਹ ਦੇ ਰਿਆ ਕਦੇ ਉਹ ਬਾਹਰ ਨੂੰ ਆਉਂਦਾ ਪੈਸੇ ਪਾਉਣ ਕਦੇ ਮੁੜ ਜਾਂਦਾ ਕਦੇ ਬਾਹਰ ਨੂੰ ਆਉਂਦਾ ਕਦੇ ਪੈਸੇ ਪਾਉਣ ਮੁੜ ਜਾਂਦਾ ਉਹ ਸਾਡੇ ਪੈਸਿਆਂ ਨਾਲ ਹੀ ਤੁਸੀਂ ਉਹਨੂੰ ਚਲਾਉਂਦੇ ਹੋ ਤੇ ਸਾਡੀ ਉਹ ਫੇਰ ਖਲ ਲਾਈ ਜਾਂਦੇ ਹੋ 40 41% ਉਹ ਗੱਲ ਠੀਕ ਹੈ ਉਹਦੇ ਬਾਅਦ 130 30 35 35 ਡਾਲਰ ਇੱਕ ਮਹੀਨਾ ਲੇਟ ਹੋ ਜਵੇ ਐਮਐਸਪੀ ਦਾ ਦੇ ਫੋਨ ਤੇ ਫੋਨ ਆਊਗਾ ਵੀ ਰਾਤ ਨੂੰ ਜਾਂ ਸੰਦੇਹਾ ਸੱਜਰੇ रिकॉर्डेड जेड़ियां लगियां हुई है ਤੁਹਾਡਾ ਪੈਸੇ ਲੇਟ ਹੋਗੇ ਜੀ ਤੁਹਾਡਾ ਇਹ ਲੇਟ ਹੋਗਾ ਤੁਹਾਡਾ ਉਹ ਲੇਟ ਹੋ ਗਿਆ ਪਰ ਇਹ ਮੁਸ਼ਕਲ ਹੈ ਬਹੁਤ ਮਨਪ੍ਰੀਤ ਸਿੰਘ ਲਾਈਨ ਨੰਬਰ 2 ਫਸਿਕਲ ਜੀ ਫਸਿਕਲ ਜੀ ਫਸਿਕਲ ਜੀ ਮੇਰੇ ਬੱਚੇ ਦਾ ਪੈਂਡਿੰਗ ਵੀ ਪ੍ਰੋਬਲਮ ਆ ਕਿ ਪਿਛਲੇ ਸਾਡੇ ਤੇ ਹਰ ਹਸਪਤਲ ਨੇ ਤਾਂ ਤਾਂ ਤੇ ਏਅਰ ਖੋਲੇ ਆ ਜੀ ਮੈਂ ਬੱਚੇ ਆਪਣੇ ਲੜਕੇ ਨੂੰ ਲੈ ਗਿਆ 15 ਸਾਲ ਨੂੰ 5 ਮਿੰਟ ਚ ਕਰਵਾ ਕੇ ਕਰ ਦੂੰਗੇ ਐਮ ਆਈ ਸੀਬੀ ਕਹਿੰਦੇ ਆਂ ਪੱਗ ਜੰਤ ਇਸ ਤਾਰਾ ਸੀ ਥੈਂਕ ਯੂ ਜੀ ਥੈਂਕ ਯੂ ਠੀਕ ਹੈ ਜੀ ਅਗਲਾ ਪੇ ਕਰੋ ਚੀਜ਼ ਲਓ ਐਮ ਆਈ ਆਰ ਆਈ ਹੈ ਉਹ 3 3 ਮਹੀਨੇ ਦੀ ਰੇਟ ਆ ਇੱਥੇ ਤੇ 1200 ਡਾਲਰ ਜੇਬ ਚ ਪਾਓ ਚਾਹੇ ਮੈਨੂੰ ਨਹੀਂ ਪਤਾ ਸੋ ਮੱਚ ਥੈਂਕ ਯੂ ਹਰਜੀਤ ਸਿੰਘ ਜੀ ਲਾਈਨ ਨੰਬਰ 3 ਹਲੋ ਜੀ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਦੇਖੋ ਬਹੁਤ ਮਾੜੀ ਘਟਨਾ ਹੋਈ ਆ ਦੇਖੋ ਜੋ ਐਮਰਜੈਂਸੀ ਪਰ ਜਾਨੀਆਂ ਨਾ ਆਣ ਜਦੋਂ ਬੰਦਾ ਜੋ ਆਪਣੇ ਹੱਥੋਂ ਬਾਹਰ ਨਿਕਲ ਜਾਂਦੇ ਆ ਉਦੋਂ ਆਪਾਂ ਜਾਣਦੇ ਆ ਉਥੇ ਦੇਖੋ ਬੰਦੇ ਦਾ ਘੰਟੇ ਘਟਨਾ ਦੱਸਦਾ ਮੁੰਡਾ ਬਿਮਾਰ ਰਹਿੰਦਾ ਸੀ ਕਿ ਮਹੀਨੇ ਦੇ ਵਿੱਚ 2-3 ਵਾਰ ਹਸਪਤਾਲ ਜਾਂਦੇ ਸੀਗੇ ਮਿਲੋ ਸਾਰੇ ਹਸਪਤਾਲਾਂ ਦੀ ਜਾਏ 2-3 ਸਾਲ ਜਾਂਦੇ ਰਹੇ ਕਿਸੇ ਦੱਸ ਤੋਂ ਪਤਾ ਹੀ ਨਹੀਂ ਪ੍ਰੋਬਲਮ ਦਾ ਇੱਕ ਨਰਸ ਨੇ ਦੇ ਲੋ ਦੇਦਾ ਵੀ ਉਹਨੇ ਦੇਖਿਆ ਵੀ ਪ੍ਰੋਬਲਮ ਕਿੱਡੀ ਆ ਕਿਸੇ ਡਾਕਟਰ ਨੇ ਨਹੀਂ ਦੇਖਿਆ ਫੈਨਸਰੀ ਨੇ ਸਪੈਸ਼ਲਿਸਟ ਨੇ ਹਸਪਤਾਲਾ ਨੇ ਫਿਰ ਅਸੀਂ ਨੂੰ ਅਸੀਂ ਉਹ ਫਿਰ ਚਿਲਡਰਨ ਹਸਪਤਲ ਅਗਸਤ ਦੇ ਵਿੱਚ ਲੈ ਗਏ ਸੀ ਕਿ ਸਤੰਬਰ ਦੇ ਵਿੱਚ ਰਾਈਟ ਵੇ ਦਾ ਆਪਰੇਸ਼ਨ ਕਰਨਾ ਪੈਣਾ ਉਸ ਤੋਂ ਬਾਅਦ ਦੇਖ ਲਓ ਫਰ ਆ ਗਈ ਹੈ ਕੋਈ ਉੱਥੇ ਫੋਨ ਨਹੀਂ ਚੁੱਕਦਾ ਫੈਮਿਲੀ ਡਾਕਟਰ ਤੋਂ ਸਪੈਸ਼ਲਿਸਟ ਕੋ ਈਮੇਲ ਕਰਾ ਕੇ ਹੰਬ ਗਏ ਆ ਕੋਈ ਉੱਥੇ ਅਨਸਰ ਨਹੀਂ ਕਰਦਾ ਦੇਖ ਲਓ ਸਤੰਬਰ ਦੇ ਵਿੱਚ ਤਾਂ ਲਾਜ਼ਮੀ ਹੋਣਾ ਹੀ ਹੋਣਾ ਅਜੇ ਤੱਕ ਕੋਈ ਨੋਂ ਨਹੀਂ ਇੱਥੇ ਕੋਈ ਨਾ ਪੁੱਛਦਾ ਨਾ ਗਿਣਦਾ ਕੋਈ ਇੱਥੇ ਕਾਲ ਨਹੀਂ ਲੈਂਦਾ ਹੁਣ ਦੱਸੋ ਕਿੱਧਰ ਨੂੰ ਜਾਊ ਬੰਦਾ ਥੈਂਕ ਯੂ ਥੈਂਕ ਕਾਲ ਨਾ ਕਰਿਓ ਜੀ ਇਸ ਤੋਂ ਬਾਅਦ ਨਵੇਂ ਵਿਸ਼ੇ ਤੇ ਮੈਂ ਗੱਲ ਕਰਨੀ ਆ ਸਤਿ ਸ਼੍ਰੀ ਅਕਾਲ ਬਾਈ ਜੀ ਗਿਲਸਾਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਸਟ੍ਰੇਲੀਆ ਤੋਂ ਬੋਲ ਰਿਹਾ ਜੀ ਮੈਂ ਤੇ ਬੜੀ ਦੁੱਖ ਦੀ ਖਬਰ ਗੱਲ ਜਿਹੜੀ ਤੁਸੀਂ ਸੁਣਾਈ ਆ ਬੱਚੀ ਨਾਲ ਬੜਾ ਮਾਰਾ ਮੰਦ ਹੋਇਆ ਜੀ ਮੈਂ ਤਾਂ ਸਿਰਫ ਇਹ ਕਾਲ ਇਹ ਮੈਂ ਜੋ ਨਾਲ ਜਿੰਦੀ ਆਪ ਇੱਥੇ ਕਮਿਊਨਿਟੀ ਆਪੀ ਸਾਰੇ ਰਲ ਕੇ ਜੇ ਤੁਸੀਂ ਮੇਨ ਸਟ੍ਰੀਮ মিডিਆ ਤੱਕ ਗੱਲ ਪਹੁੰਚਾਓ ਤੇ ਮੇਰੇ ਖਿਆਲ ਚ ਕੋਈ ਡਿਫਰੈਂਸ ਹੋ ਸਕਦਾ ਬਾਕੀ ਗਿਲਸਾਹ ਤਾਡਾ ਵੀ ਜਿਹੜੇ ਉਪਰਾਲੇ ਤੁਸੀਂ ਕਰਦੇ ਆ ਬਹੁਤ ਸ਼ਲਾਘਾ ਤੁਹਾਡੇ ਜਿਹੜੀ ਸਪੈਸ਼ਲੀ ਜੇ ਤੁਸੀਂ ਥੋੜੀ-ਬਹੁਤੀ ਨਾਲ ਸਿਹਤ ਸਵਾਵਾ ਦੀ ਜਿਹੜੀ ਆ ਤੁਸੀਂ ਡਾਕਟਰ ਵਗੈਰਾ ਨੂੰ ਲੈ ਕੇ ਆਉਂਦੇ ਕੋਈ ਦੱਸਦੇ ਸਿਰ ਤੇ ਗੱਲਬਾਤ ਉਹ ਬਹੁਤ ਚੰਗਾ ਲੱਗਦਾ ਗਿਲਸਾਹ ਬਹੁਤ ਜਾਣੀ ਅਸੀਂ ਮੈਂ ਪਹਿਲਾਂ ਵੀ ਕਾਲ ਕਰਦਾ ਹਾਂ ਕਈ ਵਾਰੀ ਦੇ ਬਹੁਤ ਚੰਗਾ ਲੱਗਦਾ ਜੀ ਸਰਬ ਬਹੁਤ ਤੁਹਾਡਾ ਬਸ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਅਰਲੀ ਇੱਥੇ ਤੇ ਮੈਂ ਇੱਕ ਨਿੱਕੀ ਜਿਹੀ ਗੱਲ ਦੱਸਣੀ ਜੀ ਮੇਰੇ ਕਜਨ ਨੂੰ ਪ੍ਰੋਬਲਮ ਹੋ ਗਈ ਸੀ ਜੀ ਪੀਏ ਦੀ ਇੱਥੇ ਮੈਲਬਨ ਚ ਤੇ 6 ਮਹੀਨੇ ਪਹਿਲਾਂ ਅਸੀਂ ਹਸਪੀਟਲ ਗਏ ਸੀ ਵੈਸੇ ਤਾਂ ਕੋਈ ਗਏ ਨਹੀਂ ਹਸਪੀਟਲ ਤੋਂ ਆ ਨਹੀਂ ਡਾਕਟਰਾਂ ਤੇ ਉਹਨੂੰ ਡਾਕਟਰ ਗਿਲ ਸਾਹਿਬ ਦੇ 6 ਮਹੀਨੇ ਪਹਿਲਾਂ ਪ੍ਰੋਬਲਮ ਹੋ ਗਈ ਸੀ ਜੇ ਉਹਨੂੰ ਮਤਲਬ ਡਾਕਟਰਾਂ ਨੇ ਹਸਪਤਾਲ ਕਿ ਰੱਖਿਆ ਸੀ ਹਸਪੀਟਲ ਦੇ ਤੇ ਮਤਲਬ ਜੂਸ ਤੇ ਉਹਦੀ ਬਹੁਤ ਜਿਆਦਾ ਉਹਨਾਂ ਨੇ ਕੇਅਰ ਕੀਤੀ ਐ ਨਾਈਆਂ ਦੀ ਕੱਟੀਆਂ ਨੂੰ ਕਰਤਾ ਬਹੁਤ ਮਤਲਬ ਕੇਅਰ ਕੀਤੀ ਉਹ ਡਾਕਟਰਾਂ ਨੇ ਤੇ ਮਤਲਬ ਤੁਸੀਂ ਬਹੁਤ ਵਧੀਆ ਉਪਰਾਲਾ ਕਰਦੇ ਹੋ ਤੁਸੀਂ ਮੇਨ ਸਟ੍ਰੀਮ মিডিਆ ਤੱਕ ਇਹ ਗੱਲ ਪਹੁੰਚਾਓ ਤਾਂ ਕੋਈ ਸੁਧਾਰ ਹੋਗਾ ਜੀ ਥੈਂਕ ਯੂ ਜੀ ਸਰ ਧੰਨਵਾਦ ਬਹੁਤ ਬਹੁਤ ਥੈਂਕ ਯੂ ਸਰ ਜੂਂਦੇ ਵਾਸਤੇ ਰੋ ਭਾਈ ਥੈਂਕ ਯੂ ਸੋ ਮਚ ਤੁਹਾਡਾ ਵੀ ਵਪਾਰਕ ਸੰਦੇਸ਼ਾਂ ਤੋਂ ਬਾਅਦ ਜਗਰੂਪ ਸਿੰਘ ਬਰਾੜ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਰਾਜਨੀਤੀ ਦੇ ਵਿੱਚ ਬੈਠ ਕੇ ਐਮਐਲਏ ਦੇ ਤੌਰ ਤੇ ਦੇਖਿਆ ਸਿਸਟਮ ਕਿਵੇਂ ਆ ਮੁਸ਼ਕਲ ਕੀ ਹੈ ਐਨਡੀਪੀ ਦੇ ਲੀਡਰ ਨੇ ਅੱਜ ਕਿਹਾ ਕਿ ਕੰਟੇਨਰ ਟਰੱਕਰਸ ਦਾ ਮੈਂ ਜੇ ਸਰਕਾਰ ਸਾਡੀ ਬਣਦੀ ਅਸੀਂ ਮੁਸ਼ਕਲਾਂ ਦੂਰ ਕਰਾਂਗੇ ਪਰ ਆ ਜਿਹੜਾ ਇਕ ਨਾਲ ਇਹਦੇ ਬਾਰੇ ਵੀ ਮੈਂ ਗੱਲ ਕਰਨੀ ਬੱਚੀ 3 ਸਾਲਾਂ ਦੀ ਪੂਰੀ ਹੋ ਗਈ ਸਿਹਤ ਸਵਾਵਾ ਦੀ ਮੁਸ਼ਕਲ ਕਿੱਥੇ ਆ ਕਾਰਨ ਕੀ ਹੈ ਵਿੱਚ ਰਹਿੰਦੇ ਬੰਦੇ ਜਿਹੜੇ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਪਰ ਇਹ ਗੱਲ ਮੇਰੇ ਖਿਆਲ ਆਪਾਂ ਗੱਲ ਕਰਕੇ ਛੱਡ ਦੇਣੀ ਇਹ ਬਹੁਤ ਗੀਦੀ ਇਹਨੂੰ ਛੱਡਣਾ ਨਹੀਂ ਇਹ ਗੱਲ ਕਿਸੇ ਪਾਸੇ ਜਾਣੀ ਚਾਹੀਦੀ ਹੈ ਤੇ ਕੋਈ ਕਈ ਵਾਰ ਕੁਝ ਨਾ ਕੁਝ ਅਜਿਹਾ ਵਾਪਰਦਾ ਜਿਹੜਾ ਆਉਣ ਵਾਲੇ ਭਵਿੱਖ ਦੇ ਲਈ ਆਉਣ ਵਾਲੇ ਸਮੇਂ ਦੇ ਲਈ ਸੌਰੀ ਆਉਣ ਵਾਲੇ ਸਮੇਂ ਦੇ ਲਈ ਜਾਂ ਵੇਖ ਲਈ ਚੰਗਾ ਹੁੰਦਾ ਵਪਾਰਕ ਸੰਦੇਸ਼ 1 ਵਜੇ ਕੇ 24 ਮਿੰਟ ਹੋਏ ਆ ਜੀ ਹੁਣ ਜਗਰੂਪ ਸਿੰਘ ਬਰਾੜ ਮੇਰੇ ਨਾਲ ਗੱਲਬਾਤ ਕਰਨਗੇ ਐਨਡੀਪੀ ਨੇ ਕੁਝ ਪ੍ਰੈਸ ਰਿਲੀਜ਼ ਦਿੱਤੀ ਆ ਕਿ ਜੇ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਟ੍ਰੱਕਰਜ਼ ਦਾ ਜਿਹੜਾ ਇਸ਼ੂ ਹੈ ਉਸ ਨੂੰ ਪਹਿਲ ਤੇ ਵਿਚਾਰਿਆ ਜਾਵੇਗਾ ਪਰ ਉਸ ਤੋਂ ਪਹਿਲਾਂ ਜਿਹੜੀ ਆ ਘਟਨਾ ਬੱਚੀ ਦੀ ਵਾਪਰੀ ਹੈ 3 ਸਾਲ ਦੀ ਬੱਚੀ ਦਾ ਐਬ ਦੇ ਵਿੱਚ emergancy ਦੇ ਵਿੱਚ ਪੂਰਾ ਹੋ ਜਾਣਾ 5 ਘੰਟੇ ਉਸ ਨੂੰ ਉਸ ਦਾ ਉੱਤਨਾ ਵਾਚਣਾ ਮਾਪਿਆਂ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਮਾਂ ਨੇ ਦੱਸਣ ਦੇ ਬਾਵਜੂਦ ਕਿ 5 ਵਜੇ ਤੋਂ ਲੈ ਕੇ 10 ਵਜੇ ਤੱਕ ਬੱਚੀ ਦੀ ਸਿਹਤ ਸੁਧਾਰ ਸਿਹਤ ਦੇ ਵਿੱਚ ਮੁਸ਼ਕਲ ਆ ਰਹੀ ਹੈ ਉਸ ਨੂੰ ਨਾ ਗੋਲਿਆ ਤੇ ਫਿਰ ਇਹ ਮੁਸ਼ਕਲ ਆਈ ਜੀਉਪ ਸਿੰਘ ਬਰਾੜ ਉਹਨਾਂ ਦਾ ਪੁੱਛਦੇ ਆ ਕਿ ਸਰੀਦਰ ਹੈਲਥ ਅਥਾਰਟिटीज ਜਿਹਦੇ ਵਿੱਚ ਸਾਡਾ ਸਰੀਦਾ ਵੀ ਹਸਪੀਟਲ ਮਸਤਰੀ ਮੋਰੀਅਲ ਆਉਂਦਾ ਮੁਸ਼ਕਲ ਕੀ ਹੈ ਇਹ ਨਵੇਂ ਟੌਬਰ ਨੇ ਕੁਝ ਕੀਤਾ ਹੈ ਜਾਂ ਨਹੀਂ ਕੀਤਾ ਕਿੱਥੇ ਗੱਲ ਖੜੀ ਹੈ ਬ੍ਰਦਰ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਜੀ ਸਰ ਤੁਹਾਡਾ ਬਹੁਤ ਸ਼ੁਕਰੀਆ ਮੈਨੂੰ ਮੌਕਾ ਦੇਣ ਵਾਸਤੇ ਦੋਨੇ بڑے ਆ ਮੁੱਦੇ ਨੇ ਉਹਨਾਂ ਦੇ ਗੱਲਬਾਤ ਕਰਨ ਵਾਸਤੇ ਮਿਹਰਬਾਨੀ ਤੁਹਾਡੀ ਧੰਨਵਾਦ ਜੀ ਅੱਛਾ ਬਾਈ ਜੀ ਦੱਸੋ ਤੁਸੀਂ ਐ ਐਮਐਲਏ ਦੇ ਤੌਰ ਤੇ ਸਰਵ ਕਰਦੇ ਰਹੇ ਹੋ ਵਿਰੋਧੀ ਧਿਰ 'ਚ ਬੈਠੇ ਰਹੇ ਹੋ ਗੱਲ ਰੌਲਾ ਕਿੱਥੇ ਹੈ ਸਰੀ ਦੇ ਵਿੱਚ ਗਿਣਤੀ ਵੱਧ ਰਹੀ ਹੈ ਲੋਕ ਹਜ਼ਾਰ ਦੇ ਕਰੀਬ ਇੱਕ ਮਹੀਨੇ ਦੇ ਆ ਰਹੇ ਨੇ 12000 ਸਾਲ ਦੇ ਹੋ ਗਏ ਇਹ ਸਾਡੀਆਂ ਸਿਹਤ ਹਵਾ ਜਿਹੜੀਆਂ ਸਵਾਵਾ ਨੇ ਉਹ ਦਿਨੋਂ ਦਿਨ ਕਿਉਂ ਗਰਕ ਰਹੀਆਂ ਸਰੀ ਚ ਬੈਠੇ ਲੋਕ ਐਮਰਜੈਂਸੀ ਨੂੰ ਜੇ ਕਿਉਂ ਭੱਜਦੇ ਆ ਜੇ ਵਾਈਟ ਨੂੰ ਜਾਂ ਲੈਣ ਨੂੰ ਬੱਚਿਆਂ ਨੂੰ ਅਸੀਂ ਚਿਲਡਰਨ ਹਸਪੀਟਲ ਲਈ ਫਿਰਦੇ ਆ ਇਹ ਗੱਲ ਕੀ ਹੈ ਇਹ ਕੱਲਾ ਜਿਹੜਾ ਇੱਕ ਹਸਪੀਟਲ ਆ ਏਡੀ ਵੱਡੀ ਗਿਣਤੀ 5 4 ਲੱਖ ਦੇ ਕਰੀਬ ਲੋਕ ਨੇ ਇਹ ਕਿੱਦਾਂ ਨੂੰ ਕਹਾਣੀ ਜਾ ਰਹੀ ਹੈ ਜੀ ਮੁਸ਼ਕਲ ਕਿੱਥੇ ਆ ਇਹ ਗੱਲ ਗਿਲਸਾ ਬੇਸਿਕਲੀ ਕਪੈਸਿਟੀ ਤੇ ਇਨਵੈਸਟਮੈਂਟ ਦੀ ਹੈ। ਹਮਮ ਸਰੀ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਇਹ ਹਸਪੀਟਲ ਬਣੇ ਨੂੰ ਆਲਮੋਸਟ ਜਿਹੜੇ 40 ਸਾਲ ਤੋਂ ਉੱਪਰ ਹੋ ਚੁੱਕੇ ਆ ਇਹ ਉਸ ਵੇਲੇ ਬਣਿਆ ਸੀ ਜਦੋਂ ਸਰੀ ਆਬਾਦੀ ਇਸ ਤੋਂ ਅੱਧ ਤੋਂ ਵੀ ਜਿਹੜਾ ਕਿਤੇ ਘੱਟ ਸੀਗੀ। ਔਰ ਅੱਜ ਜਿਹੜਾ ਹੈਗਾ ਪੋਪੂਲੇਸ਼ਨ ਜਿਵੇਂ ਤੁਸੀਂ ਜ਼ਿਕਰ ਕੀਤਾ ਸਰੀ ਦੀ ਅੱਜ ਨਹੀਂ ਲੰਮੇ ਸਮੇਂ ਤੋਂ ਬਹੁਤ ਤੇਜ਼ੀ ਨਾਲ ਵਧ ਰਹੀ ਪਾਪੂਲੇਸ਼ਨ ਇਹ ਸ਼ਹਿਰ ਦੀ ਹੈਗੀ ਐਕਚੁਅਲੀ ਇਹ ਕੈਨੇਡਾ ਦੀ ਕੋਹ ਵਾਹਦ ਜਿਹੜਾ ਸਿਟੀ ਹੈ ਜਿੱਥੇ ਸਭ ਤੋਂ ਵੱਧ ਤੇਜੀ ਦੇ ਨਾਲ ਪਾਪੂਲੇਸ਼ਨ ਵਧੇ ਆ ਰਹੀ ਹੈ। ਤੋਂ ਉਹਦਾ ਮਤਲਬ ਇਹ ਹੈ ਕਿ ਜਿਵੇਂ ਪਾਪੂਲੇਸ਼ਨ ਵਧਦੀ ਉਹਦੇ ਮੁਤਾਬਕ ਸਾਰ ਨੂੰ ਬਣਦੇ ਸਕੂਲ ਹੋਣ ਚਾਹੇ ਸਾਡੇ ਹਸਪੀਟਲ ਹੋਣ ਜਾਂ ਡਾਕਟਰ ਨਵੇਂ ਭਰਤੀ ਕਰਨੇ ਹੋ ਨਰਸਾ ਨਵੇਂ ਭਰਤੀ ਕਰਨੀਆਂ ਹੋਣ ਉਹਨਾਂ ਦੀ ਵੀ भी ਦੀ ਪਾਪੂਲੇਸ਼ਨ ਉਨੇ ਹੋ ਚੁੱਕੀ ਹੈ ਜਿੰਨੀ ਵੈਨਕੂਵਰ ਦੇ ਔਰ ਵੈਨਕੂਵਰ ਦੇ ਵਿੱਚ 3-4 ਹਸਪੀਟਲ ਨੇ ਸਰੀ ਦੇ ਵਿੱਚ ਇੱਕੋ ਹੀ ਹਸਪੀਟਲ ਹੈ ਉਹਦੇ ਵਿੱਚ ਵੀ ਅਸੀਂ ਬੜਾ ਦਬਾਅ ਪਾਉਣ ਤੇ ਬਾਅਦ ਜਿਹੜਾ ਹੈਗਾ ਆਪਦੇ ਚ ਜਿਹੜਾ ਜਿਮਪੈਡੈਸਨ ਜਿਹੜਾ ਸਿਰਫ ਡੇ ਸਰਜਰੀ ਵਾਲਾ ਹੀ ਹਸਪੀਟਲ ਹੈਗਾ ਔਰ ਉਹਦੇ ਨਾਲ ਜਿਹੜਾ ਉਰਲੇ ਪਾਸੇ ਜਿਹੜਾ ਨਵਾਂ ਐਮਰਜੈਂਸੀ ਰੂਮ ਪਰ ਉਹਦੇ ਨਾਲ ਨਾਲ ਹਕੀਕਤ ਇਹ ਹੈ ਕਿ ਬਿਲਡਿੰਗ ਨੇ ਲੋਕਾਂ ਦਾ ਇਲਾਜ ਨਹੀਂ ਕਰਨਾ ਲੋਕਾਂ ਦਾ ਇਲਾਜ ਨਰਸਾਂ ਡਾਕਟਰ ਜਾਂ ਇਹਨਾਂ ਦੂਜੇ ਪ੍ਰੋਫੈਸ਼ਨਲ ਨੇ ਚਾਹੀਦੇ ਉਹਨਾਂ ਨੇ ਕਰਨਾ ਹੈ ਜਿਹੜੀ ਸਟਾਫਿੰਗ ਦੀ ਜਿਹੜੀ ਭਰਤੀ ਹੈ ਉਹ ਬਣਦੀ ਇੱਥੇ ਨਹੀਂ ਹੋਈ ਅਜ ਵੀ ਨਹੀਂ ਹੋਈ ਲੰਬੇ ਸਮੇਂ ਤੋਂ ਅਸੀਂ ਰੌਲਾ ਪਾਉਂਦੇ ਆ ਰਹੇ ਹਾਂ ਸਰਕਾਰ ਜਿਹੜੀ ਹੈਗੀ ਆ ਉਹਦੀਆਂ ਜਿਹੜੀਆਂ ਪ੍ਰਾਇੋਰਟੀਜ਼ ਨੇ ਉਹ ਬਿਲਕੁਲ ਬੱਕਰੀਆਂ ਨੇ ਉਹ ਜਿਹੜੇ ਬੀਜੀ ਦੇ ਟੂ 2% ਅਮੀਰ ਲੋਕ ਆ ਉਹਨਾਂ ਤੋਂ ਬਿਲੀਅਨ ਡਾਲਰ ਕੱਢ ਕੇ ਦੇਤਾ ਇਹਨਾਂ ਨੇ ਪਿਛਲੇ 4 ਸਾਲਾਂ ਦੇ ਵਿੱਚੋਂ ਟੈਕਸ ਛੋੜ ਦੇ ਤੌਰ ਦੇ ਉੱਤੇ ਲੇਕਿਨ ਜਿਹੜਾ ਬਣਦਾ ਇਨਵੈਸਟਮੈਂਟ ਇੱਥੇ ਸਾਡੀ ਬਣਦੀ ਹੈ ਨਵੇਂ ਡਾਕਟਰ ਭਰਤੀ ਕਰਨ ਦੇ ਵਿੱਚ ਨਵੀਆਂ ਨਰਸਾਂ ਭਰਤੀ ਕਰਨ ਦੇ ਵਿੱਚ ਜਾਂ ਇਵਨ ਨਵੇਂ ਸਕੂਲ ਬਣਾਉਣ ਦੇ ਵਿੱਚ ਤੁਹਾਨੂੰ ਪਤਾ ਹੈ ਉੱਥੇ ਸਰਕਾਰ ਨੇ ਜਿਹੜਾ ਉਹ ਭਰਤੀ ਨਾ ਕਰਨ ਕਰਕੇ ਨਵੇਂ ਪੁਲਿਸ ਅਫਸਰ ਦੀ ਆਪਾਂ ਗੱਲ ਕਰ ਲਈ ਉਹਦੇ ਵਿੱਚ ਵੀ ਅਸੀਂ ਬੜੇ ਪਿੱਛੇ ਜਿਹੜੀ ਸਾਰੀਆਂ ਗੋੜੀਆਂ ਚੱਲ ਰਹੀਆਂ ਉਹ ਇਨਵੈਸਟਮੈਂਟ ਦਾ ਮਸਲਾ ਹੈ ਕਿ ਤੁਹਾਡੀ ਪਹਿਲ ਸਰਕਾਰ ਦੀ ਕੀ ਹੈ ਸਰਕਾਰ ਦੀ ਪਹਿਲ ਹੁਣ ਤੱਕ ਜਿਹੜੀ ਹੈ ਉਹ ਅਮੀਰਾਂ ਨੂੰ ਪੈਸੇ ਦੇਣ ਚ ਰਹੀ ਹੈ ਨਾ ਕਿ ਜਿਹੜਾ ਆਮ ਲੋਕਾਂ ਦੀਆਂ ਜਿਹੜੀਆਂ ਡੇ ਟੂ ਡੇ ਸਮੱਸਿਆਵਾਂ ਨੇ ਉਹਨਾਂ ਦੇ ਪ੍ਰੋਗਰਾਮ ਨੇ ਹੈਲਥ케ਅਰ ਹੋਇਆ ਐਜੂਕੇਸ਼ਨ ਹੋਇਆ ਪਬਲਿਕ ਸੇਫਟੀ ਹੋਇਆ ਉਹਦੇ ਵਿੱਚ ਇਨਵੈਸਟਮੈਂਟ ਕਰਨ ਦੇ ਵਿੱਚ ਸਰਕਾਰ ਬਹੁਤ ਪਿੱਛੇ ਰਹਿ ਚੁੱਕੀ ਹੈ ਤੇ ਫਿਰ ਇਹਦਾ ਸਥਾਈ ਹੱਲ ਤੁਸੀਂ ਆਪਣੇ ਤੌਰ ਤੇ ਕੀ ਸੋਚਦੇ ਹੋ ਜੇ ਕੱਲੋਂ ਐਨਡੀਪੀ ਦੀ ਸਰਕਾਰ ਬਣਦੀ ਹੈ ਕੀ ਤੁਹਾਡੇ ਮੈਨੂੰ ਪਤਾ ਇਹ ਪਲੇਟਫਾਰਮ ਤਾਂ ਤਾਰ ਮ ਜਿਹੜਾ ਤੁਹਾਡੇ ਲੀਡਰ ਨੇ ਦੱਸਣਾ ਪਰ ਤੁਸੀਂ ਆਪਣੇ ਤੌਰ ਤੇ ਸਰੀ ਦੇ ਫਲੀਟ ਬੋਰਡ ਤੋਂ ਤੁਸੀਂ ਐਮਐਲਏ ਦੀ ਚੋਣ ਲੜ ਰਹੇ ਹੋ ਤੁਸੀਂ ਆਪਣੇ ਤੌਰ ਤੇ ਕੀ ਸੋਚਦੇ ਹੋ ਜੇ ਤੁਹਾਡੇ ਸੁਝਾਅ ਲੈਣ ਤੇ ਕੀ ਹੋਵੇ ਫਿਰ ਸਾਡੇ ਸੁਝਾਅ ਇਹ ਹੈ ਜੀ ਕਿ ਜਿਹੜੇ ਬੀਸੀ ਦੇ ਲੋਕਾਂ ਦੇ ਪੈਸੇ ਆ ਉਹ ਬੀਸੀ ਦੇ ਲੋਕਾਂ ਦੇ ਪ੍ਰੋਗਰਾਮ ਵਾਸਤੇ ਜਾਂ ਉਹਨਾਂ ਦੇ ਲੋਕਾਂ ਦੇ ਭਲੇ ਉਹਨਾਂ ਦੀਆਂ ਸਰਵਿਸਿਜ਼ ਵਾਸਤੇ ਜਿਹੜੇ ਸਾਡੀ ਪਹਿਲ ਰਹੇਗੀ ਉਜਿ ਵਿਸ਼ੇਸ਼ ਤੌਰ ਦੇ ਉੱਤੇ ਪਲੇਟਫਾਰਮ ਚ ਕੀ ਹੋਏਗਾ ਉਹ ਅੱਜ ਮੈਂ ਨਹੀਂ ਦੱਸ ਸਕਦਾ ਕਿਉਂਕਿ ਉਹ ਮੈਨੂੰ ਅੱਜ ਪਤਾ ਹੀ ਨਹੀਂ ਹੈ ਕਿਉਂਕਿ ਪਲੇਟਫਾਰਮ ਹਲੇ ਅੰਡਰ ਕੰਸਟਰਕਸ਼ਨ ਹੈਗਾ ਤੇ ਪਰ ਸਾਡੀ ਜਿਹੜੀ ਪਹਿਲ ਹੈ ਚਾਹੇ ਉਹ ਸਕੂਲਾਂ ਦੀ ਗੱਲ ਕਰੀਏ ਪਬਲਿਕ ਸੇਫਟੀ ਦੀ ਗੱਲ ਕਰੀਏ ਜਾਂ ਹੈਲਥ ਕੇਅਰ ਦੀ ਗੱਲ ਕਰੀਏ ਜਿਹੜਾ ਇਤਿਹਾਸ ਇਸ ਗੱਲ ਦਾ ਗਵਾਹ ਕਿ ਸਾਡੀ ਪਹਿਲ ਇਹਨਾਂ ਜਿਹੜੇ ਪ੍ਰੋਗਰਾਮ ਨੇ ਸਰਵਿਸ ਜਨੇ ਲੋਕਾਂ ਨੂੰ ਇਹਦੇ ਵਿੱਚ ਸਾਡੀ ਪਹਿਲ ਹੋਣੀ ਹੈ ਸਾਡੀ ਪਹਿਲ ਜਿਹੜਾ ਖਜ਼ਾਨੇ ਚੋਂ ਇੱਕ ਵੱਡਾ ਹੱਥ ਮਾਰ ਕੇ ਕਿ ਤੁਸੀਂ ਇੱਕ ਬਿਲੀਅਨ ਡਾਲਰ ਜਿਹੜਾ 1000 ਮਿਲੀਅਨ ਡਾਲਰ ਬਣਦਾ ਗਿਲ ਸਾਹਿਬ ਉਹ ਜੇ ਉਹ ਅੰਦਾ ਵੀ ਸਾਨੂੰ ਮਿਲ ਜੇ ਤਾਂ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਇੱਥੇ ਹੱਲ ਹੁੰਦਾ ਤੇ ਸਾਡੀ ਪਹਿਲ ਹੋ ਰਹੇਗੀ ਇਹਦੇ ਵਿੱਚ ਜਦੋਂ ਆਪਾਂ ਹੈਲਥ ਕੇਅਰ ਐਜੂਕੇਸ਼ਨ ਦੀ ਅੱਛਾ ਜੀ ਤੇ ਜਿਹੜੇ ਕੰਟੇਨਰ ਟਰੱਕਰਸ ਦਾ ਇਸ਼ੂ ਪਿਛਲੇ 4 ਸਾਲ ਤੋਂ ਉਹਨੂੰ ਮੈਂ ਵੇਖ ਰਿਹਾ ਜੀ ਸਟ੍ਰਾਈਕ ਤੋਂ ਲੈ ਕੇ ਹਰ ਰੋਜ਼ ਉਸ ਨੂੰ ਕਵਰ ਕਰਦੇ ਆਏ ਆਂ ਯੂਨੀਅਨ ਤੇ ਉਹਨਾਂ ਦੇ ਰਹਿਤ ਤੇ ਗਗਨ ਸਿੰਘ ਹਰ ਰੋਜ਼ ਉਹਨਾਂ ਦੀਆਂ ਹੜਤਾਲ ਦੀ ਜਗ੍ਹਾ ਤੇ ਫਿਕਰਸ ਤੇ ਜਾ ਕੇ ਖੜਦੇ ਰਹੇ ਆਂ ਪਰ ਗੱਲ ਨਾ ਬਣੀ ਜਿਵੇਂ ਉੱਥੇ ਮੂੰਹ ਨੂੰ ਜੂਸ ਲੱਗਦਾ ਇੱਥੇ ਵੀ ਜੱਫੀਆਂ ਪਾ ਕੇ ਤੇ ਬੱਲੇ ਬੱਲੇ ਕਰਾਤੀ ਮਨਿਸਟਰ ਯੂਨੀਅਨ ਤੇ ਗੱਲ ਇਹ ਟੁੱਟ ਰਹੇ ਨੇ ਪੈਸੇ ਮੁੱਕ ਰਹੇ ਨੇ ਸਾਰੀ ਸਾਰੀ ਰਾਤ ਮੁੰਡੇ ਟਰੱਕ ਚ ਬਾ ਕੇ 2-250 ਡਾਲਰ ਘਰੋਂ ਲੈ ਕੇ ਆਉਂਦੇ ਨੇ 4-4 ਘੰਟੇ ਉਹਨਾਂ ਦਾ ਕੀ ਉਸ ਪੁਆਇੰਟ ਤੱਕ ਜਾਂਦੇ ਹੋਏ ਉਹਨਾਂ ਨੂੰ ਸਮਾਂ ਲੱਗਦਾ ਤੇ ਉਸ ਕੇਸ ਪੁਆਇੰਟ ਤੇ ਜਾ ਕੇ ਫੇਰ ਉਹਨਾਂ ਨੂੰ ਕਈ ਨਾ ਲੇਟ ਹੋ ਗਏ ਇਹ ਹੋ ਗਿਆ ਉਹ ਹੋ ਗਿਆ ਉਹਨਾਂ ਨਾਲ ਤੇ ਹਲੇ ਵੀ ਬਤਮੀਜ਼ੀ ਕੀਤੀ ਜਾਂਦੀ ਹੈ ਹਿਲਜੁਲ ਹੋਈ ਹੈ ਪਿਛਲੇ ਦਿਨਾਂ ਦੀ ਇੱਕ ਪ੍ਰੈਸ ਕਾਨਫਰੰਸ ਤੋਂ ਬਿਨਾ ਵਿੱਚੇ ਐਮਪੀ ਭੱਜੇ ਫਿਰਦੇ ਆ ਵਿੱਚੇ ਨਹੀਂ ਪਰ ਹਲੇ ਵੀ ਗੱਲ ਕੋਈ ਸੋਲਿਡ ਨਹੀਂ ਹੋਈ ਤੁਹਾਡੀ ਸਰਕਾਰ ਬਣਨ ਦੀ ਸੂਰਤ ਦੇ ਵਿੱਚ ਤੁਸੀਂ ਕੀ ਕਰੋਗੇ ਜੀ ਸਭ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਵੱਡਾ ਕਰਦਾ ਔਰ ਮੈਂ ਮੈਂ ਨਹੀਂ ਕਰ ਰਿਹਾ ਐਕਚੁਅਲੀ ਮੈਂ ਲੋਕਾਂ ਵੱਲੋਂ ਤੁਹਾਡਾ ਧੰਨਵਾਦ ਕਰ ਰਿਹਾ ਕਿ ਤੁਸੀਂ ਇਸ ਇਸ਼ੂ ਦੇ ਉੱਤੇ ਜਿਹੜੀ ਆਪਣੀ ਕਵਰੇਜ ਦਿੱਤੀ ਹੈ ਜਾਂ ਇਹਦੇ ਕਮੈਂਟਰੀ ਕੀਤੀ ਹੈ ਬੈਲੈਂਸ ਕਰਕੇ ਇਹਨਾਂ ਦੀ ਜਿਹੜੇ ਟਰੱਕਾਂ ਵਾਲਿਆਂ ਦੀ ਆਵਾਜ਼ ਜਿਹੜੀ ਹੈਗੀ ਹੈ ਉਹ ਵਿਕਟੋਰੀਆ ਤੱਕ ਪਹੁੰਚਾਈ ਹੈ ਉਹ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਇਸ ਸਾਰੇ ਸੰਘਰਸ਼ ਦੇ ਵਿੱਚ ਤੁਹਾਡਾ ਬਹੁਤ ਬਹੁਤ ਅਸਰ ਦੇ ਜਾਂ ਬੀਸੀ ਦੇ ਲੋਕਾਂ ਵੱਲੋਂ ਮੈਂ ਤੁਹਾਨੂੰ ਕਰਦਾ ਕਿਉਂਕਿ ਮੈਂ ਲੋਕਾਂ ਤੋਂ ਇਹ ਗੱਲ ਸੁਣਦਾ ਬਾਹਰ ਜਾ ਕੇ ਜੀ ਗੱਲ ਆਪਣੇ ਇਹ ਮਸਲਾ ਹੈਗਾ ਬੜਾ ਸੰਜੀਦਾ ਮਸਲਾ ਹੈ ਗਿੱਲ ਸਾਹਿਬ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਏ ਅੱਜ ਕਿ ਅੱਜ ਸਾਡੇ ਜਿਹੜੇ ਐਨਡੀਪੀ ਦੇ ਲੀਡਰ ਨੇ ਜੌਨ ਹਾਰਗਨ ਸਾਹਿਬ ਉਹਨਾਂ ਨੇ ਜਿਹੜੇ ਪੋਰਟ ਨਾਲ ਸੰਬੰਧਿਤ ਤਰਕਰਜ਼ ਨੇ ਉਹਨਾਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਪੱਕੇ ਤੌਰ ਦੇ ਉੱਤੇ ਹੱਲ ਕਰਨ ਦਾ ਜਿਹੜਾ ਐਲਾਨ ਕੀਤਾ ਹੈ ਮਸਲਿਆਂ ਨੂੰ ਜਿਹੜੀ ਬੀਸੀ ਲਿਬਰ ਸਰਕਾਰ ਨੇ ਲੰਮੇ ਸਮੇਂ ਤੋਂ ਅਣਗੌਲੀਆਂ ਕੀਤਾ ਜਾਂ ਨਗਲਕਤ ਕੀਤਾ ਤੁਹਾਨੂੰ ਪਤਾ ਇਸ ਗੱਲ ਦਾ ਸਰੋਤਿਆਂ ਨੂੰ ਇਹ ਗੱਲ ਗਿਲਦਾ ਭੁੱਲੀ ਨਹੀਂ ਯਾਦ ਹੈ ਕਿ ਕਰੀਬ 18 ਮਹੀਨੇ ਪਹਿਲਾਂ ਜਿਹੜੀ ਗੱਲ ਦਾ ਤੁਸੀਂ ਵੀ ਹੁਣੇ ਜ਼ਿਕਰ ਕੀਤਾ ਹੈ ਕਿ BC ਦੇ ਜਿਹੜੇ ਸਾਡੇ ਪ੍ਰੀਮੀਅਰ ਸਾਹਿਬਾ ਕ੍ਰਿਸ਼ਤੀ ਕਰਾਰਕ ਸਾਹਿਬਾ ਮਿਨਿਸਟਰ ਪੀਟਰ ਹਸਬੈਂਡ ਸਾਹਿਬ ਮਿਨਿਸਟਰ ਟੌਡ ਸਟੋਨ ਸਾਹਿਬ ਇਹ ਸਾਰੇ ਲੋਕਾਂ ਨੇ BC ਦੀ ਵਿਧਾਨ ਜਿਹੜਾ ਵਾਅਦਾ ਦਿੱਤਾ ਜਿਹੜਾ ਸੀਐਸ ਮਿਹਰਤਾ ਇੱਕ ਵਿਸ਼ੇਸ਼ ਜਿਹੜਾ ਐਗਰੀਮੈਂਟ ਜਿਹਨੂੰ 2014 ਐਗਰੀਮੈਂਟ ਜਾਂ 2014 ਐਗਰੀਮੈਂਟ ਦਾ ਨਾਂ ਦਿੱਤਾ ਗਿਆ ਸੀ ਉਸ ਤੇ ਦਸਤਕਤ ਹੋਏ ਸੀ ਬੀਸੀ ਲਿਬਰ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਤੇ ਨਾਲ ਹੀ ਉਹਦੇ ਦਸਤਕਤ ਹੋਏ ਸੀਗੇ ਜਿਹੜਾ ਇਹਨਾਂ ਟਰੱਕਰਸ ਦੀਆਂ ਜਿਹੜੀਆਂ ਜਿੱਥੇ ਬੰਦੀਆਂ ਦੇ ਵੱਲੋਂ ਦੇ ਹੈਰਾਨੀ ਗੱਲ ਇਹ ਹੈ ਕਿ ਅੱਜ 18 ਮਹੀਨਿਆਂ ਬਾਅਦ 18 ਮਹੀਨੇ ਗੁਜ਼ਰ ਚੁੱਕੇ ਆ ਕਿ ਬੀਸੀ ਲਿਬਰ ਸਰਕਾਰ ਨੇ ਇਸ ਐਗਰੀਮੈਂਟ ਦੇ ਵਿੱਚ ਇਹਨਾਂ ਦਰਜ ਕੁਝ ਅਹਿਮ ਜਿਹੜੇ ਮੁੱਦੇ ਸੀਗੇ ਜਿਹੜੀਆਂ ਕੀ ਰეკਮੈਂਡੇਸ਼ਨ ਸੀਗੀਆਂ ਉਹਨਾਂ ਨੂੰ ਅਜੇ ਤੱਕ ਇਹਨਾਂ ਨੇ ਲਾਗੂ ਨਹੀਂ ਕੀਤਾ ਔਰ ਪਿੱਤਰ ਵਾਗਵੰਦ ਸਾਹਿਬ ਜਿਹੜੇ ਸਾਡੇ ਸਰੀ ਤੋਂ ਮੰਤਰੀ ਨੇ ਟਰੱਕਾਂ ਮਾਰਿਆ ਨੂੰ ਮਿਲਦੇ ਵੀ ਰਹੇ ਨੇ ਉਹ ਸ਼ਬਦੀ ਜਾਲ ਬਚਾਉਣ ਦੇ ਮਾਸਟਰ ਨੇਗੇ ਔਰ ਉਹ ਲਗਾਤਾਰ ਰੇਡੀਓ ਤੇ ਜਾ ਕੇ ਤੁਹਾਡੇ ਰੇਡੀਓ ਤੋਂ ਵੀ ਆਏ ਆ ਤੁਸੀਂ ਬੜੀ ਖੂਬਸੂਰਤ ਉਹਨਾਂ ਦਾ ਇੰਟਰਵਿਊ ਕੀਤੀ ਹੈ ਉਹ ਰੇਡੀਓ ਤੇ ਜਾ ਕੇ ਲੋਕਾਂ ਨੂੰ ਇਹ ਸੁਨੇਹਾ ਦਿੰਦੇ ਰਹੇ ਆ ਕਿ ਬੀਸੀ ਲਿਬੋਰ ਸਰਕਾਰ ਨੇ ਜਿਹੜਾ 2014 ਐਗਰੀਮੈਂਟ ਸੀਗਾ ਉਹਦੀਆਂ ਸਾਰੀਆਂ ਰეკਮੈਂਡੇਸ਼ਨ ਨੂੰ ਲਾਗੂ ਕਰ ਦਿੱਤਾ ਬਲਕਿ ਇਸ ਦੇ ਦੇ ਵਿੱਚ ਉਹਨਾਂ ਨੇ ਇਹ ਵੀ ਇੱਕ ਗੱਲ ਨਵੀਂ ਕਹਿਣੀ ਸ਼ੁਰੂ ਕੀਤੀ ਹੈ ਕਿ ਜਿਹੜੇ ਤਰੱਕਾਂ ਦੇ ਨਮਾਇੰਦਗੀ ਕਰਨ ਵਾਲੇ ਲੋਕ ਨੇ ਇਹ ਲੋਕਾਂ ਨੂੰ ਮਿਸ ਇਨਫੋਰਮ ਕਰ ਰਹੇ ਇਹ ਦੋਸ਼ ਲਾਇਆ ਉਹਨਾਂ ਨੇ ਉਹਨਾਂ ਨੇ ਇਹਨਾਂ ਲੋਕਾਂ ਦੇ ਉੱਤੇ ਜਿਹੜੇ ਇਹ ਲੋਕਾਂ ਨੇ ਲੜਾਈ ਲੜ ਰਹੇ ਆ ਪਰ ਹਕੀਕਤ ਤੇ ਸੱਚ ਕੁਝ ਬਿਲਕੁਲ ਇਹਦੇ ਉਲਟ ਹੈ ਗਿਲਸਾਹ BC ਲੇਬਰ ਸਰਕਾਰ ਨੇ ਜੋ 2014 ਦਾ ਐਗਰੀਮੈਂਟ ਇਹਨਾਂ ਨੇ ਕੀਤਾ ਸੀ ਉਹਦੇ ਵਿੱਚ ਦਰਜੀਆਂ ਖਾਸ ਕਰਕੇ ਬਹੁਤ ਇੰਪੋਰਟੈਂਟ ਮੁੱਖ ਬਹੁਤ ਜ਼ਰੂਰੀ ਕੀ ਰਿਕਮੈਂਡੇਸ਼ਨ ਜਿਹੜੀਆਂ ਸੀਗੀਆਂ ਉਹਨਾਂ ਨੂੰ ਲਾਗੂ ਨਹੀਂ ਕੀਤਾ ਇਹ ਹੀ ਸੱਚ ਹੈ ਔਰ ਇਹਦੇ ਵਾਸਤੇ ਮੈਂ ਇਸ ਤੋਂ ਪਹਿਲਾਂ ਇੱਥੇ ਜਾਵਾਂ ਕਿ ਐਮਬੀਪੀ ਜਿਹੜੀ ਅੱਜ ਐਲਾਨਨਾਮਾ ਹੋਇਆ ਉਹਦੇ ਵਿੱਚ ਕੀ ਹੈ ਮੈਂ ਤਨਵਾਦ ਕਰਨਾ ਚਾਹੁੰਦਾ ਟਰੱਕਾਂ ਵਾਲੇ ਸਾਰੇ ਵੀਰਾਂ ਦਾ ਕਿ ਉਹਨਾਂ ਦੇ ਪਰਿਵਾਰਾਂ ਦਾ ਬੜਾ ਔਖਾ ਸਮਾਂ ਉਹਨਾਂ ਦੇ ਉੱਤੇ ਮੈਨੂੰ ਪਤਾ ਚੱਲ ਰਿਹਾ ਹੈ ਕਿ ਜਿਨ੍ਹਾਂ ਨੇ 2 ਸਾਲ ਲਗਾਤਾਰ ਇਹ ਸਰਕਾਰ ਨਾਲ ਜਿਹੜੀ ਸੁੱਤੀ ਪਈ ਹੈ ਕੁੰਭ ਕਰਨ ਨੂੰ ਉਹਦੇ ਨਾਲ ਲੜਾਈ ਆਪਣੀ ਜਾਰੀ ਰੱਖੀ ਮੈਂ ਧੰਨਵਾਦ ਕਰਦਾ ਉਹਨਾਂ ਲੋਕਾਂ ਦਾ ਵਿਸ਼ੇਸ਼ ਕਰਕੇ ਉਹਨਾਂ ਵਿਅਕਤੀਆਂ ਦਾ ਜਿਨ੍ਹਾਂ ਨੇ ਜਿਹੜੀਆਂ ਬੱਕਰੀਆਂ-ਵੱਕਰੀਆਂ ਜੱਥੇਬੰਦੀਆਂ ਦੀ ਨਮਾਇੰਗੀ ਕਰਦੇ ਹੋਏ ਇਸ ਲੜਾਈ ਨੂੰ 18 ਮਹੀਨੇ ਜਾਰੀ ਰੱਖਿਆ ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਯੂਟਾ ਹੈਗੀ ਹੈ ਯੂਨਾਈਟਿਡ ਟਰੱਕਰਸ ਐਸੋਸੀਏਸ਼ਨ ਉਹਦੇ ਸਪੋਕਸਮੈਨ ਨੇ ਤੁਸੀਂ ਵੀ ਜ਼ਿਕਰ ਕੀਤਾ ਗਗਨ ਸਿੰਘ ਬੜੀ ਅੱਛੀ ਲੀਡਰਸ਼ਿਪ ਉਨ੍ਹਾਂ ਨੇ ਦਿਖਾਈ ਹੈ ਯੂਨੀਫਰ ਯੂਨੀਅਨ ਹੈਗੀ ਐ ਇਸੇ ਤਰ੍ਹਾਂ ਟੀਮਸ ਤਰ੍ਹਾਂ ਔਰ ਜਿੱਥੇ ਜਿਹੜੇ ਮੁਕਾਮ ਤੇ ਅਸੀਂ ਅੱਜ ਪਹੁੰਚੇ ਆ ਜਿਹੜਾ ਐਲਾਨਨਾਮਾ ਹੋਇਆ ਉਹਦੇ ਵਿੱਚ ਮੈਨੂੰ ਇੱਕ ਇੰਝ ਕੋਈ ਗਰੇਜ਼ ਨਹੀਂ ਇਨ੍ਹਾਂ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਬਹੁਤ ਵੱਡਾ ਹੱਥ ਇਨ੍ਹਾਂ ਲੋਕਾਂ ਦਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਅਸੀਂ ਇਸ ਐਲਾਨਨਾਮੇ ਤੇ ਪਹੁੰਚੇ ਆ ਜੇ ਐਨਡੀਪੀ ਸਰਕਾਰ ਬਣਦੀ ਹੈ ਤਾਂ ਇਹ ਜਿਹੜੇ ਮੁੱਦੇ ਆ ਉਹਨਾਂ ਦਾ ਪੱਕੇ ਤੌਰ ਤੇ ਉਹ ਡੇੜਾ ਸੀ ਹੱਲ ਕਰਨ ਜਾ ਰਹੇ ਆ। ਹੂੰ ਹੂੰ। ਬਹੁਤ ਵਧੀਆ ਗੱਲਬਾਤ ਕੀਤੀ ਜੀ ਅਖੀਰ ਦੇ ਜੀ ਦੁੱਖ ਦੀ ਕਹਾਣੀ ਤੁਸੀਂ ਪੀਟਰ ਫਾਸ ਬੈਂਡਰ ਨਾਲ ਸੁਣਿਆ ਵੀ ਹੋਊਗਾ। ਮੈਂ ਉਹ ਗੱਲ ਤੇ ਨਹੀਂ ਆਏ ਜਦ ਜਦ ਮੈਂ ਉਹਨਾਂ ਨਾਲ ਗੱਲ ਕਰ ਮੈਨੂੰ ਇਉਂ ਲੱਗਦਾ ਮੈਂ ਪੰਜਾਬ ਵਿੱਚ ਕਿਸੇ ਲੀਡਰ ਨਾਲ ਗੱਲ ਕਰ ਰਿਹਾ। ਇੱਥੇ ਇਸ ਤਰ੍ਹਾਂ ਲੀਡਰ ਨਹੀਂ ਕਰਦੇ ਉਹ ਗੱਲ ਆਪਣੀ ਸੁਣਦੇ ਆ ਕਹਿੰਦੇ ਆ। ਉਹ ਕਹਿੰਦੇ ਨਾ ਤਾਂ ਸਾਡੇ ਕੋਲ ਫੈਡਰਲ ਅਸੀਂ ਕੰਟਰੋਲ ਕਰ ਸਕਦੇ ਨਾ ਪੋਰਟ ਜਿਹੜੀ ਮੈਟਰੋ ਵੈਂਕੂਵਰ ਸਾਡੇ ਕੰਟਰੋਲ ਚ ਹੈ ਸਾਡੇ ਕੋਲ ਜਿਹੜਾ ਕਿਸੇ ਅਸੀਂ ਕਰਤਾ ਮੈਂ ਕਿਹਾ ਕੀਤਾ ਕੀ ਹੈ ਕੀਤਾ ਤਾਂ ਕੁਝ ਹੈ ਨਹੀਂ ਉੱਥੇ ਫਿਰ ਜੇ ਤੁਹਾਡੇ ਕੋਲ ਜੂਰਿਡਿਕਸ਼ਨ ਹੈ ਨਹੀਂ ਸੀ ਫਿਰ ਤੁਸੀਂ ਟਰੱਕਰਸ ਨੂੰ ਆਪਣੇ ਬਿਹਾਰ ਤੇ ਉਹਨਾਂ ਦੀ ਸਟ੍ਰਾਈਕ ਕਿਉਂ ਖਤਮ ਕੀਤੀ ਫਿਰ ਫੈਡਰਲ ਵਾਲੇ ਜਾਂ ਪੋਰਟ ਮੈਟਰੋ ਵੈਂਕੂਵਰ ਆਉਂਦੀ ਉਹਨਾਂ ਨੂੰ ਕਰਦੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਖੀਰ ਦੇ ਨੇ ਤੇ ਜਾਣਾ ਹੈ ਜਿਹੜਾ ਐਨਡੀਪੀ ਨੇ ਕੀ ਅੱਜ ਐਲਾਨ ਕੀਤਾ ਜੀ ਸਾਡੇ ਜਿਹੜੇ ਲੀਡਰ ਆ ਜੌਨ ਔਰਗਨ ਸਾਹਿਬ ਤੇ ਸਾਡੀ ਮੁਕੰਮਲ ਜਿਹੜੀ ਐਨਡੀਪੀ ਦੀ ਟੀਮ ਹੈ ਇਹ ਵਿਸ਼ਵਾਸ ਕਰਦੀ ਹੈ ਮੁਕੰਮਲ ਤੌਰ ਤੇ ਸਪਸ਼ਟ ਹੈ ਕਿ ਜਿਹੜੀ ਬੀਸੀ ਲਿਬਰ ਸਰਕਾਰ ਨੇ ਜਿਹੜਾ 2014 ਦਾ ਐਗਰੀਮੈਂਟ ਆ ਉਹਨੂੰ ਮੁਕੰਮਲ ਤੌਰ ਤੇ ਲਾਗੂ ਨਹੀਂ ਕੀਤਾ ਤੇ ਐਨਡੀਪੀ ਜਿਹੜੀ ਹੈਗੀ ਇਸ ਐਗਰੀਮੈਂਟ ਦੀ ਫੁੱਲ ਜਿਹੜੀ ਇੰਪਲੀਮੈਂਟੇਸ਼ਨ ਹੈਗੀ ਆ ਉਹ ਕਰਨ ਲਈ ਵਚਨਬੱਧ ਹੈਗੀ ਹੈ ਅੱਜ ਐਲਾਨ ਹੋਇਆ ਸਾਡੇ ਲੀਡਰ ਵੱਲੋਂ ਇਹਦੇ ਵਿੱਚ ਗਿੱਲ ਸਾਬ ਚਾਰ ਵਿਸ਼ੇਸ਼ ਕੰਮ ਲੈਣਗੇ ਚਾਹ ਜਿਹੜੀਆਂ ਕੀ ਰეკਮੈਂਡੇਸ਼ਨ ਹੈਗੀਆਂ ਜਿਨ੍ਹਾਂ ਨੂੰ BC ਲਿਬਰ ਸਰਕਾਰ ਨੇ ਨਹੀਂ ਕੀਤਾ ਤੇ ਅਸੀਂ ਕਰਾਂਗੇ ਉਹਦੇ ਵਿੱਚ ਨੰਬਰ 1 ਤੁਹਾਨੂੰ ਪਤਾ ਜਿਹੜਾ ਸਭ ਤੋਂ ਵੱਡਾ ਇਸ਼ੂ ਟੈਗ ਦਾ ਇਸ਼ੂ ਅਸੀਂ ਸਾਰੀਆਂ ਪਾਰਟੀਆਂ ਤੇ ਕਮਿਸ਼ਨ ਦੇ ਨਾਲ ਗੱਲਬਾਤ ਕਰਕੇ ਜਿਹੜਾ ਵਰਕ ਪਰਮਟ ਹੈ ਜਿਹਨੂੰ ਟੈਗ ਵੀ ਕਹਿੰਦੇ ਆ ਦੀ ਸਮੱਸਿਆ ਦਾ ਪੱਕੇ ਤੌਰ ਤੇ ਤੇ ਹੱਲ ਕਰਾਂਗੇ ਅਤੇ ਸਟਰਗਲਸ ਨੂੰ ਅਲਾਉ ਕਰਾਂਗੇ ਕਿ ਉਹ ਉੱਥੇ ਜਾ ਸਕਣ ਜਿੱਥੇ ਕੰਮ ਹੋਵੇ ਪਰ ਇਹ ਜਿੱਥੇ ਦੀ ਲੋਡ ਹੋਵੇ ਜਿਹੜਾ ਹੁਣ ਨਹੀਂ ਹੈ ਨੰਬਰ 2 ਬੀਸੀ ਲਿਬਰ ਸਰਕਾਰ ਨੇ ਜਿਹੜਾ ਕੰਟੇਨਰਸ ਟ੍ਰਕਿੰਗ ਕਮਿਸ਼ਨ ਹੈਗਾ ਉਸ ਨੂੰ ਬਣਦੇ ਸਾਧਨ ਨਹੀਂ ਦਿੱਤੇ ਉਹਦੇ ਹੱਥ ਬੰਨੇ ਹੋਏ ਇਸ ਕਰਕੇ ਉਹ ਇਸ ਐਗਰੀਮੈਂਟ ਦੀ ਜਿਹੜੀ ਪੂਰੀ ਜਿਹੜੀ ਫੁੱਲ ਇੰਪਲੀਮੈਂਟੇਸ਼ਨ ਜਾਂ ਐਨਫੋਰਸਮੈਂਟ ਕਰਨ ਤੋਂ ناکਾਮਜਾਬ ਰਿਹਾ ਹੈ ਔਰ ਅਸੀਂ ਅੱਜੇ ਵਚਨਬੱਧਤਾ ਕੀਤੀ ਹੈ ਕਿ ਉਹਨਾਂ ਨੂੰ ਉਹਨਾਂ ਦੇ ਬੰਦ ਦੇ ਸਾਧਨ ਚਾਹੀਏ ਉਹ ਸਟਾਰਟਿੰਗ ਦੀ ਗੱਲਬਾਤ ਹੋਵੇ ਜਾਂ ਫੰਡਿੰਗ ਦੀ ਗੱਲਬਾਤ ਹੋਵੇ ਉਹਨਾਂ ਨੂੰ ਉਹ ਸਾਧਨ ਜਿਹੜੇ ਉਹ ਪ੍ਰਦਾਨ ਕੀਤੇ ਜਾਣਗੇ ਤਾਂ ਕਿ ਉਹ ਟਾਈਮਲੀ ਤੇ ਜਿਹੜੀ ਕੰਪਲੀਟ ਜਿਹੜੀ ਇਹਦੀ ਐਨਫੋਰਸਮੈਂਟ ਕਰ ਸਕਣ ਜਿਹੜਾ ਐਗਰੀਮੈਂਟ ਜਿਹੜਾ ਕੀਤਾ ਗਿਆ ਦੋਨੇ ਤਰ੍ਹਾਂ ਦੇ ਵਿੱਚ ਨੰਬਰ 3 ਜਿਹੜਾ BC ਲਿਬਰ ਸਰਕਾਰ ਦੇ ਜਿਹੜਾ ਬਣਾਇਆ ਹੋਇਆ ਉਹਨਾ ਕਾਨੂੰਨ ਜਿਹੜਾ ਉਹਨਾ ਕਾਨੂੰਨ ਉਹਦੇ ਵਿੱਚ ਜਿਹੜੀਆਂ ਬਣਦੀਆਂ ਅਮੈਂਡਮੈਂਟਸ ਨੇ ਜੰਬਲਿਸਲੇਟਿਵ ਚੇਂਜਸ ਨੇ ਅਸੀਂ ਉਹਦੇ ਵਾਸਤੇ ਵੀ ਅਜਵਚਨ ਬੱਤਤਾ ਕੀਤੀ ਹੈ ਤਾਂ ਕੁਝ ਦੀਆਂ ਮੰਗਾਂ ਨੂੰ ਮੁੱਕ ਰੱਖ ਕੇ ਉਹਦੇ 'ਚ ਕੀਤੀ ਜਾਏਗੀ ਨੰਬਰ 4 ਜਿਹੜਾ ਆਖਰੀ ਕੰਮ ਜਿਹਦੇ ਕੱਲੇ 'ਚ ਕੋਈ ਮੰਗ ਸੀ ਜਿਹਦੇ ਆਲੇ-ਦਾਲੇ ਪੀਟਰ ਫਾਸਪੈਂਡਲ ਤੁਹਾਡੇ ਨਾਲ ਪਿਛਲੇ ਇੰਟਰਵਿਊ ਦੇ ਵਿੱਚ ਜਿਹੜਾ ਉਹ ਲਸ਼ਮਨ ਰੇਖਾ ਦੀ ਤਰਾਹ ਦੇ ਆਲੇ-ਦਾਲੇ ਉਹ ਡਾਂਸ ਕਰਦਾ ਰਿਹਾ ਉਹ ਹੈਗਾ ਕਿ ਜਿਹੜੇ ਫੈਡਰਲ ਸਰਕਾਰ ਦੇ ਕੰਮ ਹੈ ਉਹਦੇ 'ਚ ਅਸੀਂ ਫੈਡਰਲ ਸਰਕਾਰ ਨੂੰ ਸਿਰਫ ਇੱਕ ਗਿੱਦਰ ਚਿੱਠੀ ਪਾ ਕੇ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰਾਂਗੇ ਬਲਕਿ ਅਸੀਂ ਜਿਹੜੇ ਸਾਡੇ ਲੋਕਲ ਮੈਂਬਰ ਪਾਰਲੀਮੈਂਟਸ ਹੈਗੇ ਇਥੋਂ ਇੱਕ ਨਹੀਂ ਸਾਡੇ ਬਹੁਤ ਲੋਕਲ ਪਾਰ ਮੈਂਬਰ ਪਾਰਲੀਮੈਂਟ ਆ ਅਸੀਂ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜੋ ਫੈਡਰਲ ਸਰਕਾਰ ਦਾ ਅਧਿਕਾਰ ਖੇਤਰ ਥੱਲੇ ਜ਼ਿੰਮੇਵਾਰੀਆਂ ਆਉਂਦੀਆਂ ਉਹ ਇੰਪਰੂਵਮੈਂਟ ਅਸੀਂ ਪੂਰਾ ਮੁਕੰਮਲ ਲੋਬੀ ਕਰਕੇ ਉਹਨਾਂ ਤੋਂ ਜਿਹੜੀਆਂ ਉਹ ਕਰਵਾਵਾਂਗੇ ਸੋ ਇਹ ਚਾਰੇ ਜਿਹੜੀਆਂ ਮੰਗਾ ਹੋਣ ਤਕਲੀਫ ਸਰਕਾਰ ਨੇ ਨਹੀਂ ਕੀਤੀਆਂ ਉਹ ਅਸੀਂ ਗੱਲਬਾਤ ਕਰਾਂਗੇ ਤੇ ਮੈਂ ਇਹ ਗੱਲ ਕਹਿ ਕੇ ਖਤਮ ਕਰ ਲੱਗਿਆ ਆਪਣੀ ਗੱਲ ਤੁਹਾਡਾ ਸਵਾਲ ਪੁੱਛ ਸਕਦੇ ਹੋ ਪਿਛਲੇ ਦੋ ਸਾਲ ਤੋਂ ਕੋਈ 1500 ਦੇ ਕਰੀਬ ਪਰਿਵਾਰ ਹੈ ਟਰੈਕਰ ਨਹੀਂ ਪਰਿਵਾਰ ਹੈ ਜਿਹੜੇ ਸਫਰ ਕਰ ਰਹੇ ਆ ਕਿਉਂਕਿ ਲਿਬਰਲ ਸਰਕਾਰ ਨੇ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਤੇ ਨਾ ਪ੍ਰੀਮੀਅਰ ਨੇ ਸੁਣੀ ਹੈ ਨਾ ਪੀਟਰ ਫਾਸਬੈਂਡਰ ਨੇ ਸੁਣੀ ਹੈ ਨਾ ਟੌਡ ਸਟੋਨ ਨੇ ਸੁਣੀ ਹੈ ਇਹਨਾਂ ਨੂੰ 16 ਸਾਲ ਗਿਲਸਾਬ ਹੋ ਗਏ ਇਹਨਾਂ ਦੇ ਕੰਨਾਂ ਨੂੰ ਜੰਗਾਲ ਲੱਗ ਚੁੱਕੀ ਹੈ ਇਸ ਕਰਕੇ ਆ ਚੋਣ ਆ ਰਹੀ ਹੈ ਇਹਨਾਂ ਨੂੰ ਬਦਲਣ ਦੀ ਲੋੜ ਹੈ ਮੈਂ ਤਾਂ ਸਾਰੇ ਸਰੋਤਿਆਂ ਨੂੰ ਇਹ ਬੇਨਤੀ ਕਰਦਾ ਕਿ ਆਓ ਆਪਾਂ ਅੰਬੜਾ ਮਾਰੀਏ ਇੱਕ ਇਨਾਂ ਨੂੰ ਬਦਲੀਏ ਤਾਂ ਕਿ ਜਿਹੜੀ ਇੱਥੇ ਤਕਸੀਲੀ ਅਮ ਲੋਕਾਂ ਦੇ ਹੱਕ ਦੀ ਤਕਸੀਲੀ ਆ ਸਕੇ ਬਿਲਕੁਲ ਜੀ ਬਹੁਤ ਵਧੀਆ ਗੱਲਬਾਤ ਤੁਸੀਂ ਕੀਤੀ ਹੈ ਬਾਈ ਜੀ ਤੇ ਇਹ ਅਸਲ ਕਾਰਨ ਇਹੀ ਹੈ ਮੈਂ ਕਿਸੇ ਰਾਜਨੀਤਿਕ ਧਿਰ ਨਾਲ ਨਹੀਂ ਖੜ ਸਕਦਾ ਇੱਕ ਪਲੇਟਫਾਰਮ ਤੇ ਬੈਠਾ ਪਰ ਇਹ ਗੱਲ ਪੱਕੀ ਹੈ ਜਦ ਇੱਕ ਵਕਤ ਲੰਘ ਜਾਂਦਾ ਹੈ ਵਰਿਆਂ ਦਾ ਸਮਾਂ ਬਹੁਤ ਹੁੰਦਾ ਜਦ ਇੱਕ ਵਕਤ ਲੰਘ ਜਾਂਦਾ ਮੁੜ ਮੁੜ ਕੇ ਮੁੜ ਮੁੜ ਕੇ ਚੰਗਾ ਤੇ ਮਾੜਾ ਪਰਖਣ ਦੀ ਲੋਕਾਂ ਚੋਂ ਸ਼ਕਤੀ ਮੁੱਕ ਜਾਂਦੀ ਹੈ ਉਸ ਸਮੇਂ ਫਿਰ ਹੁਕਮਰਾਨ ਮਰਦियां ਕਰਦੇ ਨੇ ਇਹ ਜਾਏ ਹੋ ਰਿਹਾ ਪਰ ਪਿੱਛੇ ਵੀ ਵੇਖਿਆ ਤੇ ਇੱਥੇ ਵੀ ਵੇਖ ਰਿਹਾ ਹਸਪਤਾਲਾਂ ਦੀਆਂ ਮੁਸ਼ਕਲਾਂ ਉਹਦੇ ਬਾਅਦ ਤਰਕਸ ਦੀ ਮੁਸ਼ਕਲ ਮੁਸ਼ਕਲ ਹੈ ਕੀ ਨਹੀਂ ਨਿਤ ਨਿਹੜੇ ਸਰੀ ਚ ਗੋਲੀਆਂ ਚੱਲਦੀਆਂ ਠਾ ਠਾ ਠਾ ਹੁੰਦੀ ਆ ਕਦੇ ਕਿਤੇ ਕਦੇ ਕਦੇ ਕਿਤੇ ਕਦੇ ਕਿਤੇ ਪੰਜ ਚਾਰ ਦਿਨ ਰੋਗੀ ਛੇਵੇਂ ਦਿਨ ਹੋ ਗਈ ਆ ਦੋ ਮੁੰਡੇ ਹੁਣ ਐਡਮਿਸ਼ਨ ਸਾਡੇ ਮਰ ਕੇ ਹਟਿਆ ਇਹਦੀਆਂ ਡਿਊਟੀਆਂ ਸਰਕਾਰ ਦੀਆਂ ਡਿਊਟੀਆਂ ਮਾਪਿਆਂ ਦੀਆਂ ਵੀ ਡਿਊਟੀਆਂ ਪਰ ਸਰਕਾਰ ਨੇ ਸਾਡੀ ਜਾਨ ਮਾਲ ਦੀ ਰਾਖੀ ਕਰਨੀ ਰਸਭ ਸਾਹਿਬ ਤੁਹਾਡਾ ਸਮਾਂ ਦੇਣ ਲਈ ਧੰਨਵਾਦ ਤੇ ਵਿਸ਼ਵਾਲ ਦਾ ਵੈਸਟ ਵਧੀਆ ਕੈਂਪੇਨ ਲੜੋ ਤੇ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਓ ਆਪਣਾ ਕੰਮ ਕਰਨਾ ਫਰਜ਼ ਹੈ ਬਾਕੀ ਰੱਬ ਦੇ ਹੱਥ ਹੈ ਕਿਰਪਾ ਥੈਂਕ ਯੂ ਵਪਾਰ ਸੰਦੇਸ਼ ਹਾਂਜੀ ਸਫੀਰ ਗੱਲ ਸਾਹਿਬ ਸਫੀਰ ਭਾਈ ਜੀ ਹਾਂਜੀ ਮੈਂ ਤੇ ਇੰਨਾ ਕਹਿਣਾ ਸੀਗਾ ਵੀ ਟਰੈਕਟਰ ਬਾਈਆਂ ਨਾਲ ਹੈ ਤਾਂ ਓਖਾ ਕਰਦੇ ਵੀ ਆਪ ਹੀ ਮੈ ਤੋਂ ਦੱਸਦਾ ਅਸੀਂ 1.8 ਤੋਂ 1.b ਦੇ ਉੱਤੇ 1.5 ਸਾਲ ਹੋ ਗਿਆ ਸਾਡਾ ਕੰਮ ਚੱਲਦੇ ਨੂੰ ਉਹ ਗੋਰਾ ਰਿਟਾਇਰ ਹੋਇਆ ਸੀ 2000 ਡਾਲਰ ਨੂੰ ਜਾਂਦੇ ਸੀਗੇ ਅਸੀਂ ਵਿੰਟਰ ਦੇ ਵਿੱਚ ਟਰੱਕ ਖੜਾ ਕਰਤਾ ਸਨੋ ਬਾਲੀ ਪੈ ਗਈ ਬੱਚੇ ਕਹਿੰਦੇ ਚੱਲ ਖੜਾ ਕਰ ਦਿੰਨੇ ਵੀ ਉਹ ਮਹਿਲ ਕਹਿੰਦੇ ਗਾਂ ਦਾ ਲਓ ਆਪਣਾ ਭਾਈ ਸਾਹਿਬ ਸਿਆਣਾ ਬਿਆਣਾ ਆਂਦਾ ਜਾ ਕੇ ਕਹਿੰਦਾ ਮੈਂ 1200 ਚਾਹਦਾ ਹਾਂ ਇਹ ਲੋਡ ਔਰ ਇਹਦੇ ਵਿੱਚ ਤੋਂ ਮੈਂ ਇਹਨੂੰ ਦੱਸ ਗੱਲ ਤਾਂ ਵੀ ਗਵਰਨਮੈਂਟ ਬੰਦੇ ਸਾਡੇ ਆਪ ਹੀ ਨਹੀਂ ਹਟਦੇਗੇ ਹੁਣ ਉਹ ਐਕਟ ਪੂਰਾ ਕਿੱਥੋਂ ਕਰਨਾ ਸਾਡਾ ਪੁਆਇੰਟ A ਤੋਂ ਪੁਆਇੰਟ B 2000 ਡਾਲਰ ਜਾਣਦਾ ਸੀਗਾ ਡਾਲਰ ਸਾਡਾ ਆਉਣਾ ਸੀ ਹੁਣ ਉਸ ਪੂਰਾ ਕੱਠਾ ਹੋਣਾ ਮੁੜ ਕੇ ਗਵਰਨਮੈਂਟ ਨੂੰ ਪੈਡ ਚੱਕੇ ਜਾਮ ਕਰਦੇ ਆ ਇਹ ਕਿਉਂ ਇਹ ਚੀਜ਼ਾਂ ਕਰਦੇ ਇਹ ਇੰਡੀਆ ਥੋੜਾ ਵੀ ਤੇ ਬਿਜਲੀ ਦਾ ਬਿੱਲ ਨਹੀਂ ਦੇਣਾ ਜਾਂ ਤੇ ਮੌਰਗੇਜ ਨਹੀਂ ਦੇਣੀਗੀ ਤੁਸੀਂ ਸਮਝ ਗਏ ਆ ਇਹ ਬੰਦੇ ਹੁਣ ਇੱਥੇ ਕਿਵਰੀ ਐਲ ਐਨ ਸੀ ਜਾਂਦੇ ਰਹੇ ਮੈਂ ਦੇ ਵਿੱਚ ਛੱਡ ਤਾ ਖਾਲੀ ਹੁਣ ਉਧਰੋਂ ਦੀ ਲੋਡ ਲਈ ਹੁਣ ਆਦਿ ਤੈਲ ਥੋੜਾ ਲਗੋ ਆਪਣੇ ਬੰਦੇ ਨੇ ਖਾਲੀ ਤੁਰੇ ਜਾਣਾ ਫਿਰ ਨਹੀਂ ਕਰ ਸਕਦੇ ਉਹੀ ਇੱਕ ਚੀਜ਼ ਆ ਜ ਫਾਰਮਿੰਗ ਦੇ ਵਿੱਚ ਆ ਤੁਸੀਂ ਕਹਿੰਦੇ ਆ ਸੂਤਰ ਕਾਲੇ ਕਰਦੇ ਜਾਂ ਪਰਬੰਧ ਆ ਦੇ ਫਾਰਮ ਵਾਲੇ ਵੀ ਦੇਖ ਲਿਓ ਇਹ ਕੈਨੇਡੀਅਨ ਵਾਲੇ ਇਹ ਕਿਸੇ ਨੂੰ ਕੋਸ ਨਹੀਂ ਦਿੰਦੇ ਜੀ ਉੱਥੇ ਜੇ ਤੁਹਾਡੀ ਬੇਰੀ ਬਾਹਰ ਉੱਡ ਗਈ ਜੀ ਇਹ ਚ ਮੱਖੀ ਆ ਗਈ ਜੂਸ ਬਣ ਗਿਆ ਏਪੇ ਖਾਨੀ ਸਤਮ ਕਰ ਦਿੰਦੇ 20 ਸਾਲ ਦੇ ਤੋੜ ਦਿੰਦੇ ਆ ਇਹ ਠੀਕ ਹੈ ਜਿਵੇਂ ਤੁਸੀਂ ਆਪਣੀ ਨਹੀਂ ਥੋੜੀ ਜੀ ওভারਹੌਲਿੰਗ ਦੀ ਲੋੜ ਹੈ ਠੀਕ ਹੈ ਦੇ ਆਪਾਂ ਨੂੰ ਪਤਾ ਸਾਡੇ ਇੰਨਰ ਪ੍ਰੋਬਲਮ ਕਰਦੀਆਂ ਵੀ ਨੇ ਪਰ ਘਰ ਦੀਆਂ ਬਾਹਰ ਵਾਲਾ ਤਾਂ ਜੇ ਕੋਈ ਲਲਕਰਾ ਮਾਰਦਾ ਉਹ ਤਾਂ ਛੇੜ ਨਹੀਂ ਪੈਣਾ ਘਰ ਦੀ ਗੱਲ ਪਾਈਆਂ ਵਾਲੀ ਹੈ ਇਹ ਵੀ ਮਿੰਤ ਸਰਲਾ ਕਰ ਲਾਂਗੇ ਮੰਗਣਾ ਹੋ ਲੈਣ ਦੋ ਮਿਰਗੀ हट ਜੂ ਆਪੇ ਜਦ ਕੰਮ ਮੈਣ ਲੱਗਿਆ ਪੈਸੇ ਬਣ ਲੱਗੇ ਸਾਰੇ ਚੰਗੇ ਹੋਣਗੇ ਹੁਣ ਇੱਕ ਭੁੱਖ ਮਰੀ ਹੈ ਇੱਕ 2000 ਆ ਇੱਕ ਦੇ ਕੋਲ ਬੀ ਵੀ ਨਹੀਂ ਉਹ ਕਹਿੰਦਾ ਯਾਰ ਮੈਨੂੰ ਰੋਟੀ ਦਾ ਔਖਾ ਹਾਂ ਇਹ ਇਹ ਹੁਣ ਸੁਣ ਲਿਓ ਗੱਲ ਤੁਸੀਂ ਤੁਹਾਡੀ ਮੈਂ ਸੁਣ ਲਈ ਪਰ ਇੱਕ ਗੱਲ ਹੈ ਜਿਹੜਾ ਬੈਕ ਬਾਈਟਿੰਗ ਹੈ ਨਾ ਇਹ ਬਹੁਤ ਮਾੜੀ ਹੈ ਜਿੱਥੇ ਇੱਕ ਭਾਈਚਾਰੇ ਦਾ ਬੰਦਾ ਕੰਮ ਕਰ ਰਿਹਾ ਇੱਕ ਇਹਨੂੰ ਚੱਕ ਕੇ ਆ ਤਾਂ ਤੁਸੀਂ ਦੇ ਚੋਂ ਛੱਡੋਗੇ ਤਾਂ ਕੰਮ ਆ ਆ ਜਿਹੜਾ ਅਸੀਂ ਮਤਾਂ ਦਿੰਦੇ ਆ ਗੱਦਗੱਜ ਲੰਮੀ ਹੈ ਹਰ ਰੋਜ਼ ਅਸੀਂ ਇੱਕ ਦੂਜੇ ਨੂੰ ਕਹਿੰਦਾ ਵੀ ਇਹਨੂੰ ਬੰਦ ਕਰ ਕਿਵੇਂ ਨਾ ਕਰ ਇਹ ਆ ਰੇਡੀਓ ਬੰਦ ਕਰ ਆ ਸਾਨੂੰ ਸਵਾ ਦੋ ਸਾਲ ਹੋ ਗਏ ਬਾਣੀ ਪਾਈ ਫਿਰਿਆ ਹੈ ਪਰ ਥੋਡੀ ਜੇ ਭਾਈਚਾਰਾ ਨਾਲ ਸੀ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਇਹ ਕਰਕੇ ਦਿਖਾਇਆ ਤੇ ਇਹ ਇਹ ਗੱਲ ਇਹ ਹੈ ਵੀ ਇਹ ਸਾਨੂੰ ਕਰਨਾ ਔਖਾ ਹੋ ਜਾਂਦਾ ਪਰ ਜੇ ਕੀਤਾ ਜਾਵੇ ਸਾਰੇ ਖੁਸ਼ ਰਹਿਣ ਤਾਂ ਬਹੁਤ ਵਧੀਆ ਹਾਂ ਦੀ ਖੜੀ ਕਰਤੀ ਮੈਂ ਬੜੀਆ ਕੀਤਾ ਮੇਰੇ ਘਰ ਨਹੀਂ ਲੋੜ ਨਹੀਂ ਜਾਣਦੀ ਥੈਂਕ ਯੂ ਪ੍ਰਾਣੇ ਮਿੱਤਰ ਜਦ ਕੋ ਆਉ ਮਿਲਦੇ ਆ ਫਿਰ ਬੜਾ ਆਪਣੇ ਆਪ ਨੂੰ ਸੰਗ ਲੱਗਦੇ ਆ ਜਦ ਤੂੰ ਬਸ ਦੇ ਪਿੱਛੇ ਲੰਮਕਿਆ ਸੀ ਪਤਾ ਹੈ ਜਾਂ ਲੜਾਈ ਹੋਈ ਜਾਂਦਾ ਹੋਇਆ ਫਿਰ ਉਹ ਪੁਰਾਣੀਆਂ ਗੱਲਾਂ ਕਰਕੇ ਬੰਦੇ ਖੁਸ਼ ਹੁੰਦੇ ਏਸੀ ਵੀਰਵਾੜ ਦਾ ਤੁਹਾਡਾ ਪ੍ਰੋਗਰਾਮ ਜੀ ਅੱਜ ਮੈਂ ਗੱਲਾਂ ਆਮ ਸੋਸ਼ਲ ਸਿਸਟਮ ਤੇ ਕਰਾਂ ਜਦ ਵੀ ਕੰਤਾ ਜਾਂਦੇ ਆ ਫਿਰ ਕੀ ਕਰਦੇ ਆ ਪਰ ਗੱਲ ਦੁੱਖ ਭਾਈਚਾਰੇ ਦਾ ਜਿਹੜਾ ਪਹਿਲਾਂ ਸੁਣਨਾ ਹੈ ਫਾਰ ਦਾ ਕਮਿਊਨਿਟੀ ਬਾਈ ਦਾ ਕਮਿਊਨਿਟੀ ਇਹ ਗੱਲ ਪਹਿਲਾਂ ਬਾਕੀ ਗੱਲਾਂ ਸਭ ਪਿੱਛੇ ਕੱਲ ਨੂੰ ਸ਼ੁੱਕਰਵਾਰ ਦਾ ਦਿਨ ਹੈ ਮੇਰਾ ਪਿੰਡ ਮੇਰੇ ਖੇਤ ਚ ਲਾਵਾਂਗੇ ਮਹਿਫਲ ਪਹਿਲਾਂ ਵੀ ਹਲਕੀ ਫੁਲਕੀ ਗੱਲ ਗੀਤ ਸੰਗੀਤ ਹੋਏਗਾ ਅਖੀਰ ਦੇ ਵਿੱਚ ਹੁਣ ਮੁਹੰਮਦ ਸਦੀਕ ਤੁਹਾਨੂੰ ਸੁਣਾਉਣਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਦਾ ਗੁਰੂ ਅੰਗ ਸੰਗ ਹੈ ਸਾਹਿਬ ਮੇਰਾ ਬਹੁਤ ਸਮਰੱਥ ਹੈ ਰੱਬ ਰੱਖਾ